ਏਆਰਪੀ 1750 ਏਮਪੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11:10 ਹੋਏ ਨੇ 6 ਮਾਰਚ ਦਾ ਦਿਨ ਹੈ ਬਰਤ 2017 ਦਾ ਸੋਮਵਾਰ ਹੈ 23 ਫਗਨਾਲ ਸਬੰਧ 548 ਨਿਗਾਹ ਹਾਰਦਿਕ ਸਵਾਗਤ ਹੈ ਹਲੇ ਦੰਦਾ ਹਰਜੀਤ ਸਿੰਘ ਗਿਲ ਸ਼ੋਅ ਦੇ ਵਿੱਚ ਅੱਜ ਅਹਿਮ ਕਦਮਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਰਖ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ ਪਹਿਲੇ ਹਿੱਸੇ ਦੇ ਵਿੱਚ ਬੈੰਦੇ ਆ ਸਾਰੇ ਦੇ ਵਿੱਚ ਜਿਨ੍ਹਾਂ ਦੀ ਪਹਿਚਾਣ ਬਣੀ ਉਸ ਤੋਂ ਬਾਅਦ ਪੰਜਾਬ ਡਿਜੀਟਲ ਲਾਇਬ੍ਰੇਰੀ ਹੋਰ ਉੱਗੇ ਚਿੰਤਕ ਨੇ ਰਾਈਟਰ ਨੇ ਉਹਨਾਂ ਨੇ ਬਹੁਤ ਵਧੀਆ ਇੱਕ ਬਲੌਗ ਲਿਖਿਆ ਪਿਛਲੇ ਦਿਨੀ ਜਿਹੜੀਆਂ ਘਿਰਣਾ ਦੀਆਂ ਘਰਨਾਵਾਂ ਹੋ ਰਹੀਆਂ ਹੇਟ ਕਰਾਇਮ ਦੀਆਂ ਗੱਲਾਂ ਚੱਲ ਰਹੀਆਂ ਅਮਰੀਕਾ ਵਾਲੇ ਪਾਸੇ ਉਸ ਦੇ ਬਾਰੇ ਗੱਲਬਾਤ ਬਹੁਤ ਜਲਦੀ ਸ਼ੁਰੂ ਕਰਾਂਗਾ ਉਸ ਤੋਂ ਬਾਅਦ ਖਬਰਾਂ ਖਬਰਾਂ ਤੋਂ ਬਾਅਦ 12 ਤੋਂ 1 ਵਜੇ ਤੱਕ ਪੰਜਾਬ ਤੋਂ ਆਏ ਨਵੇਂ ਪਰਿਵਾਰਾਂ ਦਾ ਇੱਥੇ ਛੱਡ ਕੇ ਆਏ ਉਹਨਾਂ ਨੂੰ ਕੀ ਤੰਗੀ ਤੇ ਉਹਨਾਂ ਨੂੰ ਕੀ ਦੱਸਣਾ ਚਾਹੀਦਾ ਕਈ ਵਾਰ ਇਹੋ ਜਿਹਾ ਨਾਜ਼ੁਕ ਸਮਾਂ ਜਿਹਦੇ ਵਿੱਚ ਖੁੱਲ੍ਹ ਕੇ ਪਰਿਵਾਰ ਗੱਲ ਨਹੀਂ ਕਰ ਸਕਦਾ ਉਹਦਾ ਕੀ ਹੀਲਾ ਵਸੀਲਾ ਕੀਤਾ ਜਾਵੇ ਇੱਕ ਤੋਂ 2 ਵਜੇ ਤੱਕ ਰਾਜਨੀਤੀ ਦੀ ਲੋਕਲ ਲਿਬਰਲਸ ਤੇ ਐਨਡੀਪੀ ਦੋਨੇ ਤੇਜ਼ ਹੋਈਆਂ ਉਸ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਮਿਨੇਸ਼ਨ ਦੀਆਂ ਗੱਲਾਂ ਬਾਤਾਂ ਚੱਲਣਗੀਆਂ ਪੰਜਾਬ ਦੀ ਰਾਜਨੀਤੀ ਭਗਵਾਨ ਅਸਮਾਨ ਹੁਣੀ ਅਫਰੀਕੀਆ ਦੇ ਵਿੱਚ ਨੇ ਸਾਂਭ ਕੇ ਰੱਖਿਓ ਬਾਈ ਬਹੁਤ ਕੀਮਤੀ ਬੰਦਾ ਵੇਖਿਓ ਕਿਤੇ ਡੋਲਦੇ ਹੋ ਤੇ ਉਸ ਤੋਂ ਬਾਅਦ ਗੀਤ ਸੰਗੀਤ ਹੋਏਗਾ 1846 247 1550 18442471550 ਆਨਲਾਈਨ ਨੰਬਰ ਰਹੇਗਾ rpi radio.com ਤੇ ਸਿੱਧਾ ਪ੍ਰਸਾਰਣ ਤੁਸੀਂ ਸੁਣ ਰਹੇ ਹੋ ਤੇ ਨਾਲ ਹੀ ਨਾਲ ਹੀ ਤੁਸੀਂ ਇਸ ਨੂੰ ਬਾਅਦ ਵਿੱਚ ਵੀ ਸੁਣ ਸਕਦੇ ਹੋ ਲੋਕ ਸੱਤ ਤੇ ਇੱਕ ਅੱਧੇ ਦਿਨ ਦੇ ਵਿੱਚ ਸ਼ੁਰੂ ਹੋ ਜਾਏਗਾ ਸਾਡਾ ਇੰਜੀਨੀਅਰ ਆ ਗਿਆ ਵਾਪਸ ਤੇ ਖਬਰਨਾਮੇ ਤੇ ਮੁੰਡਿਆਂ ਦਾ ਧੰਨਵਾਦ ਹੈ ਇਟਲੀ ਵਾਲਿਆਂ ਦਾ ਉਹ ਵੀ ਪ੍ਰੋਗਰਾਮ ਰਿਕਾਰਡ ਕਰਕੇ ਪਾਉਂਦੇ ਥੈਂਕ ਯੂ ਤੇ ਐਪ ਡਾਊਨਲੋਡ ਕਰ ਸਕਦੇ ਹੋ ਨਿਮੀ ਡਾਲਾ ਜਿਹਦਾ ਨੰਬਰ ਹੈ ਇਨਫੋ 6044406462 6044406462 info@krpieradio.com ਇਹ ਉਹਨਾਂ ਦੀ ਈਮੇਲ ਹੈ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਹਾਡਾ ਕਮੇਟੀ ਸਰਦਾਰ ਜੀ ਸਿੰਘ ਸਰਾਈ ਵੱਲੋਂ ਬਹੁਤ ਵੱਡੇ ਉਦਮ ਦੇ ਵਿੱਚ ਗੈਂਗਵਾਰ ਤੇ ਉਹਦੇ ਵਿੱਚ ਜਾਂਦੀਆਂ ਜਾਨਾਂ ਦੀ ਗੱਲਬਾਤ ਹੋਈ ਕਾਪੋਲ ਖੋਸਾ ਕਾਪੋਲ ਬੁੱਟਰ ਤੇ ਚਰਨ ਕਿੰਗਰਾ ਸੀਨੀਅਰ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਨਸਟੇਬਲ ਨੇ ਤੇ ਡਿਪਟੀ ਚੀਫ ਸਰ ਉਹ ਪਹੁੰਚੇ ਹੋਏ ਸਨ ਉਸ ਦੀ ਵੀ ਗੱਲਬਾਤ ਸੁਣਾਈ ਜਾਏਗੀ ਇਸੇ ਵਿੱਚ ਬਹੁਤ ਵਧੀਆ ਇਹ ਹੰਗਾਰਾ ਰਿਹਾ ਸਾਡਾ ਉੱਥੇ ਕੀ ਵੇਖਦਾ ਗੋਖ ਨਾਥਾ ਪਾੜ ਹੀਰ ਨੂੰ ਆਖੇ ਤੇਰਾ ਰਾਂਝਾ ਜਾਪੇ ਨਹੀਂ ਚਾਹੀਰ ਨੂੰ ਚੜਿਆ ਸੀਗਾ ਵਿੱਚ ਪੰਜਾਬੀ ਦੇ ਛਲ ਚਨਾਬ ਦੀ ਜਦੋਂ ਰੋੜ ਕੇ ਲੈ ਗਈ ਸੋਹਣੀ ਨੂੰ ਮਹੀਵਾਲ ਦੇ ਚੀਸ ਕਲੇਜੇ ਵਿੱਚ ਪੰਜਾਬੀ ਦੇ ਦੋਹਾਂ ਨੈਣਾਂ ਨੂੰ ਛੜ ਕੇ ਤਣ ਚਬਜਾ ਕਾਵਾ ਤੋਂ ਫਰੀਦ ਸਾਹਿਬ ਨੇ ਲਿਖਿਆ ਸੀਗਾ ਵਿੱਚ ਪੰਜਾਬੀ ਦੇ ਅਕਬਰ ਦੀ ਅਖ ਵਿੱਚ ਰੜਕੇ ਦਾ ਸੁੰਦਰੀ ਸਿਰ ਹੱਥ ਧਰਿਆ ਦੁੱਲੇ ਵਿੱਚ ਪੰਜਾਬੀ ਦੇ ਪੰਜ ਸਰਾ ਦੀ ਲੋੜ ਗੱਭਰੂ ਉੱਥੇ ਕੱਠ ਵਿੱਚੋਂ ਬਾਜਾ ਵਾਲਾ ਬਾਜ ਪੰਜਾਬੀ ਦੇ ਪਾੜ ਸਰਵੰਸਦਾਨੀਆਂ ਕੱਢ ਕੇ ਨੇਫੇ ਚੋਂ ਮਹਾ ਸਿੰਘ ਦਾ ਮਹਾ ਸਿੰਘ ਦਾ ਤਰਲਾ ਸੀਗਾ ਵਿੱਚ ਪੰਜਾਬੀ ਦੇ ਅੰਬਰਸਰ ਨੂੰ ਕਰਲਾ ਚਿੱਤੇ ਤੂੰ ਅਡਵੈਰਾ ਹੋਏ ਉਦਮ ਸਿੰਘ ਦਾ ਉਦਮ ਸਿੰਘ ਦਾ ਸੀ ਲਲਕਾਰਾ ਵਿੱਚ ਪੰਜਾਬੀ ਦੇ ਰੀਜ ਕਾਲ ਜੇ ਮਿਲਦਾ ਰਹੇ ਸਦਾ ਮਾਨ ਪੰਜਾਬੀ ਨੂ ਰੀਜ ਕਾਲ ਜੇ ਮਿਲਦਾ ਰਹੇ ਸਦਾ ਮਾਣ ਪੰਜਾਬੀ ਨੂੰ ਅਹੀਂ ਜੋਗਾ ਕੁੱਦਾ ਲਿਖਦਾ ਵਿੱਚ ਪੰਜਾਬੀ ਦੇ ਤਾਂ ਜੋਗਾ ਕੁੱਦਾ ਲਿਖਦਾ ਵਿੱਚ ਪੰਜਾਬੀ ਕੁੱਦਾ ਸਹੀ ਮੇਰੇ ਨਾਲ ਹੁਣ ਹਰਿੰਦਸਿੰਘ ਟੈਕਸਸ ਸੋਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਭਾਈਚਾਰੇ ਦਾ ਹਿੱਸਾ ਸਮਝਦੇ ਹੋ ਸਰੀ ਦੇ ਵਿੱਚ ਬਹੁਤ ਵਾਰ ਆਏ ਉਹਨਾਂ ਪਿਆਰ ਬੇਬਾਕੀ ਸ਼ਬਦਾਂ ਦੀ ਚੋਣ ਹੈ ਪੜ੍ਹਾਈ ਹੈ ਤੇ ਬਹੁਤ ਦੀ ਇਹ ਗੱਲ ਕਰਦੇ ਨੇ ਉਹਨਾਂ ਨੇ ਪਿਛਲੇ ਦਿਨੀ ਕੱਲ੍ਹ ਇਰਾਦ ਅ ਇੱਕ ਓਪੀਨੀਅਨ ਲਿਖੀ ਹੈ ਜਿਸ ਦਾ ਹੈ when love trumps hate Trump ਦੇ ਹੋਂ ਤੋਂ ਬਾਅਦ ਘੱਟ ਗਿਣ ਦੇ ਲੋਕਾਂ ਤੇ ਹੋਏ ਹਮਲੇ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਕਿਉਂਕਿ ਪਿਛਲੇ ਦਿਨ ਜਸਿਆਕਲ ਦੇ ਵਿੱਚ ਦੀਪਰਾਏ ਨੌਂ ਦੇ ਲੜਕੇ ਤੇ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਭਾਈਚਾਰਾ ਡਰਿਆ ਹੋਇਆ ਹੈ ਕਿੰਨੇ ਕੇਸ ਹੋਏ ਤੇ ਇਸ ਨਾਲ ਸਿੱਧਾ ਕਿਵੇਂ ਜਾਵੇ ਥੋੜਾ ਜਿਹਾ ਸਮਾਂ ਸੀ ਹਰਿੰਦਰ ਸਿੰਘ ਟੈਕਸੀ ਸੁਣਾ ਕੋਲ 10 ਮਿੰਟ ਤੇ ਮੈਂ ਉਹਨਾਂ ਨੂੰ ਹੁਣੇ ਨਾਲ ਲਿਆ ਤਾਂ ਹੀ ਕਾਹਲੀ ਦੇ ਵਿੱਚ ਹੈ ਸਹਿੰਦਰ ਸਿੰਘ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਹਾਂਜੀ ਗੁਰੂ ਫਤੇ ਜੀ ਅੱਛਾ ਜੀ ਜਿਹੜਾ ਤੁਹਾਡਾ opinion ਜਿਹੜਾ ਤੁਸੀਂ ਐਡੀਟੋਰੀਅਲ ਬਹੁਤ ਵਧੀਆ ਲਿਖਿਆ ਹੈ ਵਨ ਲਵ ਕੀ ਪਿਆਰ ਦੇ ਨਾਲ ਕਿਵੇਂ ਅਸੀਂ ਸਿੱਝ ਸਕਦੇ ਆ ਇਸ ਦੇ ਬਾਰੇ ਸਮਝਾਓ ਹਾਂ ਜਰੂਰ ਜੀ ਦੇਖੋ ਜਿਹੜਾ ਇੱਕ ਟ੍ਰੰਪਸ ਅਸੀਂ ਕਹਿ ਰਹੇ ਹਾਂ ਇੱਕ ਮਹੀਨੇ ਦਾ ਜਿਹੜਾ ਅਮਰੀਕਾ ਦੇ ਅਸਪਤੀ ਬਣੇ ਹੋਏ ਨੇ ਇਹ ਫੀਨੋਮੈਨਾ ਨੂੰ ਲੈ ਕੇ ਆਮ ਤੌਰ ਤੇ ਸੀ ਕਹਿ ਰਹੇ ਆ ਕਿ ਜਿਹੜੀ ਘੱਟ ਗਿਣਤੀਆਂ ਨੇ ਭਾਵੇਂ ਹੋ ਰਿਲੀਜੀਅਸ ਤੇ ਨੇ ਭਾਵੇਂ ਹੋ ਲਿੰਗ ਜਾਂ ਜੈਂਡਰ ਦੇ ਲੈਵਲ ਤੇ ਨੇ ਭਾਵੇਂ ਦੇ ਲੈਵਲ ਤੇ ਨੇ ਉਹਨਾਂ ਸਾਰਿਆਂ ਦਾ ਨਾ ਇੱਕ ਸોર્ટ ਆਫ ਰੋਸ ਪ੍ਰਗਟ ਕਰਨ ਦੇ ਤਰੀਕਿਆਂ ਨੂੰ ਅਪਣਾ ਕੇ ਜਿਹੜੀਆਂ ਪਾਲਿਸੀਆਂ ਅਪਣਾਈਆਂ ਜਾ ਰਹੀਆਂ ਉਹਦੇ ਪ੍ਰਤੀ ਆਪਣੀ ਆਵਾਜ਼ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ 'ਚ ਇੱਕ ਗੱਲ ਜਿਹੜੀ ਸਾਹਮਣੇ ਬੜੀ ਕਲੀਅਰਲੀ ਆ ਰਹੀ ਆ ਦੀ ਪਹਿਲੀ ਗੱਲ ਤਾਂ ਇਹ ਕਿ ਕਦੇ ਵੀ ਅਮਰੀਕਾ ਵਿੱਚ ਇਸ ਕਿਸਮ ਦੇ ਪ੍ਰੋਟੈਸਟ ਨਹੀਂ ਹੋਏ ਕਿ ਜਦ ਇਨੋਗਰੇਸ਼ਨ ਹੋ ਰਹੀ ਹੈ ਉਸ ਵੇਲੇ ਵੀ ਹੋ ਰਹੇ ਹੋਣ ਤੇ ਜਿਹਦੇ ਵਿੱਚ ਸਿਰਫ ਇੱਕ ਸਿਰਫ ਜਿਹੜੀ ਪ੍ਰਿਵਿਲੇਜਡ ਵਾਈਟ ਕਲਾਸ ਹੈਗੀ ਸਿਰਫ ਉਹੀ ਪ੍ਰੋਟੈਸਟ ਨਹੀਂ ਕਰ ਰਹੀ ਬਨ ਦੇ ਨਾਲ ਰਲ ਕੇ ਭਾਵੇਂ ਉਹ ਹੋਮੋਸੈਕਸ਼ੁਅਲਿਟੀਜ਼ ਪ੍ਰੋਟੈਸਟ ਹੋ ਰਹੇ ਨੇ ਵਿਮਨ ਰਾਈਟਸ ਦੇ ਐਂਗਲ ਤੋਂ ਹੋ ਰਹੇ ਨੇ ਮੁਸਲਮ ਜਾਂ ਆਦਰ ਸਾਊਥ ਏਸ਼ੀਅਨ ਮੈਨਿਟੀ ਰਾਈਟਸ ਦੇ ਲੈਵਲ ਤੇ ਹੋ ਰਹੇ ਆ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਇਸ ਕਿਸਮ ਦਾ ਜਿਹੜੇ ਜਲਸਿਆਂ ਦੇ ਰੂਪ ਵਿੱਚ ਇਹਨਾਂ ਜਾ ਰਿਹਾ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਨ੍ਹਾਂ ਨੂੰ ਆਮ ਤੌਰ ਤੇ ਹੇਟ ਕਰਾਇਮ ਗੁਰਦੁਆਰੇ ਤੇ ਅਟੈਕ ਹੋਇਆ ਸੀ ਉਸ ਵੀ ਗੱਲ ਚੱਲਦੀ ਸੀ ਬੜ ਇਥੇ ਇਹ ਗੱਲ ਕਿਉਂ ਨਹੀਂ ਦੇਖੀ ਜਾਂਦੀ ਜਿਹੜਾ ਕਿ ਇੱਕ ਸਵਾਲ ਉਠਾਣ ਦੀ ਲੋੜ ਆ ਕਿ ਇਹਨੂੰ ਵਾਈਟ ਟੈਰਰ ਕਿਉਂ ਨਹੀਂ ਕਿਹਾ ਜਾ ਸਕਦਾ ਜਦ ਵੀ ਇਹ ਇੱਕ ਇੰਡੀਵਿਜੂਅਲ ਜਿਹੜੇ ਗਨਜ ਨੂੰ ਬੜੇ ਖੁੱਲੇ ਰੂਪ ਵਿੱਚ ਵਰਕਰ ਆਏ ਨੇ ਉਹਨਾਂ ਨੂੰ ਮੈਂਟਲ ਦੇ ਲੈਵਲ ਤੇ ਪ੍ਰੈਜੈਂਟ ਕਰਨਾ ਉਹਨਾਂ ਨੂੰ ਇੱਕ ਹੇਟ ਕਰਾਇਮ ਦੇ ਲੈਵਲ ਤੇ ਪ੍ਰੈਜੈਂਟ ਕਰਨਾ ਜੇ ਇਹੀ ਕੰਮ ਕਿਸੇ ਮੁਸਲਮਾਨ ਨੇ ਕੀਤਾ ਹੁੰਦਾ ਜਾਂ ਕੋਈ ਸਿੱਖ ਕਰ ਦਿੰਦਾ ਹੈਗਾ ਬੈਕਗ੍ਰਾਉਂਡ ਦਾ ਤਾਂ ਫਿਰ ਉਹ ਇੱਕ ਧਰਮ ਦੇ ਨਾਲ ਜੁੜ ਕੇ ਗੱਲ ਹੁੰਦੀ ਹੈ ਤੇ ਜਦ ਇਹ ਵਾਈਟ ਅਮਰੀਕਨ ਕ੍ਰਿਸਚਨ ਅਮਰੀਕਨਸ ਕਰ ਰਹੇ ਨੇ ਇਹਨਾਂ ਨੂੰ ਵਾਈਟ ਟੈਰਰ ਕਿਉਂ ਨਹੀਂ ਕਿਹਾ ਜਾ ਸਕਦਾ ਜੇ ਬਾਕੀਆਂ ਨੂੰ ਹੋਰ ਟੈਰਰ ਕਿਹਾ ਜਾ ਸਕਦਾ ਪੇਜ ਵਿੱਚ ਜਿਹੜੀ ਗੱਲ ਮੈਂ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਿਰਫ ਅਮਰੀਕਾ 'ਚ ਨਹੀਂ ਹੋ ਰਿਹਾ ਇੱਕ ਪੂਰੀ ਦੁਨੀਆ ਦੇ ਵਿੱਚ ਨਾ ਹਾਲਾਤ ਹਿੰਦੁਸਤਾਨ 'ਚ ਦੇਖ ਲਓ ਮੋਦੀ ਗਵਰਨਮੈਂਟ ਥੱਲੇ ਬ੍ਰੈਕਸਿਟ ਵਿੱਚ ਦੇਖ ਲਓ ਮਤਲਬ ਇੰਗਲੈਂਡ ਵਿੱਚ ਕੀ ਹੋ ਰਿਹਾ ਔਰ ਉਹਨਾਂ ਦੇ ਟਾਈਮ ਵਿੱਚ ਹੁਣ ਫ੍ਰੈਂਸ ਵਿੱਚ ਵੀ ਲਪਨ ਦੀ ਗੱਲ ਚੱਲ ਰਹੀ ਆ ਕਿ ਕਿ ਕਿਸਮ ਦਾ ਰਾਈਟ ਵਿੰਗ ਪੋਪੁਲਿਜ਼ਮ ਦੁਨੀਆ ਵਿੱਚ ਛਾਇਆ ਹੋਇਆ ਜਿਹਦਾ ਜਿਹਦਾ ਬੇਸਿਕ ਅਜੰਡਾ ਇਹ ਹੈਗਾ ਕਿ ਜਿਹੜੀ ਉੱਥੇ ਦੀ ਮੈਜੋਰਿਟੀ ਪ੍ਰਿਵੀਲੇਜ ਕਲਾਸ ਆ ਉਹਨਾਂ ਨੂੰ ਮੁੱਖ ਰੱਖ ਕੇ ਗੱਲਾਂ ਕਰਨੀਆਂ ਜੋ ਸਨਨ ਨੂੰ ਠੀਕ ਲੱਗਦੀਆਂ ਨੇ ਜਾਂ ਨਹੀਂ ਠੀਕ ਲੱਗਦੀਆਂ ਇਹਦੇ ਵੱਲ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ ਪਰ ਪਾਲਿਸੀ ਦੇ ਲੈਵਲ ਤੇ ਉਹ ਜਿੰਨੀਆਂ ਵੀ ਘਟ ਗਣਤੀਆਂ ਆਉਂਦੀਆਂ ਨੇ ਉਹਨਾਂ ਦੇ ਖਿਲਾਫ ਪਾਲਿਸੀਆਂ ਜਾਰੀ ਹੋ ਰਹੀਆਂ ਨੇ ਇਹਨੂੰ ਕਾਊਂਟਰ ਕਰਨਾ ਭਾਵੇਂ ਅਸੀਂ ਪੰਜਾਬੀ ਐਂਗਲ ਤੋਂ ਦੇਖਦੇ ਹਾਂ ਤੇ ਖੈਂਗਲ ਤੋਂ ਉਹ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਤੇ ਲਗਾਤਾਰ ਨਾ ਹਰ ਪੀਰੀਅਡ ਵਿੱਚ ਹੁੰਦਾ ਹੈਗਾ ਵੱਖਰੀ ਵੱਖਰੀ ਥਾਵਾਂ ਤੇ ਵੀ ਹੁੰਦਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਇਹੀ ਸੇਧ ਮਿਲਦੀ ਹੈਗੀ ਕਿ ਜਿੱਥੇ ਇੱਕ ਕਿਸਮ ਦੀ ਸਰਵ ਸਰਵਿਅੰਸ ਇਸ ਕਿਸਮ ਮੈਨੂੰ ਜਿਉਂ ਸਰੀਰੋ ਲੈ ਤਾਂ ਇਹ ਜਿਹੜੀ ਸਰਵ ਨਵੇਂ ਕਿਸਮ ਦੀ ਸਲੇਵਰੀ ਬਣਾਈ ਜਾ ਰਹੀ ਆ ਨਵੇਂ ਕਿਸਮ ਦੀ ਤੁਸੀਂ ਕਹਿ ਲਓ ਸਿਵਲ ਰਾਈਟਸ ਤੇ ਲੜਾਈਆਂ ਹੋਣ ਦੀਆਂ ਗੱਲਾਂ ਪੂਰੀ ਦੁਨੀਆ ਚੱਲ ਰਹੀਆਂ ਨੇ ਤੇ ਸਾਨੂੰ ਅ ਗੱਲ ਮੈਂ ਕਹਿੰਦਾ ਫਿਰ ਤੁਹਾਡਾ ਸਵਾਲ ਲਵਾਗਾ ਕੈਨੇਡਾ ਦੇ ਵਿੱਚ ਵੀ ਖੜਕੇ ਜਸਵੰਤ ਸਿੰਘ ਖਾਲੜਾ ਹੋਂਦਾਂ ਨੇ ਵੀ ਇਹੀ ਸਾਨੂੰ ਇੱਕ ਦੇ ਰੂਪ ਵਿੱਚ ਵਾਰਨਿੰਗ ਦਿੱਤੀ ਸੀਗੀ ਜਦੋਂ ਇੰਡੀਆ ਤੋਂ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਜਿਹੜੀ ਇੱਕ ਡਾਰਕਨੈਸ ਹੈ ਇਹ ਹਰ ਥਾਂ ਫੈਲਦੀ ਫੈਲਦੀ ਆ ਤੇ ਇਹਨੂੰ ਚੁਣੌਤੀ ਦੇਣ ਲਈ ਇੱਕ ਅੱਧਾ ਦੀਵਾ ਜਲਣਾ ਜ਼ਰੂਰੀ ਆ ਤੇ ਜਿੰਨੀ ਜ਼ਿਆਦਾ ਇਹ ਡਾਰਕਨੈਸ ਤੇਜੀ ਨਾਲ ਜੇ ਗਵਰਨਮੈਂਟ ਦੀ ਪਾਲਿਸੀਜ਼ ਦੇ ਰੂਪ ਵਿੱਚ ਆਜੂਗੀ ਫਿਰ ਇਹਨੂੰ ਕਾਊਂਟਰ ਕਰਨ ਲਈ ਸਿਰਫ ਇੱਕ ਦੀਵਾਨੀ ਫਿਰ ਕਈ ਦੀਵੇ ਵੀ ਚਾਹੀਦੇ ਨੇ ਅੱਛਾ ਸਰਦਾਰ ਸਾਹਿਬ ਕੁਝ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਉੱਥੋਂ ਅਸੀਂ ਹੋਵੇ ਨਾ ਇਹਨਾਂ ਹੋ ਜਾਂਦੇ ਆ ਬੇ ਬੱਲਾ ਬੱਲਾ ਹੁਣ ਵੈਸਟਰਨ ਵਰਲਡ 'ਚ ਆ ਗਏ ਇੱਥੇ ਮੇਰੀ ਮਨੁੱਖਤਾ ਇੱਥੇ ਇਮਾਨਦਾਰੀ ਇੱਥੇ ਸਤਕਾਨ ਆ ਮੇਰੀ ਦਸਤਾਰ ਦਾੜਾ ਜਾਂ ਰੋਡੇ ਉਂਕ ਜਾਂ ਕਾਲੇ ਉ ਚਿੱਟੇ ਕੋਈ ਡਰ ਨਹੀਂ ਪਰ ਖੜੇ ਪੈਦਾ 850 ਪਿਛਲੇ ਜਤੋਂ ਟਰੰਪ ਨੇ ਸੌ ਚੁੱਕਿਆ 850 ਦੇ ਕਰੀਬ ਹੇਟ ਕਰਾਇਮ ਨਸਲੀ ਵਿਤਕਰੇ ਦੇ ਕੇਸ ਜਿਹੜੇ ਨੇ ਉਹ ਦਾਖਲ ਹੋ ਚੁੱਕੇ ਨੇ ਅਮਰੀਕਾ ਦੇ ਵਿੱਚ ਇਹਨਾਂ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਸਾਡਾ ਹਰ ਰੋਜ਼ ਦੇ ਜੀਵਨ ਦੇ ਵਿੱਚ ਹੋਰ ਕਿਹੜੀਆਂ ਵੇ ਬਿਲਕੁਲ ਅਹਿਮ ਸਵਾਲ ਹੈ ਜੀ ਦੇਖੋ ਪਿਛਲੇ 30-40 ਸਾਲਾਂ ਵਿੱਚ ਸਾਡੀ ਹੌਨ ਟਿੱਕਰ ਵੀ ਜਿਹੜੀਆਂ ਇਵਨ ਨੈਸ਼ਨਲ ਲੈਵਲ ਤੇ ਵੀ ਸਿੱਖਾਂ ਦੀਆਂ ਆਰਗੇਨਾਈਜੇਸ਼ਨਸ ਖਣੀਆਂ ਨੇ ਉਹਨਾਂ ਦੇ ਦਿਮਾਗ ਵਿੱਚ ਇੱਕੋ ਗੱਲ ਸੀ ਕਿ ਸਿੱਖਾਂ ਦੀ ਆਈਡੈਂਟੀਟੀ ਦੀ ਗੱਲ ਆਪਾਂ ਕਰੀਏ ਆਪਣੇ ਰਾਈਟਸ ਦੀ ਗੱਲ ਕਰੀਏ ਉਹ ਕਰਨੀ ਜ਼ਰੂਰੀ ਵੀ ਹੈ ਕਿਉਂਕਿ ਸਾਡੇ ਰਾਈਟਸ ਦੀ ਗੱਲ ਕੋਈ ਹੋਰ ਕਰਦਾ ਨਹੀਂ ਸੀਗਾ ਇਨਕਲੂਡਿੰਗ ਕਿ ਜਿਹੜੀਆਂ ਇੰਡੀਅਨ ਆਰਗੇਨਾਈਜੇਸ਼ਨ ਜਾਂ ਸਾਊਥ ਏਸ਼ੀਆਨ ਆਰਗੇਨਾਈਜੇਸ਼ਨਸ ਸੀ ਜਾਂ ਉਹਨਾਂ ਦੀਆਂ ਜਿਹੜੀਆਂ ਦੇਸ਼ਾਂ ਚੋਂ ਆਏ ਹੋਿਆਂ ਦੀਆਂ ਗਵਰਨਮੈਂਟ ਦੀਆਂ ਆਰਗੇਨਾਈਜੇਸ਼ਨਸ ਨੇ ਉਹ ਵੀ ਨਹੀਂ ਕਰਦੀਆਂ ਸੀ ਤੁਸੀਂ ਕਾ 能 ਕਰਨਾ ਪਿਆ ਬਸ ਸਿਰਫ ਇਹ ਕਰਨਾ ਇਨਾ ਨਹੀਂ ਹੈਗਾ ਇਹ ਸਾਨੂੰ ਵੀ ਪਤਾ ਹੈਗਾ ਕਿਉਂਕਿ ਇਹ ਸਾਡੀ ਪਰੰਪਰਾ ਵੀ ਨਹੀਂ ਸੀ ਜੇ ਸਾਡੀ ਇੱਕ ਸਮੇਂ ਦੀ ਲੋੜ ਸੀ ਦੇਖੋ ਪਰੰਪਰਾ ਸਾਡੀ ਗੁਰਦਾਨਸ਼ ਪਾਤਸ਼ਾਹ ਨੇ ਦੱਸੀ ਹੋਈ ਆ ਤੇ ਉਹ ਪਰੰਪਰਾ ਨੂੰ ਕਿਸ ਤਰੀਕੇ ਨਾਲ ਸਾਰੇ ਗੁਰੂਆਂ ਨੇ ਇਨਕਲੂਡਿੰਗ ਨੌਵੇਂ ਪਾਤਸ਼ਾਹ ਦੀ ਆਪਾਂ ਗੱਲ ਕਰਦੇ ਹਾਂ ਸ਼ਹਾਦਤ ਦੇਣ ਦੀ ਹੋਰ ਧਰਮਾਂ ਦੀ ਰਾਖੀ ਕਰਨ ਲਈ ਜਾਂ ਉਹ ਜਿਹੜਿਆਂ ਦੀ ਕੋਈ ਰਾਖੀ ਨਹੀਂ ਕਰਦਾ ਸੀ ਉਹਨਾਂ ਦੀ ਰਾਖੀ ਕਰਨ ਲਈ ਇਹ ਟ੍ਰੈਡੀਸ਼ਨ ਸਾਡਾ ਰਿਹਾ ਪੰਜਾਬ ਦੇ ਵਿੱਚ ਵੀ ਅਸੀਂ ਇਹੀ ਕੀਤਾ ਹਿੰਦੁਸਤਾਨ ਦੇ ਵਿੱਚ ਵੀ ਅਸੀਂ ਕੀਤਾ ਇਹ ਜਿਹੇ ਦੇਸ਼ਾਂ ਵਿੱਚ ਆ ਕੇ ਵੀ ਅਸੀਂ ਕੀਤਾ ਸੀ ਅਮਰੀਕਾ ਕੈਨੇਡਾ ਬਟ ਪਿਛਲੇ 30 40 ਸਾਲਾਂ ਨਾਲ ਅਸੀਂ ਭੁੱਲ ਗਏ ਸੀ ਕਿਉਂਕਿ ਅਸੀਂ ਵੀ ਉਹ ਪ੍ਰਿਵਿਲੇਜ ਕਲਾਸ ਬਣਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸੀ ਹੁਣ ਸਾਡੇ ਸਾਹਮਣੇ ਇੱਕ ਦੌਰ ਨਵਾਂ ਜਿਹੜਾ ਪੂਰੀ ਦੁਨੀਆ ਵਿੱਚ ਚੱਲ ਰਿਹਾ ਇੱਥੇ ਸਾਨੂੰ ਦੁਬਾਰਾ ਆਪਣੀ ਅਸਲੀ ਰੂਟਸ ਨਾਲ ਜੁੜਨਾ ਪੈਣਾ ਕੱਲਾ ਜਿਹੜਾ ਅਸੀਂ ਜਿਵੇਂ ਤੁਸੀਂ ਵੀ ਹੁਣ ਪੰਜਾਬੀ ਦੀ ਪੰਜਾਬ ਦੀ ਤੇ ਪੰਜਾਬ ਦੇ ਸੂਰਮਿਆਂ ਦੀ ਗੱਲ ਕਰ ਰਹੇ ਸੀ ਉਹਦੇ ਨਾਲ ਨਹੀਂ ਕੋਈ ਜੁੜ ਰਿਹਾ ਅੱਜ ਵੀ ਤੁਸੀਂ ਦੇਖੋ ਜਦੋਂ ਰਾਮ ਜਸਤ ਦੇ ਇਸ਼ੂ ABBVP ਦੇ ਨਾਲ ਚਲਿਆ ਪੰਜਾਬ ਦੇ ਕਿਸੇ ਵੀ ਕਲਾਕਾਰ ਨੇ ਗੁਰਮੇਹਰ ਦੀ ਗੱਲ ਨਹੀਂ ਕੀਤੀ ਉਸ ਸੋ ਇਥੋਂ ਵੀ ਇਹ ਪਤਾ ਲੱਗ ਰਿਹਾ ਕਿ ਜਿਹੜਾ ਪੰਜਾਬ ਦਾ ਸੈਲਿਬ੍ਰਿਟੀ ਕਲਚਰ ਆ ਉਹ ਡਿਫਰੈਂਟ ਆ ਪੰਜਾਬ ਦਾ ਜਿਹੜਾ ਫੋਕ ਕਲਚਰ ਆ ਉਹ ਡਿਫਰੈਂਟ ਆ ਤੇ ਪੰਜਾਬ ਦਾ ਫੋਕ ਕਲਚਰ ਹਰ ਵੇਲੇ ਹੀ ਖੜ ਜਾਂਦਾ ਸੀ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਲਈ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜਾਂਦਾ ਜੁੜਨ ਦੀ ਲੋੜ ਆ ਪੰਜਾਬੀਆਂ ਨੂੰ ਜਿਹੜਾ ਆਪਣਾ ਇੱਕ ਪੁਰਾਣਾ ਅਸੀਂ ਤੇ ਕਰਨੀ ਆ ਬਈ ਅਸੀਂ ਸਾਰਿਆਂ ਨੇ ਹੱਕ ਦੀ ਗੱਲ ਕਰਾਂਗੇ ਤੇ ਸਪੈਸ਼ਲੀ ਜਿਹੜੇ ਨੀਚੀ ਹੂ ਬਕ ਨੇ ਉਹਨਾਂ ਦੀ ਗੱਲ ਕਰਾਂਗੇ ਮਤਲਬ ਜਿਨ੍ਹਾਂ ਦੇ ਰਾਈਟਸ ਤੇ ਕੋਈ ਗੱਲ ਨਹੀਂ ਕਰ ਰਿਆ ਉਹ ਰਾਈਟਸ ਦੇ ਵਿੱਚ ਪਰ ਅਸੀਂ ਆਪ ਵੀ ਵਿੱਚ ਆ ਜਾਂਦੇ ਆ ਤੇ ਉੱਥੇ ਹੀ ਸਾਨੂੰ ਰੱਬ ਦੇਖਣਾ ਸ਼ੁਰੂ ਹੁੰਦਾ ਗੁਰਬਾਣੀ ਦੇ ਲੱਗ ਵਿੱਚ ਜਦ ਸਾਨੂੰ ਕੋਈ ਕਾਰਨਰ ਕਰਦਾ ਸਿੰਘ ਸਾਹਿਬ ਸਾਡੇ ਕੋਈ ਨਸਲੀ ਵਿਤਕਰਾ ਸਾਡੇ ਤੇ ਕੱਸਦਾ ਉਸ ਨੂੰ ਹੁੰਦਾ ਤਾਂ ਉਹ ਹਰ ਵਕਤ ਸਥਿਤੀ ਅਲੱਗ ਅਲੱਗ ਹੋਣੀ ਹੈ ਕਿਸ ਤਰ੍ਹਾਂ ਰਿਜ਼ੋਲਵ ਕਰ ਸਕਦੇ ਹੋ ਤੁਹਾਡਾ ਜਿਹੜਾ opinion ਆ ਉਹਦੇ ਸਾਰੰਸ਼ ਦੇ ਵਿੱਚ ਅਖੀਰ ਦੇ ਵਿੱਚ ਉਹਦੇ ਨਿਚੋੜ ਦੇ ਵਿੱਚ ਸੌਰੀ ਇਹ ਗੱਲ ਮੈਂ ਪੜਦਾ ਤੁਸੀਂ ਕਹਿੰਦੇ ਹੋ ਵੀ ਕਿਸੇ ਦੀ ਨਫ਼ਰਤ ਨੂੰ ਪਿਆਰ ਚ ਬਦਲੋ ਕੀ ਕੀਤਾ ਜਾਵੇ ਫਿਰ ਹਾਂਜੀ ਉਥੇ ਪਹਿਲੀ ਗੱਲ ਤਾਂ ਇਹ ਹੈਗਾ ਕਿ ਜਿਹੜਾ ਅਸੀਂ ਆਪਣੇ ਆਪ ਨੂੰ ਕੋਈ ਵੀ ਰਿਲੀਜੀਅਸ ਅਫੀਲੀਏਸ਼ਨ ਨਾ ਲੈਣੇ ਆ ਭਾਵੇਂ ਅਸੀਂ ਆਪਣੇ ਆਪ ਨੂੰ ਸਿੱਖਾ ਖਾਉਣਾ ਮੇਰੀ ਆਪਣੀ ਵੋਕੈਬਲਰੀ ਦੇ ਵਿੱਚ ਇਹ ਬਹੁਤ ਹੈਗਾ ਅਸੀਂ ਜਦ ਇੱਕ ਜੁਹਦੇ ਨਾਲ ਵੀ ਗੱਲ ਕਰਦੇ ਆ ਭਾਵੇਂ ਅਸੀਂ ਫੋਰ ਐਗਜ਼ਾਮਪਲ ਪੰਜਾਬੀ ਜਾਂ ਸਿੱਖ ਬੰਦੇ ਜਦ ਕੋਈ ਲੈਫਟ ਖੱਬੇ ਪੱਖੀ ਜਾਂ ਨਕਲਵਾਦੀਆਂ ਦੀ ਗੱਲ ਕਰਦੇ ਆ ਉਹਦੇ ਵਿੱਚ ਵੀ ਨਫ਼ਰਤ ਭਰੀ ਹੁੰਦੀ ਹੈ ਜਿਵੇਂ ਹੁਣ ਟਰੰਪ ਦੇ ਪ੍ਰਤੀ ਗੱਲ ਕਰ ਰਹੇ ਆ ਨਫ਼ਰਤ ਭਰੀ ਹੋਈ ਆ ਸਿੱਖ ਨਜ਼ਰੀਏ ਤੋਂ ਠੀਕ ਨਹੀਂ ਆ ਸਿੱਖ ਨਜ਼ਰੀਆ ਤਾਂ ਇਹ ਕਹਿੰਦਾ ਕਿ ਜਿਹੜੀ ਵੀ ਹਰ ਕਾਇਨਾਤ ਦੇ ਵਿੱਚ ਹਰ ਬੰਦੇ ਦੇ ਵਿੱਚ ਰੱਬ ਵਰਗਾ ਤੇ ਸਾਨੂੰ ਉਹਨਾਂ ਦੀਆਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਹਨਾਂ ਨੂੰ ਕਰਨ ਲਈ ਪਹਿਲਾਂ ਦੇ ਵਿੱਚ ਆਪਣੇ ਆਪ ਨਾਲ ਸ਼ੁਰੂ ਕਰਨਾ ਸਾਡਾ ਵਿਚਾਰ ਕਰਨ ਦਾ ਤਰੀਕਾ ਵੀ ਉਸੇ 네ਗੇਟਿਵ ਲੈਵਲ ਤੇ ਜਾਂ ਉਸੇ ਹੀ ਹੇਟਰੇਡ ਦੇ ਨਫ਼ਰਤ ਦੇ ਲੈਵਲ ਤੇ ਹੋਊਗਾ ਫਿਰ ਅਸੀਂ ਨੈਕਸਟ ਸਟੈਪ ਤੇ ਨਹੀਂ ਜਾ ਸਕਾਂਗੇ ਹੁੰਦਾ ਇਹ ਹੈ ਕਿ ਜਿੰਨਾ ਮਨਾਂ ਦੇ ਵਿੱਚ ਸੁਚੇਤਤਾ ਜਾਗਦੀ ਆ ਜਿੰਨਾ ਬੰਦੇ ਦੀ ਸੁਰ ਜਾਗਦੀ ਆ ਉਹਦਾ ਬੋਲਣ ਦਾ ਤਰੀਕਾ ਤੇ ਕੰਮ ਕਰਨ ਦਾ ਤਰੀਕਾ ਵੈਟਰ ਹੁੰਦਾ ਸੋ ਜਿਹੜੇ ਜਿਨ੍ਹਾਂ ਦੀ ਸੋਚ ਰੱਬੀ ਸੋਚ ਆ ਜਾਂ ਜੀਵੀ ਜੋਤ ਜੀ ਦੇ ਵਿੱਚ ਜਗ ਰਹੀ ਆ ਉਹ ਸੋਚ ਵਾਲੇ ਜਿਹੜੇ ਕੰਮ ਕਰਦੇ ਨੇ ਉਹ ਕੰਮ ਵਾਕਈ ਫਿਰ ਲਵ ਦੇ ਲੈਵਲ ਤੇ ਪਿਆਰ ਦੇ ਲੈਵਲ ਤੇ ਹੁੰਦਾ ਕਹਿਣ ਦਾ ਭਾਵੇਂ ਆ ਕਿ ਜਦੋਂ ਉਸ ਤਰ੍ਹਾਂ ਦਾ ਸਮੂਹ ਇਕੱਠਾ ਹੁੰਦਾ ਨਾ ਫਿਰ ਉਹ ਹੇਟ ਨੂੰ ਕਾਊਂਟਰ ਕਰ ਲੈਂਦਾ ਕੀ ਅਦਰਵਾਇਜ਼ ਹੁੰਦਾ ਕਿ ਇਹ ਦੇਖੋ ਸਾਡੇ ਕੋਲ ਨਾਕੀ ਜਰਮਨੀ ਦਾ ਟਾਈਮ ਸੀਗਾ ਉਹ ਪੁਰਾਣੀ ਗੱਲ ਹੋ ਗਈ ਹੈ ਬਟ ਹੁਣ ਕੀਤਾ ਗਿਆ ਤੇ ਉਹਨੂੰ ਅੱਜ ਤੱਕ ਵੀ ਅਸੀਂ ਭੁਗਤ ਰਹੇ ਆ ਇਸੇ ਤਰੀਕੇ ਨਾਲ ਹਿੰਦੁਸਤਾਨ ਵਿੱਚ ਹੋ ਰਿਹਾ ਤੇ ਜੋ ਹੁਣ ਹਿੰਦਿਆ ਚ ਹੋ ਰਿਹਾ ਤੇ ਅਮਰੀਕਾ ਚ ਹੋ ਰਿਹਾ ਜੇ ਅਸੀਂ ਸਿਰਫ ਆਪਣੇ ਹੀ ਚੈਨਲਾਂ ਨੂੰ ਸੁਣਾਂਗੇ ਆਪਣੇ ਹੀ ਲੋਕਾਂ ਦੇ ਲਾਈਵ ਸਪੀਕਰਾਂ ਨੂੰ ਕਰਕੇ ਇਹ ਸਿੱਖ ਮਸਲਿਆਂ ਵਿੱਚ ਜਿਹੜਾ ਦਸਮਗ੍ਰੰਥ ਨੂੰ ਪਸੰਦ ਕਰਦਾ ਨਹੀਂ ਪਸੰਦ ਕਰਦਾ ਉਹੀ ਲਾਊਡ ਸਪੀਕਰਾਂ ਨੂੰ ਅੱਗੇ ਕਰਕੇ ਜੋ ਇੰਗਲੈਂਡ ਵਿੱਚ ਇਸ ਵੇਲੇ ਚੱਲ ਰਿਹਾ ਰਾਗਮਾਲਾ ਨੂੰ ਲੈ ਕੇ ਈਸ਼ੂ ਬਣਾਇਆ ਹੋਇਆ ਇਹਨਾਂ ਚੀਜ਼ਾਂ ਤੋਂ ਬਾਹਰ ਆਉਣ ਦਾ ਇੱਕ ਜਿਹੜਾ ਮੂਲ ਰੂਪ ਹੈਗਾ ਜਿਹੜਾ ਇੱਕ ਰੂਟ ਲੈਵਲ ਤੇ ਬਾਹਰ ਆਉਣ ਦਾ ਤਰੀਕਾ ਕਿ ਆਪਣੀ ਵੋਕੈਬਲਰੀ ਆਪਣੀ ਸ਼ਬਦਾਵਲੀ ਆਪਣੇ ਮਨਾਂ ਨੂੰ ਕਲੀਨ ਕਰੋ ਫਿਰ ਲੱਪਣੇ ਜਿਹੜਾ ਨਜਿੱਠਣ ਦਾ ਤਰੀਕਾ ਤੁਹਾਡਾ ਬੈਟਰ ਹੋਊਗਾ ਜੇ ਤੁਸੀਂ ਉਹੀ ਜਿਹੇ ਲੋਕਾਂ ਨਾਲ ਬਲ ਕੇ ਕੰਮ ਕਰੋਗੇ ਤੇ ਇਵੈਂਚੁਅਲੀ ਉਹ ਲੋਕ ਭਾਵੇਂ ਘਟ ਹੋਣ ਉਹਨਾਂ ਦੀ ਸੰਖਿਆ ਭਾਵੇਂ ਘੱਟ ਹੋਵੇ ਉਹ ਇਵੈਂਚੁਅਲੀ ਵਿਕਟੋਰੀਅਸ ਹੁੰਦੇ ਨੇ ਮਤਲਬ ਉਹਨਾਂ ਦੀ ਫਤਿਹ ਹੋ ਜਾਂਦੀ ਆ ਪਰ ਉਹਨਾਂ ਦਾ ਸੋਚਣ ਦਾ ਤਰੀਕਾ ਤੇ ਉਹਨਾਂ ਦਾ ਕੰਮ ਦਾ ਤਰੀਕਾ ਹੇਟਰੇਡ ਤੋਂ ਬਾਹਰ ਆ ਕੇ ਪਿਆਰ ਦੇ ਵਿੱਚ ਹੋਣਾ ਚਾਹੀਦਾ ਬਿਲਕੁਲ ਬਹੁਤ ਵਧੀਆ ਗੱਲਾਂ ਕੀਤੀਆਂ ਜੀ ਤੁਸੀਂ 11:30 ਤੱਕ ਸਮਾਂ ਦਿੱਤਾ ਸੀ ਅਖੀਰ ਦੇ ਵਿੱਚ ਕੋਈ ਹੋਰ ਕੋਈ ਸ਼ਬਦ ਕਹਿਣੇ ਚਾਹੋ ਟਵੀਟ ਤੇ ਟਵਿੱਟਰ ਤੇ ਫੋਲੋ ਕਰ ਸਕਦੇ ਹੋ ਰਾਜਿੰਦਰ ਸਿੰਘ ਨੂੰ ਟਵਿੱਟਰ @1force 114 ਇਹ ਉਹਨਾਂ ਨੂੰ ਤੁਸੀਂ ਪੜਦੇ ਰਹੇ ਹੋ ਅਖੀਰ 'ਚ ਐ ਸਿੰਘ ਸਾਹਿਬ ਕੁਝ ਹੋਰ ਕਹਿਣਾ ਚਾਹੋ ਮੈਨੂੰ ਆਪਣਾ ਆਪਣੇ ਦੇਖੋ ਅੱਜ ਦਾ ਹਕੂਮ ਦੇ ਦਰਬਾਰ ਸਾਹਿਬ ਤੋਂ ਮੈਂ ਸੁਣਿਆ ਉਹਦੀ ਮੈਂ ਇੱਕ ਲਾਈਨ ਦੀ ਗੱਲ ਕਰਦਾ ਫਿਰ ਆਪਾਂ ਇਹਨੂੰ ਪੰਜਾਬ ਤੇ ਘੱਟ ਗਿੰਦੀਆਂ ਦੀ ਲੀਡਰਸ਼ਿਪ ਨਾਲ ਵੀ ਜੋੜਾਂਗੇ ਦੇਖੋ ਉੱਥੇ ਹਕੂਮ ਵਿੱਚ ਆਇਆ ਸੀਗਾ ਕਿ ਜਿਹੜੀ ਅੰਮ੍ਰਿਤ ਕਥਾ ਹੈਗੀ ਨਾ ਸੁਣ ਕਰਨ ਆਧਾਰੀ ਆਪਾਂ ਕੰਨਾਂ ਰਾਹੀਂ ਜਿਵੇਂ ਆਪਣਾ ਵੀ ਸ਼ੋ ਚੱਲ ਰਿਹਾ, ਸੁਣ ਰਹੇ ਆਂ ਆ ਇਸ ਤਰੀਕਿਆਂ ਆਪਾਂ YouTube ਵੀਡੀਓ ਤੇ ਯਾਰ ਹੋਰ ਤੇ ਆਂ ਬਟ ਕੁਐਸਚਨ ਸਾਡੇ ਸਾਹਮਣੇ ਇਹ ਖੜਾ ਅੱਜ ਦੇ ਕਿ ਕੰਨਾਂ ਦੀ ਸਪੋਰਟ ਕੀ ਆ ਸਪੋਰਟ ਤੋਂ ਭਾਵ ਹੁੰਦਾ ਕਿ ਕਿਸੇ ਨੂੰ ਅਸੀਂ ਆਧਾਰ ਬਣਾਇਆ ਹੋਇਆ ਸੁਣਦੇ ਆਪਾਂ ਬੜਾ ਕੁਛ ਆ ਤੇ ਉੱਥੇ ਗੱਲ ਆਈ ਆ ਕਿ ਜੇ ਅਮਰਤ ਕਹਾਣਾ ਸੁਣਾਗੇ ਨਾ ਕਰਨ ਕਰਮ ਇਥੇ ਲਈ ਆਇਆ ਇਅਰਜ਼ ਲਈ ਆਇਆ ਕਿ ਜਦ ਕੰਨਾਂ ਦੇ ਵਿੱਚ ਅੰਮ੍ਰਿਤ ਕਥਾ ਕੀ ਹੈ ਅੰਮ੍ਰਿਤ ਹੁੰਦੀ ਹੈ ਅਨ ਡਾਈਂਗ ਇਮੋਰਟਰ ਜਿਹੜੀ ਗੱਲ ਹਰ ਵੇਲੇ ਸੱਚ ਰਹੂਗੀ ਜਦ ਉਸ ਕਿਸਮ ਦੀ ਗੱਲਾਂ ਕਰਾਂਗੇ ਕੰਨਾਂ ਦੇ ਵਿੱਚ ਜਦ ਉਹ ਗੱਲਾਂ ਜਾਣੀਆਂ ਜਿਹੜੀਆਂ ਵਖਤੀ ਗੱਲਾਂ ਨੇ ਜਿਹੜੀਆਂ ਲੱਕ ਉੱਪਰ ਰੱਖਣ ਵਾਲੀਆਂ ਗੱਲਾਂ ਨੇ ਜਿਹੜੀਆਂ ਹੇਟ ਨੂੰ ਹੇਟ ਦੇ ਲੈਵਲ ਤੇ ਕਰਨ ਵਾਲੀਆਂ ਗੱਲਾਂ ਨੇ ਕਿੰਨੇ ਉਹ ਜਿਹੜੇ ਆਧਾਰ ਸਾਡਾ ਬਣਿਆ ਹੋਇਆ ਫਿਰ ਸਾਡਾ ਕੁਝ ਨਹੀਂ ਬਣੋ ਜੇ ਸਾਡਾ ਆਧਾਰ ਬਣ ਜਾਂਦਾ ਜਿੰਨੂ ਅਸੀਂ ਇਟਰਨਿਟੀ ਕਹਿੰਦੇ ਆ ਸੱਚ ਆਖਦੇ ਆ ਅੰਮ੍ਰਿਤ ਆਖਦੇ ਆ ਤਾਂ ਸਾਡਾ ਕੁਝ ਬਣ ਸਕਦਾ ਹੁਣ ਮੈਂ ਇਹਨੂੰ ਥੋੜਾ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਅਸੀਂ ਮੈਂ ਆਪ ਵੀ ਬੜੇ ਕਈ ਵਾਰ ਕਠੋਰ ਸ਼ਬਦ ਵਰਤਦਾ ਹੈਗਾ ਐਸਜੀਪੀਸੀ ਪ੍ਰਤੀ ਤੇ ਸਾਡੇ ਜਥੇਦਾਰ ਭਾਵੇਂ ਆ ਹੌਸਰਬੱਤ ਖਾਲਸੇ ਵਾਲੇ ਨੇ ਭਾਵੇਂ ਐਸਜੀਪੀਸੀ ਵਾਲੇ ਜਾਂ ਬਾਦਲਦਲ ਵਾਲੇ ਨੇ ਪਰ ਅੱਗੇ ਉਹਨਾਂ ਨੇ ਹਾਲਾਂਕਿ ਗੁਰਮੇਹਰ ਨੇ ਆਪ ਸਿੱਖ ਲੈਵਲ ਤੇ ਕੋਈ ਗੱਲ ਨਹੀਂ ਕੀਤੀ ਉਹਨੇ ਤਾਂ ਇੱਕ ਦੇ ਤੇ ਮੋਦੀ ਲੈਵਲ ਤੇ ਇੱਕ ਗੁੰਡਾਗਰਦੀ ਚੱਲੇ ਉਹਦੀ ਗੱਲ ਕੀਤੀ ਸੀ ਫਿਰ ਵੀ ਉਹ ਸਪੋਰਟ ਵਿੱਚ ਆ ਗਏ ਪੰਜਾਬ ਦਾ ਜਿਹੜਾ ਕਲਾਕਾਰ ਆ ਜਾਂ ਪੰਜਾਬ ਤੋਂ ਬਾਲੀਵੁੱਡ ਤੱਕ ਜਾ ਕੇ ਕਲਾਕਾਰ ਆ ਉਹ ਕਿਸੇ ਨੇ ਕੋਈ ਹਿੰਮਤ ਨਹੀਂ ਕੀਤੀ ਇਹ ਗੱਲ ਕਰਨ ਦੀ ਸਾਨੂੰ ਆਪਣੇ ਕਲਾਕਾਰਾਂ ਤੇ ਵੀ ਜਿਵੇਂ ਅਸੀਂ ਰਾਜਿਆਂ ਦੀ ਗੱਲ ਕਰਦੇ ਹਾਂ ਨਾ ਕਿ ਇਹ ਕਿਸੇ ਦੀ ਕੋਈ ਸਟੈਂਡ ਨਹੀਂ ਲੈਂਦੇ ਸਾਡਾ ਸੈਲੈਬ੍ਰਿਟੀ ਵੀ ਕੋਈ ਸਟੈਂਡ ਨਹੀਂ ਲੈ ਰਿਹਾ ਇਹ ਥੋ ਵੀ ਸਾਨੂੰ ਥੋੜਾ ਜਿਹਾ ਕਰਨਾ ਬਣਦਾ ਕਿ ਉਹਨਾਂ ਨੇ ਸਿਰਫ ਕਿ ਲੈ ਆਪਣੇ ਰੈਕੋਰਡ ਵੇਚਣ ਲਈ ਕੰਮ ਕਰਨਾ ਠੀਕ ਆ ਪਰ ਉਹ ਪੰਜਾਬ ਦੀਆਂ ਗੱਲਾਂ ਕਰਦੇ ਨੇ ਸਿੱਖਾਂ ਦੀਆਂ ਵੀ ਗੱਲਾਂ ਕਰਦੇ ਨੇ ਮਾਨਵਤਿਆਂ ਦੇ ਵੀ ਗੱਲਾਂ ਕਰਦੇ ਨੇ ਬਜਟ ਐਹੀ ਕੋਈ ਗੱਲ ਆਂਦੀ ਆ ਪੋਲਿਟਿਕਸ ਸਟੈਂਡ ਲੈਣ ਦੀ ਬਾਕੀ ਸੈਲਿਬ੍ਰਿਟੀ ਸਟੈਂਡ ਲੈ ਰਹੇ ਨੇ ਹਰਿਆਣੇ ਦੇ ਲੈ ਲੈਂਦੇ ਨੇ ਕਰਨਾਟਕ ਦੇ ਲੈ ਲੈਂਦੇ ਨੇ ਮਹਾਰਾਸ਼ਟਰ ਦੇ ਲੈ ਰਹੇ ਨੇ ਗੁਜਰਾਤ ਦੇ ਲੈ ਰਹੇ ਨੇ ਪੰਜਾਬ ਵਾਲੇ ਮਿਸਿੰਗ ਇਨ ਐਕਸ਼ਨ ਨੇ ਮਿਸਿੰਗ ਇਨ ਐਕਸ਼ਨ ਇਵਥਿੰਗ ਇਨ ਐਕਸ਼ਨ ਸੋ ਇਹ ਸਾਨੂੰ ਥੋੜਾ ਸੋਚਣਾ ਬਣਦਾ ਇਦੇ ਨਾਲ ਹੀ ਜਿਹੜੀਆਂ ਹੁਣੇ ਅ ਦੀ ਮਗਰ ਥੋੜੀ ਜਿਹੀ ਕਰਨੀ ਚਾਹੁੰਦਾ ਸੀਗਾ ਇਹਦੇ ਨਾਲ ਜੁੜੀ ਹੋਈ ਕਿ ਜਿਹੜੀ ਇਹ ਰਾਈਟ ਵਿੰਗ ਲੀਡਰਸ਼ਿਪ ਹੈਗੀ ਹੈ ਨਾ ਪੂਰੀ ਦੁਨੀਆ ਵਿੱਚ ਫੈਲੀ ਹੋਈ ਜਿਵੇਂ ਆਸਟ੍ਰੇਲੀਆ ਦੇ ਵਿੱਚ ਮੈਂ ਇੱਕ ਐਗਜ਼ਾਮਪਲ ਦਿੱਤਾ ਸੀਗਾ ਕਿ ਇੱਕ ਬੰਦੇ ਦਾ ਇਹ ਅਮਰੀਕਾ ਕੈਨੇਡਾ ਵਿੱਚ ਵੀ ਬਹੁਤ ਹੁੰਦਾ ਤੇ ਇੰਡੀਆ ਵਿੱਚ ਵੀ ਹੁੰਦਾ ਕਈ ਵਾਰੀ ਇਹ ਸਿਰਫ ਨਿਊਜ਼ਲੈਂਡ ਲਈ ਕੀਤਾ ਜਾਂਦਾ ਕਿ ਇਹਨਾਂ ਕਮਿਊਨਿਟੀ ਦੇ ਬਿਹਾਬ ਤੇ ਇੱਕ ਜਣਾ ਇੱਕ ਸਟੇਟਮੈਂਟ ਦੇ ਦਿੰਦਾ ਬਹੁਤ ਜ਼ਿਆਦਾ ਐਬਸੋਲੂਟ ਸਭ ਇਸ ਤੋਂ ਬਹੁਤ ਵਚਣ ਦੀ ਲੋੜ ਆ ਸਿੱਖਾਂ ਦੇ ਵੀ ਬੜੇ ਡਿਫਰੈਂਸਸ ਓਪੀਨੀਅਨ ਨੇ ਕਿਉਂਕਿ ਅਸੀਂ ਵੀ ਮਨੁੱਖ ਹੈਗੇ ਵੀ ਆਈਡੀਓਲੋਜੀਜ਼ ਵੱਖਰੀਆਂ ਵੱਖਰੀਆਂ ਨੇ ਸਾਨੂੰ ਜਿਹੜੇ ਵੀ ਲੀਡਰਸ਼ਿਪ ਪੋਜੀਸ਼ਨ 'ਚ ਹੈਗੇ ਨੇ ਉਹਨਾਂ ਬੇਨਤੀ ਮੈਂ ਕਰਾਂ ਕਿ ਸਟੇਟਮੈਂਟ ਨਾ ਦਾਓ ਭਾਵੇਂ ਹੋਮੋਸੈਕਸ਼ੁਅਲਿਟੀ ਬਾਰੇ ਆ ਤੇ ਭਾਵੇਂ ਉਹ ਕਿਤੇ ਪਾਲਿਸੀ ਬਾਰੇ ਆ ਕਿਉਂਕਿ ਨਾ ਕੋਈ ਸਾਡੀ ਸਰਵੇ ਕੀਤੇ ਹੁੰਦੇ ਨੇ ਨਾ ਗੁਰਵਾਣੀ ਦੀ ਸ਼੍ਰੇਣੀ ਹੁੰਦੀ ਹੈ ਕਿ ਅਸੀਂ ਸਟੇਟਮੈਂਟ ਦੇ ਦਿੰਦੇ ਆ ਤਾਂ ਸਾਡੇ ਬਹੁਤ ਖਿਲਾਫ ਜਾਂਦਾ ਸੈਕਿੰਡ ਗੰਗ ਜਿਹੜੇ ਛੋਤੇ ਦੇ ਲੈਵਲ ਤੇ ਆਪਾਂ ਬੈਠੇ ਆ ਜਾਂ ਉਹਨਾਂ ਦੇ ਸਟੇਟਮੈਂਟ ਨੂੰ ਸੁਣਦੇ ਆ ਸਾਨੂੰ ਵੀ ਇੱਕ ਕੁਝ ਖੱਦੀ ਵਾਰ ਪੁੱਛ ਲੈਣਾ ਚਾਹੀਦਾ ਕਿ ਭਾਈ ਇਹ ਸਟੇਟਮੈਂਟ ਹੈਗਾ ਕੋਈ ਸਰਵੇ ਹੈਗਾ ਕੋਈ ਮਤਲਬ ਕੀ ਹੈ ਇਹਦੇ ਪਿੱਛੇ ਪੁੱਛ ਲੈਣੀ ਚਾਹੀਦੀ ਆ ਕਿਉਂਕਿ ਇਹ ਅਮਰੀਕਾ ਕੈਨੇਡਾ ਤੇ ਵੈਸਟਰਨ ਕੰਟਰੀਜ਼ ਵਿੱਚ ਤੇ ਇੰਡੀਆ ਤੇ ਪੰਜਾਬ ਦੇ ਵਿੱਚ ਵੀ ਬਹੁਤ ਹੁੰਦਾ ਕਿ ਉਹਦੀ ਨਿਊਜ਼ ਲੱਗ ਜਾਂਦੀ ਹੈ ਤੇ ਸਾਨੂੰ ਪਤਾ ਫਟਾਫਟ ਨਿਊਜ਼ ਲੱਗਦੀ ਆ ਕਈ ਵਾਰੀ ਉਹ دہشت ਦੇ ਰੂਪ ਵਿੱਚ ਬਤਲਾਈ ਜਾਂਦੀ ਹੈ ਜਿਵੇਂ ਪਿਛਲੇ ਦਿਨੀਆ ਇੰਡੀਆ ਦੇ ਵਿੱਚ ਨੇ ਕਾਫੀ ਨਿਊਜ਼ ਚੱਲਦੀ ਰਹੀ ਕਿ ਕੈਨੇਡਾ ਤੇ ਸਿੱਖ ਹਤੰਕਵਾਦੀ ਆ ਕੇ ਆਈਏ ਸਾਡੇ ਨਾਲ ਰਣ ਕੇ ਹੁਣ ਪੰਗੇ ਖੜੇ ਕਰਨ ਲੱਗਿਆਂਦੇ ਹੁਣ ਉਹਦਾ ਕੋਈ ਬੇਸਿਸ ਸਿੱਖ ਵਰਲਡ ਦੇ ਆ ਤੇ ਜਿਹੜਾ ਗੱਲ ਮੈਂ ਅੱਜ ਕਰ ਰਿਹਾ ਸੀ ਉਹ ਕਰਦਾ ਹੀ ਇਹ ਆ ਉਹਦੇ ਪਿੱਛੇ ਲੌਜੀਕ ਘੱਟ ਹੁੰਦਾ ਉਹਦੇ ਪਿੱਛੇ ਹੁੰਦਾ ਕਿ ਲੋਕਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਫਟੋ ਜਿਹੜੀ ਇੱਕ ਕਿਸਮ ਦੇ ਲੋਕ ਦੂਜੀ ਕਿਸਮ ਦੇ ਲੋਕਾਂ ਦੇ ਨਾਲ ਨਫਰਤ ਕਰਨ ਲੱਗ ਜਾਣ ਇਹ ਚੀਜ਼ ਹਰ ਥਾਂ ਤੇ ਇਸ ਵੇਲੇ ਚੱਲ ਰਹੀ ਆ ਸਿੱਖਾਂ ਨੂੰ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਕੈਨੇਡੀਅਨ ਨੂੰ ਸਾਰੀ ਦੁਨੀਆ ਦੇ ਥੈਂਕ ਯੂ ਸੋ ਮੱਚ ਫੇਰ ਆਪਣੀ ਗੱਲਬਾਤ ਹੁੰਦੀ ਰਹੇ ਇਸਨ ਸਰਾਹਿੰਦਰ ਸਿੰਘ ਟੈਕਸਾਸ ਤੋਂ ਬਪਾਰਕ ਸੰਦੇਸ਼ਾਂ ਤੋਂ ਬਾਅਦ ਸੀ ਡਬਲਯੂ ਸੀ ਤੋਂ ਅਮਨ ਖਹਿਰਾ ਗੱਲਬਾਤ ਕਰਨਗੇ ਅਗਲੇ ਮਹਿਮਾਨ ਮੇਰੇ ਨਾਲ ਸੀ ਡਬਲਯੂ ਸੀ ਤੋਂ ਅਮਨ ਖਹਿਰਾ ਨੇ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਨੀ ਚਾਹੁੰਦਾ ਖਾਸ ਇੱਕ ਵਿਸ਼ੇ ਤੇ ਅੱਜ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਦੇ ਬਾਰੇ ਹੀ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਤੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਨਮਸਕਾਰ ਤੇ ਅਦਾਬ ਇੱਥੇ ਦੀ ਰੈ ਆਪਾਂ ਉਹਦੇ ਬਾਰੇ ਬੜੇ ਭੁਲੇਖੇ ਨੇ ਅੱਜ ਤੋਂ 15-18 ਸਾਲ ਪਹਿਲਾਂ ਰਟਰਨਿੰਗ ਰੈਜ਼ੀਡੈਂਟ ਪਰਮਿਟ ਲੈਣਾ ਲੈ ਪੈਂਦਾ ਸੀ 180 ਦਿਨਾਂ ਤੋਂ ਉੱਪਰ ਤੇ ਬੜਾ ਪ੍ਰੋਸੈਸ ਸੀ ਹੁਣ ਉਸ ਦਾ ਰੱਖਣ ਦੇ ਲਈ ਉਸ ਸ਼ਰਤਾਂ ਕੀ ਨੇ ਜੀ ਕਿੰਨੇ ਦਿਨ ਤੁਸੀਂ ਕੈਨੇਡਾ ਦੇ ਵਿੱਚ ਚਾਹੀਦੇ ਜਦੋਂ ਵੀ ਕੋਈ ਇੰਡੀਵਿਜੂਅਲ ਪਰਮਨੈਂਟ ਇਮੀਗ੍ਰੈਂਟ ਬਣ ਜਾਂਦਾ ਤਾਂ ਉਹਨਾਂ ਨੂੰ ਕੈਨੇਡਾ ਦੀ ਆਪਣੀ ਇਮੀਗ੍ਰੇਸ਼ਨ ਮੇਨਟੇਨ ਕਰ ਲਈ ਐ ਪੀਆ ਰੈਜ਼ਿਡੈਂਸ ਰੱਖਣ ਲਈ ਜਿਹਨੂੰ ਕਿ ਰੈਜ਼ਿਡੈਂਸੀ ਆਬਲੀਗੇਸ਼ਨ ਕਿਹਾ ਜਾਂਦਾ ਉਹ ਰੱਖਣ ਲਈ ਉਹਨਾਂ ਨੂੰ 730 ਰਹਿ ਰਹੇ ਕੈਨੇਡੀਅਨ ਕੰਪਨੀ ਹੋਣ ਔਰ ਉਹਨਾਂ ਦੀ ਜਿਹੜੀ ਏਰੀਆ ਆਫ ਵਰਕ ਹੈ ਉਹ ਕੈਨੇਡਾ ਤੋਂ ਬਾਹਰ ਹੈ ਜਿਵੇਂ ਕੈਨੇਡੀਅਨ ਕੰਪਨੀ ਬਾਹਰ ਪਿਆ ਹੋਇਆ ਉਹ ਇਹਦੇ ਬਿਤੇ ਮੈਂ ਅੱਗੇ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਣਾ ਚਾਹੂੰਗਾ ਕਿ ਕਿਸ ਤਰ੍ਹਾਂ ਦੀ ਕੰਪਨੀ ਜਿਹੜੀ ਹਾਇਰ ਕਰ ਸਕਦੀ ਔਰ ਭੇਜ ਸਕਦੀ ਹੈ ਇਸ ਇਲਾਵਾ ਜੇ ਤੁਸੀਂ ਕਿਸੇ ਪਬਲਿਕ ਜੇ ਤੁਸੀਂ ਤੁਹਾਨੂੰ ਬਾਹਰ ਵੀ ਤੁਹਾਡੇ ਜਿਹੜੇ ਦਿਨ ਨੇ ਉਹ ਗਿਨੇ ਜਾਂਦੇ ਨੇ ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਪਾਊਸ ਨੂੰ ਕੰਪਨੀ ਕਰਿਓ ਗਿਨੇ ਜਾਂਦੇ ਨੇ ਔਰ ਇਸ ਤੋਂ ਇਲਾਵਾ इवन ਫਰਦਰ ਜੇ ਆਪਾਂ 또 ਥੋੜਾ ਹੋਰ ਅੱਗੇ ਜਾਈਏ ਜੇ ਤੁਹਾਡੇ ਸਪਾਊਸ ਪਰਮਨੈਂਟ ਨੇ ਪਰ ਕੀਤਾ ਹੋਇਆ ਔਰ ਉਹਨਾਂ ਨੂੰ ਬਾਹਰ ਭੇਜਿਆ ਹੋਇਆ ਕੰਪਨੀ ਕਰ ਰਹੇ ਹੋ ਫਿਰ ਵੀ ਜਿਹੜੇ ਦਿਨ ਨੇ ਇਹ ਗਿਨੇ ਜਾਣਗੇ ਔਰ ਇਸ ਤੋਂ ਇਲਾਵਾ ਜੇ ਤੁਸੀਂ ਡਿਪੈਂਡੈਂਟ ਚਾਈਲਡ ਹੋ ਹੁਣ ਡਿਪੈਂਡੈਂਟ ਚਾਈਲਡ ਦੀ ਡੈਫੀਨੇਸ਼ਨ ਵੀ ਬਦਲ ਗਈ ਹੈ 19 ਸਾਲ ਹੋ ਗਈ ਉਮਰ ਜੇ ਤੁਸੀਂ 19 ਸਾਲ ਤੋਂ ਕੱਟ ਮੁਰ ਦੇ ਡਿਪੈਂਡੈਂਟ ਚਾਈਲਡ ਔਰ ਤੁਸੀਂ ਆਪਣੇ ਕੈਨੇਡੀਅਨ ਕਿਸੇ ਹੋ ਫਿਰ ਵੀ ਤੁਹਾਡੇ ਜਿਹੜੇ ਦਿਨ ਨੇ ਉਹ ਗਿਨੇ ਜਾਣਗੇ ਨਾਓ ਇਹਦੇ ਚ ਪਰਮਨੈਂਟ ਰੈਜ਼ਿਡੈਂਸੀ ਰੱਖਣ ਲਈ ਫਿਜ਼ੀਕਲ ਪ੍ਰੈਜ਼ੈਂਸ ਦੀ ਮੇਨਟੇਨ ਕਰ ਸਕਦੇ ਹੋ ਜਿਹੜੀਆਂ ਆਪਾਂ ਹੋਰ ਫੈਕਟਰਸ ਦੀ ਗੱਲ ਕੀਤੀ ਹੈ ਜੇ ਤੁਸੀਂ ਉਹਨਾਂ ਨੂੰ ਵੀ ਕਿਸੇ ਵੀ ਇੱਕ ਸ਼ਰਤ ਨੂੰ ਪੂਰਾ ਕਰ ਦਿੰਦੇ ਹੋ ਤਾਂ ਤੁਸੀਂ ਆਪਣੀ ਰੈਜ਼ਿਡੈਂਸੀ ਜਿਹੜੀ ਹੈ ਕੈਨੇਡਾ ਦੇ ਵਿੱਚ ਰੱਖ ਸਕਦੇ ਅੱਛਾ ਜੀ ਇੱਥੇ ਦੀ ਕੰਪਨੀ ਤੋਂ ਬਿਨਾ ਜੇ ਅਸੀਂ ਉੱਥੇ ਆਪਣਾ ਕੋਈ ਵੱਡਾ ਦਾਰ ਸਕیل ਦਾ ਬਿਜ਼ਨਸ ਹੈ ਜਿਹੜਾ ਆਪਣੇ ਭਾਰਤ ਦੇ ਵਿੱਚ ਉਹਦਾ ਦਰਵਾ ਪਾ ਕੇ ਵੱਧ ਸਮਾਂ ਰਹਿ ਸਕਦੇ ਆ ਉਸ ਨੂੰ ਕਨਸਿਡਰ ਕਰਦੇ ਆ ਇਹ ਨਹੀਂ ਜੀ ਉਹ ਕਿਉਂਕਿ ਮੈਟਰ ਆਫ ਕਨਵੀਨੀਅੰਸ ਹੈ ਜਾਂ ਤੁਹਾਡਾ ਕੋਈ ਇਕਨੋਮਿਕ ਬੈਨੀਫਿਟ ਹੈ ਜਾਂ ਤੁਸੀਂ ਕੈਨੇਡਾ ਨਾਲ ਤੁਹਾਡੀ ਕੋਈ ਟਾਈਜ਼ ਨਹੀਂ ਹੈ ਉਹਨੂੰ ਗਿਣਿਆ ਨਹੀਂ ਜਾਏਗਾ ਜੇ ਤੁਸੀਂ ਆਪਣੇ ਕੰਮ ਲਈ ਬਾਹਰ ਰਹਿ ਰਹੇ ਹੋ ਆ ਤਾਂ ਫੇਰ ਤੁਹਾਡੇ ਜਿਹੜੇ ਦਿਨ ਨੇ ਉਹ ਕੰਪਲਾਈਂਸ ਦੇ ਵਿੱਚ ਨਹੀਂ ਆਉਂਗੇ ਤੁਸੀਂ ਬ੍ਰੀਚ ਕਰੋਗੇ ਜਿਹੜਾ ਸੈਕਸ਼ਨ 28 ਆ ਤਾਂ ਸੁਰੂ ਜਿਹੜੀ ਆਪਰੇਸ਼ਨ ਨੂੰ ਨਾਮੁਲਗੀਤੀ ਜਾਊਗੀ 2 ਸਾਲ ਖੈਰਾ ਗਿਣੇ ਕਿਵੇਂ ਜਾਂਦੇ ਗਿਣੇ ਬਹੁਤ ਇੰਪੋਰਟੈਂਟ ਸਵਾਲ ਜੀ ਬੀਤੇ ਸਾਲ ਦਾ ਪੀਰੀਅਡ ਆ ਗੱਲ ਕਰਦੇ ਆ ਵੀ ਸਾਲਾਂ ਦੇ ਵਿੱਚ 2 ਸਾਲ ਤੁਸੀਂ ਕੈਨੇਡਾ ਦੇ ਵਿੱਚ ਰਹਿਣਾ ਫਰਸਟ ਆਫ ਆਲ ਜਿਹੜੇ ਗਿਣੇ ਜਾਣੇ ਆ ਉਹ ਜਦੋਂ ਤੁਸੀਂ ਮੈਂ ਥੋੜਾ ਬੈਕਗਰਾਉਂਡ ਤੇ ਜਾਣਾ ਚਾਹਾਂ ਗਿਲਸਬ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਵੀ ਭਾਵੇਂ ਸਮੇਂ ਦੇ ਵਿੱਚ ਵੀ 183 ਦਿਨ ਜੇ ਤੁਸੀਂ ਰੈ residenc y ਮੇਨਟੇਨ ਕਰਨੀ ਹੁੰਦੀ ਸੀ ਤਾਂ ਤੁਸੀਂ 6 ਮਹੀਨਿਆਂ ਦੇ ਰਹਿ ਜਾਂਦੀ ਸੀ ਨਾਓ ਇਹ ਜਿਹੜਾ ਕਾਨੂੰਨ ਬਦਲਿਆ ਗਿਆ 2002 ਜੂਨ ਦੇ ਵਿੱਚ ਜਦੋਂ ਨਵਾਂ ਇਮੀਗ੍ਰੇਸ਼ਨ ਐਕਟ ਆਇਆ ਉਹਦੇ ਵਿੱਚ ਇਹਨਾਂ ਨੇ ਸੋਧ ਕਰਕੇ ਉਹਦੀ ਜਿਹੜੀ ਰੈ ਨੂੰ ਮੇਨਟੇਨ ਕਰਨ ਨੂੰ ਥੋੜਾ ਹੋਰ ਫਲੈਕਸੀਬਲ ਬਣਾਇਆ ਵੀ ਜਿਹੜੇ ਵਿਅਕਤੀ ਕੈਨੇਡਾ ਦੇ ਵਿੱਚ ਸੈਟਲ ਨਹੀਂ ਹੋ ਪਾਉਂਦੇ ਹੋ ਜਾਣ ਔਰ ਆਪਣੀ ਇਮੀਗ੍ਰੇਸ਼ਨ ਨੂੰ ਵੀ ਮੇਨਟੇਨ ਰੱਖ ਲੈਣ ਉਹਦੇ ਲਈ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਸੀ ਕੀਤਾ ਜਿਹਦੇ ਚ ਲਿਖਿਆ ਗਿਆ ਵੀ ਜੇ ਕੋਈ 5 ਸਾਲਾਂ ਦੇ ਵਿੱਚ 2 ਸਾਲ ਕੈਨੇਡਾ ਵਿੱਚ ਰਹਿੰਦਾ ਜਿਹੜੀ ਸ਼ਰਤ ਆਪਾਂ ਗੱਲ ਕਰ ਸੀ ਕੰਡੀਸ਼ਨ ਕਿਸੇ ਵੀ ਨੂੰ ਮੀਟ ਕਰ ਲੈਂਦਾ ਤਾਂ ਉਹਦੀ ਰੈਜ਼ੀਡੈਂਸੀ ਜਿਹੜੀ ਮੰਨੀ ਜਾਣੀ ਚਾਹੀਦੀ ਹੈ ਨਾਓ ਇਹ ਨੂੰ ਕਰਨ ਦੇ ਲਈ ਕਿਉਂਕਿ ਇਹ ਕਿਸ ਤਰ੍ਹਾਂ ਪਤਾ ਲੱਗੇ ਵਿਅਕਤੀ ਕਿ ਕਿੰਨੇ ਵਾਰ ਵਿਅਕਤੀ ਟਰੈਵਲ ਕਰਦਾ ਹੈ 5 ਸਾਲਾਂ ਦੇ ਵਿੱਚ ਉਹਨੂੰ ਮੈਜ਼ਰ ਕਰਦੇ ਲਈ ਪਰਮਨੈਂਟ ਰੈਜ਼ੀਡੈਂਟ ਕਾਰਡ ਬਣਾਇਆ ਗਿਆ ਸੋ ਟੈਕਨੀਕਲੀ ਜੇ ਕੋਈ ਵਿਅਕਤੀ ਇੱਕ ਵਾਰ ਪਰਮਨੈਂਟ ਦਾ ਬਣ ਜਾਂਦਾ ਉਹ ਆਪਣੀ ਰੈ residenciy ਨੂੰ ਰੀਲਿੰਗੁਇਸ਼ ਕਰਦਾ ਵੋਲੰਟਰੀ ਖੁਦ ਨਹੀਂ ਛੱਡਦਾ ਉਹ ਸਦਾ ਲਈ ਪਰਮਨੈਂਟ ਰੈ resident ਸਟੇਟਸ ਉਹਦਾ ਜਾਂਦਾ ਚਾਹੇ ਤੁਸੀਂ ਸਾਰੀ ਵੀ ਤੁਸੀਂ ਪਰਮਨੈਂਟ ਰੈ residency ਪਰਮਨੈਂਟ ਰੈ resident ਹੀ ਕਾਰਡ ਉਹ ਤੁਹਾਨੂੰ ਕੰਟਰੀ ਦੇ ਵਿੱਚ ਐਂਟਰੀ ਦਵਾਉਂਦਾ ਜੇ ਤੁਡੇ ਕੋਲ ਪਰਮਨੈਂਟ ਰੈਜ਼ੀਡੈਂਸੀ ਕਾਰਡ ਐਕਸਪਾਇਰ ਹੋ ਗਿਆ ਤਾਂ ਫਿਰ ਤੁਹਾਡੇ ਕੋਲ ਟ੍ਰੈਵਲ ਡਾਕੂਮੈਂਟ ਜਿਹੜਾ ਵੈਲਿਡ ਹੋਣਾ ਚਾਹੀਦਾ ਟੂ ਰੀਐਂਟਰ ਕਹਿਣਾ ਹੈ ਨਾ ਇਹ ਜੇ ਜਦ ਤੁਸੀਂ ਰੀਐਂਟਰ ਕਰਦੇ ਮੇਨਟੇਨ ਕਰਨ ਦੇ ਲਈ ਤੁਹਾਡੇ ਉਹ ਹੋ ਰਹੇ ਤੁਹਾਡਾ ਪਰਮਨੈਂਟ ਰੈਜ਼ੀਡੈਂਟ ਕਾਰਡ ਐਕਸਪਾਇਰ ਹੋ ਰਿਹਾ ਤੱਕ ਕਰਕੇ ਪਲੀਜ਼ ਰੀਯੂਲ ਅਪਲੀਕੇਸ਼ਨ ਨਾ ਫਾਈਲ ਕਰੋ ਕਿਉਂਕਿ ਜੇਪਸੀ ਦਿਨ ਪੂਰੀ ਕਰ ਰਹੇ ਚਾਹੇ ਤੁਹਾਡੇ ਹੱਥ ਵਿੱਚ ਪੀਆਰ ਕਾਰਡ ਵੈਲ ਨਹੀਂ ਹੈ ਤੇ ਵੀ ਤੁਸੀਂ ਕੈਨੇਡਾ ਦੇ ਵਿੱਚ ਮੌਜੂਦ ਹੋ ਸਟਿਲ ਵੀ ਤੁਸੀਂ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟ ਹੀ કહਲਾਇ ਜਾਓਗੇ ابانਸਾਲਵਿਚ ਨਾ ਜੋ ਵੀ ਤੁਸੀਂ ਅਪਲਾਈ ਕਰਨਾ ਹੈ ਆਪਣਾ है ਪੀਰ ਕਾਰਡ ਉਸ ਵਕਤ ਤੋਂ ਪਿਛਲੇ 5 ਸਾਲ ਚਾਤੀ ਮਾਰਨੀ ਹੈ ਪਿਛਲੇ 5 ਸਾਲਾਂ ਚ ਦੇਖਣਾ ਵੀ ਮੇਰੇ 2 ਸਾਲ ਪੂਰੇ ਹੋ ਰਹੇ ਨੇ ਫੇਰ ਹੀ ਉਹ ਐਪਲੀਕੇਸ਼ਨ ਇਨੀਸ਼ੀਏਟ ਕਰੋ ਕਿਉਂਕਿ ਜੇ ਤੁਸੀਂ ਐਪਲੀਕੇਸ਼ਨ ਪਹਿਲਾਂ ਤੋ ਟੈਸਟ ਕਰਿਆ ਜਾਂਦਾ ਵੀ ਤੁਸੀਂ 2 ਸਾਲ ਪੂਰੇ ਕਰਦੇ ਹੋ ਜਾਂ ਨਹੀਂ ਕਰਦੇ ਤੁਸੀਂ 2 ਸਾਲ ਪੂਰੇ ਕਰ ਭਾਵੇਂ ਕਿ ਤੁਹਾਡਾ ਪੀਆਰ ਕਾਰਡ ਐਕਸਪਾਇਰ ਹੋਏ ਨੂੰ 1.5 ਸਾਲ ਹੋ ਗਏ ਜਾਂ 2 ਮੈਟਰ ਹੀ ਕਰਦਾ ਤੁਸੀਂ ਕੈਨੇਡਾ ਚ ਫਿਜ਼ੀਕਲੀ ਪ੍ਰੈਜ਼ੈਂਟ ਦੀ ਕੋਈ ਵੀ ਇੱਕ ਰਿਕੁਆਇਰਮੈਂਟ ਪੂਰਾ ਕਰਦੇ ਹੋ ਤਾਂ ਤੁਹਾਨੂੰ ਨਵਾਂ ਪੀਆਰ ਕਾਰਡ ਹੈ ਜਿਹੜਾ ਕਰ ਦਿੱਤਾ ਜਾਏਗਾ ਅੱਛਾ ਜੀ ਪੰਗਾ ਬਹੁਤ ਉੱਥੋਂ ਚੰਡ ਤੋਂ ਪੈਂਦਾ ਮੰ ਲੋ ਵੀ ਮੈਨੂੰ ਸਮਾਂ ਹੋ ਗਿਆ ਮੈਂ ਲੀਗਲ ਵੀਜ਼ਾ ਲੈ ਕੇ ਗਿਆ ਮੈਂ ਭਾਰਤ ਚ 3 ਸਾਲ ਮੈਂ ਰਹਿਣਾ ਮੇਰੇ ਕੋਲ OCI ਹੈ ਜਾਂ ਹੈ ਵੀਜ਼ਾ ਲੈ ਗਿਆ 10 ਸਾਲ ਦਾ ਲੈ ਗਿਆ ਰੈਜ਼ੀਡੈਂਸ ਤੇ ਕਾਰਡ ਮੇਰੇ ਹੱਥ ਚ ਹੈ ਤੇ ਇਧਰੋਂ ਮੈਂ ਪੂਰਾ ਨਹੀਂ ਕਰਦਾ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉੱਥੇ ਇਮੀਗ੍ਰੇਸ਼ਨ ਵਾਲੇ ਐਨਕਾਂ ਦੇ ਉੱਪਰ ਦੀ ਝਾਕੀ ਜਾਂਦੇ ਉੱਥੋਂ ਹੀ ਨਹੀਂ ਚੰਡ ਦਿੰਦੇ ਉਹਨਾਂ ਕੋਲ ਕੀ ਹੱਕ ਆ ਮੈਨੂੰ ਰੋਕਣ ਦਾ ਜੀ ਉਹਨਾਂ ਕੋਲ ਕੋਈ ਹੱਕ ਨਹੀਂ ਹੈ ਜੇ ਤੁਹਾਡੇ ਕੋਲ ਗਿਲਸਾਬ ਪਰਮਨੈਂਟ ਰੈਜ਼ੀਡੈਂਟ ਕਾਰਡ ਵੈਲਿਡ ਹੈ ਚਾਹੇ ਤੁਸੀਂ ਉਹਦੇ ਲਾਸਟ ਡੇ ਨੂੰ ਟਰੈਵਲ ਕਰ ਰਹੇ ਹੈ ਜਿਹੜਾ ਇਹਨੂੰ ਗਵਰਨ ਕਰਦਾ ਹੈ ਉਹ ਰੂਲ ਇਹ ਫਿਜ਼ੀਕਲੀ ਲਾਸਟ 365 ਹੋ ਗਿਆ ਜਿਹੜਾ ਟਰੈਵਲ ਡਾਕੂਮੈਂਟ ਐਪਲੀਕੇਸ਼ਨ ਹੈ ਜੋ ਤੁਸੀਂ ਅਪਲਾਈ ਕਰਦੇ ਜੇ ਤੁਹਾਡਾ ਪੀਆਰ ਕਾਰਡ ਐਕਸਪਾਇਰ ਹੋ ਗਿਆ ਤਾਂ ਫਿਰ ਤੁਹਾਨੂੰ ਇਹ ਦੇ ਵੀਜ਼ਾ ਜੇ ਤੁਹਾਡਾ ਪੀਆਰ ਕਾਰਡ ਪੋਸਟ ਤੇ ਆ ਸਕਦੀ ਜਦੋਂ ਪੋਰਟ ਐਂਟਰੀ ਕੀਤਾ ਜਾਏਗਾ ਉਸ ਵਕਤ ਕੀ ਹੁੰਦਾ ਆਫੀਸਰ ਤੁਹਾਨੂੰ ਉਹ ਪੁੱਲ ਕਰ ਲੈਂਦੇ ਨੇ ਔਨ ਦਾ ਸਾਈਡ ਐਂਡ ਥੋੜੀ ਜਿਹੜੀ ਐਪਲੀਕੇਸ਼ਨ ਹੈ ਉਹਦੇ ਵਿੱਚ ਕੈਲਕੂਲੇਟ ਕਰਦੇ ਨੇ ਕਿਉਂਕਿ ਉਹ ਡੇਟ ਆਫ ਐਗਜ਼ਾਮੀਨੇਸ਼ਨ ਬਣ ਜਾਂਦੀ ਹੈ ਜਿਸ ਦਿਨ ਤੁਸੀਂ ਐਂਟਰ ਕਰ ਰਹੇ ਹੋ ਸੋ ਕੈਲਕੂਲੇਟ ਕਰਦੇ ਨੇ ਵੀ ਤੁਹਾਡੇ ਜਿਹੜੇ 730 ਦਿਨ ਨੇ ਕੀ ਤੁਸੀਂ ਪੂਰੇ ਕਰ ਪਾਉਗੇ ਜਾਂ ਨਹੀਂ ਪੂਰੇ ਕਰ ਪਾਉਗੇ ਜੀ ਉਹਨਾਂ ਨੂੰ ਕਾਈਂਡਲੀ ਕੋਈ ਵੀ ਤੇ ਸਾਈਨ ਨਾ ਕਰੋ ਜਿੱਥੇ ਤੁਹਾਡੀ ਜਿਹੜੀ ਪਰਮਨੈਂਟ ਰੈਜ਼ਿਡੈਂਸੀ ਹੈ ਉਹਦਾ ਰਾਈਟ ਆਫ ਅਪੀਲ ਤੁਸੀਂ ਗਿਵ ਅਪ ਕਰ ਰਹੇ ਹੋ। ਸੋ ਆਦਰਵਾਇਜ਼ ਪੋਰਟ ਤੇ ਤੁਹਾਨੂੰ ਬਾਅਦ ਆਏਗੀ ਜਿਹਦੇ ਚ ਲਿਖਾਏਗਾ ਵੀ ਤੁਸੀਂ ਬ੍ਰੀਚ ਕਰ ਗਏ ਤਾਂ ਤੁਸੀਂ ਸ਼ਾਇਦ ਪੂਰਾ ਨਾ ਕਰ ਪਾਓ ਪਰ ਨਾਰਮਲ ਕੇਸਿਸ ਦੇ ਵਿੱਚ ਇਹ ਜਿਹੜੇ ਸਰਕਮਸਟੈਂਸਸ ਹੁੰਦੇ। ਨਾਰਮਲ ਸਰਕਮਸਟੈਂਸਸ ਵਿੱਚ ਪੋਰਟ ਆਫ ਐਂਟਰੀ ਤੋਂ ਤੁਹਾਨੂੰ ਐਕਸੈਸ ਦੇ ਦਿੱਤਾ ਜਾਂਦਾ ਹੈ 올 ਦੇ ਸੀ ਇਜ਼ ਕਾਰਡ ਦੀ ਉਹ 2 ਸਾਲ ਦਾ ਜੇ ਸਮਾਂ ਪੂਰਾ ਨਹੀਂ ਹੋਇਆ ਪਿਛਲੇ 5 ਸਾਲਾਂ ਚ ਜਦੋਂ ਵੀ ਤੁਸੀਂ ਆਪਣੀ ਐਪਲੀਕੇਸ਼ਨ ਫਾਈਲ ਕਰਨ ਜਾ ਰਹੇ ਹੋ ਵੀ ਆ ਰੀਨਿਊਅਲ ਦੀ ਤਾਂ ਫਿਰ ਤੁਸੀਂ ਉਹਨੂੰ ਫਾਈਲ ਨਾ ਕਰੋ ਅਜਾ ਤੁਸੀਂ ਫਾਈਲ ਕਰਦਦੇ ਹੋ ਤਾਂ ਫੇਰ ਆਟੋਮੈਟਿਕਲੀ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਨਾ ਮਨਜ਼ੂਰ ਹੋਏਗੀ ਫੇਰ ਤੁਹਾਨੂੰ ਅਪੀਲ ਪ੍ਰੋਸੈਸ ਦੇ ਰਾਹੀਂ ਜਾਣਾ ਦੇ ਲਈ ਬਹੁਤ ਇਹਦੇ ਵਿੱਚ ਸਵਾਲ ਨੇ ਜੀ ਜਿਹਦੇ ਬਹੁਤ ਜਵਾਬ ਚਾਹੀਦੇ ਨੇ ਵੈਲਿਡ ਹੈ ਤੇ ਮੈਂ ਆ ਰਿਹਾ ਪਿਛਲੇ ਮੰਨ ਲਓ ਵੀ ਮੈਂ ਅੱਜ ਟ੍ਰੈਵਲ ਕਰ ਰਿਹਾ 2017 ਨੂੰ 2012 ਮਾਰਚ ਤੱਕ ਮੈਨੂੰ ਪਤਾ ਮੈਂ 2 ਸਾਲ ਇੱਥੇ ਰਿਹਾ ਨਹੀਂ ਮੇਰੇ ਕੋਲ ਸਮਾਂ ਘੱਟ ਹੈ ਤੇ ਮੈਨੂੰ ਐਂਟਰੀ ਤੁਸੀਂ ਕਹਿੰਦੇ ਹੋ ਵੀ ਮਿਲੇਗੀ ਇਥੋਂ ਤੇ ਮੈਂ ਉਹ 2 ਸਾਲ ਦਾ ਸਮਾਂ ਪੂਰਾ ਨਹੀਂ ਹਲੇ ਹੋਇਆ ਮੇਰਾ 5 ਸਾਲਾਂ ਚ ਮੈਂ 10 ਦਿਨ ਇੱਥੇ ਰਹਿ ਕੇ ਮੇਰਾ ਬਿਜ਼ਨਸ ਹੈ ਫੇਰ ਉੱਡ ਜਾਣਾ ਦੁਬਾਰਾ ਕਿ ਮੈਨੂੰ ਫੇਰ ਰੋਕਿਆ ਜਾਏਗਾ ਜੀ ਇਟ ਮੀਨਸ ਜਿਹੜਾ ਜੋ ਤੁਹਾਨੂੰ ਐਕਸੈਸ ਮਿਲ ਗਿਆ ਜੇ ਤੁਸੀਂ ਕੈਨੇਡਾ ਛੱਡ ਜਾ ਨਹੀਂਓ 10 ਦਿਨਾਂ ਬਾਅਦ ਤਾਂ ਯੈਸ ਫੇਰ ਤੁਹਾਡੂ ਹੈਗਾ ਦੁਬਾਰਾ ਰੀਐਂਟਰੀ ਨਹੀਂ ਕਰਨ ਦਿੱਤੀ ਜਾਏਗੀ ਵਰਤਨਾ ਪਏਗਾ ਜਿੱਥੇ ਤੁਹਾਨੂੰ ਟਰੈਵਲ ਡਾਕੂਮੈਂਟ ਐਪਲੀਕੇਸ਼ਨ ਫਾਈਲ ਕਰਨੀ ਪੈਗੀ ਉਹ ਐਪਲੀਕੇਸ਼ਨ ਤੁਹਾਡੀ ਨਾ ਮਨਜ਼ੂਰ ਹੋਏਗੀ ਪਹਿਲਾਂ ਤਾਂ ਵੀਜ਼ਾ ਕੀਤਾ ਜਾਏਗਾ ਜਿਹਦੇ ਵਿੱਚ ਤੁਹਾਨੂੰ ਅਪੀਲ ਦਾ ਰਾਈਟ ਮਿਲਦਾ ਤੁਸੀਂ ਅਪੀਲ ਫਾਈਲ ਕਰਨੀ ਡਿਵੀਜ਼ਨ ਵਿੱਚ ਜਿੱਥੇ ਬਿਫੋਰ ਦਾ ਜੱਜ ਤੁਸੀਂ ਕੇਸ ਹੈ ਉਹਨੂੰ ਪਲੀਟ ਕਰ ਦਿਓ ਨਾਓ ਇਹ ਹੀਡਿੰਗ ਆ ਇਸ ਇੰਪੋਰਟੈਂਟ ਹੈ ਤੁਸੀ ਆਪਣਾ ਕੇਸ ਪਲੀਟ ਕਰ ਰਹੇ ਹੋ ਓਨ ਹਿਊਮਨ ਕੰਪੈਸ਼ਨ ਗਰਾਉਂਡ ਜਿਹਦੇ ਵਿੱਚ ਬੈਸਟ ਇੰਟਰਸਟ ਆਫ ਦਾ ਚਾਈਲਡ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਹੈ ਉਹ ਦੇਖਿਆ ਜਾਂਦਾ ਕਿ ਕ੍ਰੀਡੈਂਟ ਆਇਟ ਤੇ ਇਸ ਸਿਚੂਏਸ਼ਨ ਦਾ ਕੀ ਇੰਪੈਕਟ ਆ ਰਿਹਾ ਹੈ ਨਾਓ ਜੋ ਨੈਗੇਟਿਵ ਇੰਪੈਕਟ ਪੈ ਰਿਹਾ ਹੁੰਦਾ ਤਾਂ ਤੁਹਾਡਾ ਕੇਸ ਬੜਾ ਸਿੱਧੇ ਤੌਰ ਤੇ ਤੁਹਾਡੇ ਹੱਕ ਦੇ ਵਿੱਚ ਹੋ ਜਾਂਦਾ ਆਦਰਵਾਈਸ ਬੈਸਟ ਇੰਟਰਸਟ ਆਫ ਦਾ ਚਾਈਲਡ ਇਨਵਾਲਡ ਨਹੀਂ ਹੈ ਕਿ ਡਾਇਰੈਕਟਲੀ ਜਿਹੜਾ ਇਫੈਕਟਡ ਬਾਈ ਦਾ ਡਿਸੀਜਨ ਹੈ ਤਾਂ ਫਿਰ ਤੁਹਾਡੇ ਹੋਰ ਕਾਰਨ ਵੀ ਦੇਖੇ ਜਾਂਦੇ ਨੇ ਤੁਸੀਂ ਕਿਉਂ ਛੱਡ ਕੇ ਗਏ ਸੀ ਕੀ ਆਪਦੀ ਕਨਵੀਨੀਅன்ஸ் ਸੀਗਾ ਔਰ ਬਿਓਂਡ ਤੁਹਾਡੇ ਕੰਟਰੋਲ ਤੋਂ ਬਾਹਰ ਸੀ فرض ਕੀਤਾ ਤੁਹਾਡੇ ਜਿਹੜੇ ਮਦਰ ਫਾਦਰ ਨੇ ਬਜ਼ੁਰਗ ਨੇ ਜਾਂ ਗ੍ਰੈਂਡ ਪੇਰੈਂਟਸ ਨੇ ਬਜ਼ੁਰਗ ਨੇ ਜਿਹੜੀ ਜਿਹਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਕੋਈ ਹੋਰ ਵਿਸ਼ਤ ਨਹੀਂ ਜਿਹੜਾ ਉਹਨਾਂ ਦੀ ਸੰਭਾਲ ਕਰ ਸਕਦਾ ਇਹ ਵੀ ਬਹੁਤ ਕਾਮਨ ਕਮਨ ਐਗਜ਼ਾਮਪਲ ਹੈ ਜਿਥੇ ਤੁਸੀਂ ਇੰਡੀਆ ਜਾਣਦੇ ਹੋ ਤੁਹਾਡਾ ਕੋਈ ਝਗੜਾ ਹੋ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਪੁਲਿਸ ਤੁਹਾਡਾ ਪਾਸਪੋਰਟ ਫੜ ਕੇ ਜਿੱਥੇ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਕੈਨੇਡਾ ਟਰੈਵਲ ਕਰਨਾ ਇਹੀ ਚੀਜ਼ ਤੁਸੀਂ ਸਾਬਤ ਕਰਨੀ ਹੈ ਜਦੋਂ ਹਿਊਮਨਿਟੇਰੀਅਨ ਕੰਪੈਸ਼ਨ ਗਰਾਉਂਡ ਤੇ ਸਪੈਸ਼ਲ ਰੀਲੀਫ ਮੰਗਦੇ ਹੋ ਜੱਜ ਦੇ ਕੋਲੋਂ ਤਾਂ ਉਹਨਾਂ ਨੂੰ ਵੀ ਇਹ ਤੁਸੀਂ ਪਲੀਡ ਕਰਦੇ ਹੋ ਇਸੇ ਗਰਾਉਂਡ ਨੂੰ ਕਿ ਇਸ وجہ ਕਰਕੇ ਮੈਂ ਕੈਨੇਡਾ ਨਹੀਂ ਸਕਿਆ ਹੁਣ ਉਹ ਜਿਹੜੀ ਵਜ੍ਹਾ ਉਹ ਐਗਜ਼ਿਸਟ ਨਹੀਂ ਕਰਦੀ ਹੈਗੀ ਔਰ ਦੇ ਵਿੱਚ ਜਿੰਨੀ ਵੀਰ ਵੀ ਤੁਸੀਂ ਕੈਨੇਡਾ ਵੱਖਰਾ ਵੱਖਰਾ ਹੁੰਦਾ ਪਰ ਇਹ ਕੇਸ ਬਹੁਤ ਕਾਮਨ ਕੇਸ ਸਾਡੇ ਕੋਲ ਆਉਂਦੇ ਨੇ ਕੋਈ ਝਗੜਾ ਹੋ ਜਾਂਦਾ ਹੈ ਕਿਸੇ ਦਾ ਟ੍ਰਾਂਸਪੋਰਟ ਹੈ ਉਹ ਆਪ ਦੇ ਕਬਜ਼ੇ 'ਚ ਰੱਖ ਲੈਂਦੀ ਹੈ ਔਰ ਤੁਹਾਨੂੰ ਪਾਸਪੋਰਟ ਨਹੀਂ ਦਿੱਤਾ ਜਾਂਦਾ ਵਾਪਸ ਨਹੀਂ ਕੀਤਾ ਜਾਂਦਾ ਆ ਜਾਂ ਤੁਹਾਡੇ ਬਜ਼ੁਰਗ ਪੇਰੈਂਟਸ ਨੇ ਉਹਨਾਂ ਦੀ ਮੈਡੀਕਲ ਅ ਐਮਰਜੈਂਸੀ ਹੋ ਜਾਂਦੀ ਹੈ ਜਿੱਥੇ ਉਹਨਾਂ ਦੇ ਹਾਲਾਤ ਇਹ ਜਿਹੇ ਬਣ ਜਾਂਦੇ ਨੇ ਵੀ ਤੁਸੀਂ ਛੱਡ ਕੇ ਵਾਪਸ ਦੇ ਵਿੱਚ ਇਹ ਕੰਪੈਸ਼ਨ ਗਰਾਉਂਡ ਦਾ ਜਿਹੜਾ ਸਪੈਸ਼ਲ ਰਿਲੀਫ ਉਹ ਤੁਹਾਨੂੰ ਦਿੱਤਾ ਜਾਂਦਾ ਪਰ ਜੇ ਤੁਸੀਂ ਇਹ ਕਹਿੰਦੇ ਹੋ ਵੀ ਮੇਰਾ ਬਹੁਤ ਬੜਾ ਸਾਰੋਗਾਰਸ ਜਾਂ ਮ ਨੂੰ ਹੋਣ ਸੀ ਤੇ ਮੇਰਾ ਮੇਰੀ ਜਿਹੜੀ ਇੰਡੀਆ ਚ ਜਿਹੜੇ ਮੇਰੇ ਹਾਲਾਤ ਸੀ ਕੈਨੇਡਾ ਤੋਂ ਬਾਹਰ ਮੇਰੇ ਹਾਲਾਤ ਬਹੁਤ ਹੀ ਵਧੀਆ ਸੀ ਇੱਥੇ ਮੈਨੂੰ ਸੈਟਲ ਹੋਣਾ ਬਹੁਤ ਡਿਫਿਕਲਟ ਹੋ ਗਿਆ ਕਿਉਂਕਿ ਕਾਨੂੰਨ ਇਟ ਸੈਲਫ ਹੀ ਬੜਾ ਲੀਨੈਂਟ ਔਰ ਫਲੈਕਸੀਬਲ ਐਸੇ ਕਰਕੇ ਜਿਹੜੀ ਤੁਹਾਡੀ ਆਰਗੂਮੈਂਟ ਕਨਵੀਨੀਅੰਸ ਦੇ ਬਣ ਜਾਂਦੇ ਨੇ ਤਾਂ ਤੁਹਾਡਾ ਜਿਹੜਾ ਤੁਹਾਨੂੰ ਸਪੈਸ਼ਲ ਅਮਨ ਖੈਰਾ ਜੀ ਇੱਕ ਬਹੁਤ ਵਧੀਆ ਵਿਸ਼ੇ ਤੇ ਗੱਲਬਾਤ ਕਰ ਰਹੇ ਨੇ ਖੈਰਾ ਸਾਹਿਬ ਆਪਣੇ ਕੋਲ 10 ਮਿੰਟ ਨੇ ਸਵਾਲ ਵੀ 3 ਨੇ ਦਿਓ ਸੋ ਬਰੇ ਬੀਤ ਕੇ ਤੁਸੀਂ ਕਿਹਾ ਉਹਦੇ ਪੀਆ ਕਦੇ ਵੀ ਜਿਹੜੀ ਉਹ ਖਤਮ ਨਹੀਂ ਹੋਏਗੀ ਜਦ ਤੱਕ ਉਹ ਖੁਦ ਨਹੀਂ ਕਹਿੰਦਾ ਫਿਰ ਉਹ ਵਾਪਸ ਕਿਵੇਂ ਆਊਗਾ ਪੰਜਾਬ ਤੋਂ ਜੇ ਉਹਨੂੰ ਬਹੁਤ ਸਮਾਂ ਹੋ ਗਿਆ ਹੋਵੇ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਟਰੈਵਲ ਡਾਕੂਮੈਂਟ ਅਪਲੀਕੇਸ਼ਨ ਟੂ ਕਮਬੈਕ ਟੂ ਕੈਨੇਡਾ ਤੇ ਫਿਰ ਉਸ ਤੋਂ ਬਾਅਦ ਤੁਹਾਡਾ ਉਸ ਐਪਲੀਕੇਸ਼ਨ ਤੇ ਡਿਸੀਜਨ ਲਿਆ ਜਾਂਦਾ ਉਸ ਵੀਜ਼ਾ ਪੋਸਟ ਜਾਂ ਐਮਬੈਸੀ ਦੇ ਵਿੱਚ ਤੁਸੀਂ ਦੇ ਵਿੱਚ ਜਿਹੜੀਆਂ ਪ੍ਰोसीਡਿੰਗਸ ਨੇ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਔਨ ਹਿਊਮਨਿਟੇਰੀਅਨ ਕੰਪੈਸ਼ਨ ਤੇ ਐਨਾਲਾਈਜ਼ ਕੀਤਾ ਜਾਂਦਾ ਔਰ ਤੁਸੀਂ ਜਿਹੜਾ ਆਪਣਾ ਇਮੀਗ੍ਰੇਸ਼ਨ ਸਟੇਟਸ ਹੈ ਜਿਹੜਾ ਤੁਸੀਂ ਲੂਜ਼ ਕਰ ਗਏ ਸੀ ਉਹਨੂੰ ਰੀਗੇਨ ਕਰ ਸਕਦੇ ਹੋ ਵੀ ਦੇ ਵਿੱਚ ਇੱਕ ਦਿਨ ਵੀ ਕੋਈ ਰਿਹਾ ਹੋਇਆ ਕੋਈ ਮੁਸ਼ਕਲ ਨਹੀਂ ਆਉਂਦੀ ਪੈਂਦਾ ਦੂਸਰੀ ਤੁਹਾਡੇ ਕੋਲ ਚੋਇਸ ਇਹੋ ਕਿ ਫੈਰਾ ਜੱਜ ਕਰਦੇ ਆ ਜਿਹਦੇ ਤੁਸੀਂ ਰਿਕੁਇਰ ਕਰਦੇ ਹੋ ਵੀ ਜੇ ਤੁਸੀਂ ਪ੍ਰਾਈਵੇਟਨਸ ਹੋ ਔਰ ਤੁਸੀਂ ਵਿਟਨਰ ਹੋਣ ਦੇ ਨਾਲ ਫਿਜ਼ੀਕਲੀ ਇਨ ਪਰਸਨ ਆਪਣੀ ਜਿਹੜੀ ਗਵਾਹੀ ਦੇਣਾ ਸਕਦੇ ਹੋ ਔਰ ਫਾਈਨਲ ਡਿਸਿਜਨ ਤੁਹਾਡੇ ਤਾਂ ਤੁਹਾਨੂੰ ਮਨਜ਼ੂਰੀ ਮਿਲ ਜਾਂਦੀ ਹੈ ਤੁਸੀਂ ਕੈਨੇਡਾ ਵਿੱਚ ਗਵਾਹ ਰੈਂਡ ਦੇ ਲਈ ਸਪੈਸ਼ਲੀ ਇਸ ਕੇਸ ਨੂੰ ਲੈ ਕੇ ਆ ਸਕਦੇ ਹੋ ਵਿਜ਼ਿਟਰ ਵੀਜ਼ਾ ਹਾਸਲ ਕਰਕੇ ਸਾਰੇ ਸਾਲ ਜਿਹੜੇ ਸਾਡੇ ਵੀਰ ਅਮਰੀਕਾ ਵਾਲੇ ਪਸੇ ਜਾਂਦੇ ਨੇ ਉਹਨਾਂ ਦੇ ਸਿਟੀਜ਼ਨਸ਼ਿਪ ਦੇ ਵਿੱਚ ਨਾ ਆਪਣੇ ਦਿਨ ਨਹੀਂ ਕੋਈ ਫਰਕ ਪੈਂਦਾ ਹੋਏਗਾ ਪਰ ਮੈਂ ਇੱਕ ਕੱਟ ਸ਼ਾਰਟ ਕਰਨਾ ਚਾਹੂੰਗਾ ਬਹੁਤ ਵਧੀਆ ਤੁਸੀਂ ਟੌਪਿਕ ਲੈ ਕੇ ਆਓ ਅਗਲੀ ਮੈਂ ਇਸ ਨੂੰ ਥੋੜਾ ਜਿਹਾ ਹੋਰ ਐਕਸਪੈਂਡ ਕਰਦੇ ਨੇ ਕੋਈ ਵੀ ਬਿਜ਼ਨਸ ਇਹ ਜਾ ਵਿਅਕਤੀ ਕਰਦਾ ਜਿਹੜਾ ਜਿਹਨੂੰ ਹਰ ਰੋਜ਼ ਆਰਡਰ ਕ੍ਰਾਸ ਕਰਨਾ ਪੈਂਦਾ ਉਹਦੀ ਨਾਟ ਓਨਲੀ ਉਹਨੂੰ ਪੀਆਰ ਕਾਰਡ ਕਿਉਂਕਿ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀਪੀਆਰ ਕਾਰਡ ਮੇਨਟੇਨ ਕਰਨ ਕੈਨੇਡੀਅਨ ਏਮਪਲੋਇਰ ਜਿਹੜਾ ਸੈਕਸ਼ਨ 28 ਕਲੋਜ਼ ਲੈ ਕੇ ਆਏ ਸੀ ਉਹਨਾਂ ਆਏ ਸੀ ਉਹਨਾਂ ਵਿਅਕਤੀ ਲਈ ਲੈ ਕੇ ਆਏ ਸੀ ਜਿਹੜੇ ਇਹਨਾਂ ਦਾ ਸਿਨੈਰੀਓ ਬਣਦਾ ਇਹਦਾ ਕੈਨੇਡਾ ਦੀ ਸਿਟੀਜ਼ਨਸ਼ਿਪ ਜਦੋਂ ਅਪਲਾਈ ਨੇ ਤਾਂ ਉਹਨਾਂ ਲਈ ਕੋਈ ਇਹ ਜਿਹੀ ਫਲੈਕਸੀਬਿਲਿਟੀ ਨਹੀਂ ਰੱਖੀ ਗਈ ਸਰਕਾਰ ਵੱਲੋਂ ਜਿੱਥੇ ਨੇ ਉੱਥੇ ਨਹੀਂ ਕੇ 12 ਮਿੰਟ ਹੋਏ ਆ ਜੀ ਲੋਕ ਸੱਜ ਦੇ ਤੁਹਾਡਾ ਸਵਾਗਤ ਹੈ ਜੋ ਜੋ ਵੋਟਾਂ ਨੇੜੇ ਆ ਰਹੀਆਂ 9 ਮਈ ਦੀਆਂ ਤੇ ਬੜੀ ਤੇਜ਼ੀ ਹੋਈ ਹੋਈ ਹੈ ਹਲੇ ਨਾਮਿਨੇਸ਼ਨ ਕੁਝ ਕੁ ਹਿੱਸਿਆਂ ਦੇ ਵਿੱਚ ਲਿਬਰਲ ਨੇ ਸੈਟਰਡੇ ਕਰਾਈ ਹੈ ਜਿਸ ਦੇ ਗੁਰਵਿੰਦਰ ਸਿੰਘ ਪ੍ਰਹਾਰ ਹੋਣੀ ਜਿਨ੍ਹਾਂ ਨੇ ਲਿਬਰਲ ਦੀ ਨਾਮਿਨੇਸ਼ਨ ਜਿੱਤੀ ਹੈ ਤੇ ਹੁਣ ਲਿਬਰਲ ਬੀਸੀ ਲਿਬਰਲ ਦੇ ਹੋਪ ਕੈਂਡੀਡੇਟ ਨੇ ਤੇ ਉਹਨਾਂ ਨੇ ਹੈਰੀ ਬੈਂਸ ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਫਾਈਟ ਹੋਣੀ ਐ ਐਨਡੀਪੀ ਬਲੋ ਹੈਰੀ ਬੈਂਸ ਨੇ ਤੇ ਹੁਣ ਲਿਬਰਲ ਵੱਲੋਂ ਅਫੀਸ਼ੀਅਲ ਜਿਹੜੇ ਕੈਂਡੀਡੇਟ ਨੇ ਉਹ ਗੁਰਵਿੰਦਰ ਸਿੰਘ ਪ੍ਰਹਾਰ ਨੇ ਗੁਰਵਿੰਦਰ ਸਿੰਘ ਪ੍ਰਹਾਰ ਮੇਰੇ ਨਾਲ ਨੇ ਉਹਨਾਂ ਤੋਂ ਪੁੱਛਦੇ ਆ ਕਿ ਰਾਜਨੀਤੀ ਵਾਰੇ ਆਉਣ ਦੇ ਵਿੱਚ ਇਸ ਦੇ ਬਾਰੇ ਤੁਹਾਡਾ ਉਹਨਾਂ ਦਾ ਮਨ ਕੀ ਹੈ ਤੇ ਭਾਈਚਾਰੇ ਦੇ ਵਿੱਚ ਉਹ ਵਿਚਰਦੇ ਰਹੇ ਆ ਕਿ ਇਹ ਜਿਹੀਆਂ ਚੀਜ਼ਾਂ ਉਹਨਾਂ ਨੇ ਮੰਨ ਚਾਹੀਆਂ ਕਿ ਜਿਹਦੇ ਲਈ ਉਹਨਾਂ ਨੂੰ ਇਸ ਵਾਰ ਆਉਣਾ ਪਿਆ ਰਵਿੰਦਰ ਸਿੰਘ ਪ੍ਰਹਾਰ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜੀ ਸਾਰੇ 1550 ਦੇ ਸੋਨਰੇ ਸ੍ਰੀ ਪੰਜਾਬ ਦੇ ਸਰੋਤਿਆਂ ਨੂੰ ਮੇਰੇ ਪਰੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡੀ ਅੱਛਾ ਜੀ ਤੁਸੀਂ ਚੰਗਾ ਭਲਾ ਆਪਣਾ ਬਿਜ਼ਨਸ ਚਲਾ ਰਹੇ ਹੋ ਵਧੀਆ ਤੁਹਾਡੀ ਕਮਾਈ ਹੈ ਭਾਈਚਾਰੇ ਦੇ ਵਿੱਚ ਤੁਸੀਂ ਵਿਚਰਦੇ ਰਹਿੰਦੇ ਹੋ ਰਾਜਨੀਤੀ ਵਾਲੇ ਪਾਸੇ ਇੱਕ ਅਕਾਊਂਟੈਂਟ ਤੋਂ ਲੈ ਕੇ ਰਾਜਨੀਤੀ ਦਾ ਸਫ਼ਰ ਇਹ ਕਿਵੇਂ ਮੰਚ ਆਇਆ ਇਹ ਜਿੱਥੇ ਤੁਸੀਂ ਜਿੱਦਾਂ ਤੁਸੀਂ ਜਾਣਦੇ ਆਪਾਂ ਕਈ ਚੜ੍ਹਦੇ ਇੱਥੇ ਮੈਂ ਬਜਰਦਾਸ ਹੋ ਗਿਆ ਕਮਿਊਨਿਟੀ ਮੈਂ ਸਾਰਾ ਇੱਥੇ ਆਪਣਾ ਬਿਜ਼ਨਸ ਸੈਟਅਪ ਕੀਤਾ ਆਲਮੋਸਟ ਸਾਲ ਹੋ ਗਏ ਮੈਨੂੰ ਬਿਜ਼ਨਸ ਕਰਦਿਆਂ ਨੂੰ ਕਮਿਊਨਿਟੀ ਦੇ ਵਿੱਚ ਤੇ ਕਾਫੀ ਅਸਲ ਤੋਂ ਪਿਛਲੇ ਅਰਲੀਸਟ 10 ਟਰਮਾਂ ਤੋਂ ਮੈਨੂੰ ਕਈ ਜਿਹੜੇ ਆਪਣੇ ਇੱਥੇ ਸੱਜਣ ਸੀਗੇ ਨਿਊਟਨ ਰੈ residencies ਦੇ ਉਹਨੇ ਮੈਨੂੰ ਕਈ ਵਾਰ ਪ੍ਰੇਰਿਤ ਕੀਤਾ ਵੀ ਤੁਸੀਂ ਇਧਰ ਆਓ ਸੇਵਾ ਕਰੋ ਪਰ ਜਸ ਮਜਬੂਰੀਆਂ ਸੀਗੀਆਂ ਉਹਦੇ ਕਰਕੇ ਇੱਕ ਕੋ ਬਿਜ਼ਨਸ ਸੈਟਅਪ ਕਰਦੇ ਸੀ ਤਾਂ ਉਹ ਉਹਦੇ ਕਰਕੇ ਆ ਨਹੀਂ ਸਕਿਆ ਤੇ ਹੁਣ ਇਵੈਂਚੁਅਲੀ ਜਦੋਂ ਫਿਰ ਮੈਨੂੰ ਕਾਫੀ ਗਿਆ ਤੇ ਮੈਨੂੰ ਇਹ ਗਿਆਬਤ ਹੁਣ ਮੌਕਾ ਮਿਲਦਾ ਕਮਿਊਨਿਟੀ ਦੇ ਲਈ ਤਨ ਕੋਸ਼ਿਸ਼ ਕਰਨਾ ਚਾਹੀਦਾ ਤੇ ਮੈਂ ਵੀ ਸੋਚਿਆ ਕਮਿਊਨਿਟੀ ਦੇ ਲਈ ਹੁਣ ਐਸੇ ਵੇਲੇ ਟਾਈਮ ਹੈਗਾ ਕਿ ਮੈਂ ਹੁਣ ਕਮਿਊਨਿਟੀ ਕੋ ਖਿਆਲ ਕੀਤਾ ਕਮਿਊਨਿਟੀ ਬਹੁਤ ਫਾਸਟੈਸਟ ਗਰੋਇੰਗ ਕਮਿਊਨਿਟੀ ਹੈ ਜਿਹੜੀ ਸਾਡੀ ਸਰੀ ਨਿਊਟਨ ਆ ਸੁਬਾ ਬਹੁਤ ਤਰੱਕੀ ਤੇ ਜਾ ਰਿਹਾ ਆਪਣਾ ਤੇ ਪਰ ਸਾਡੀ ਰਾਈਟ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਆ ਉਹ ਐਸੇ ਵੇਲੇ ਵਿਕਟੋਰੀਆ ਚ ਨਹੀਂ ਹੋ ਰਹੀ ਤੇ ਮੈਂ ਮੈਨੂੰ ਨਹੀਂ ਰਿਕਵੈਸਟ ਕੀਤੀ ਕਿ ਪਰ ਜੇ ਜਿੱਦਿ ਤੁਸੀਂ ਅਸੀਂ ਆਵਾਜ਼ ਕੌਂਕਸ ਚ ਲਿਜਾ ਸਕਦੇ ਹੋ ਆ ਕੇ ਤੁਸੀਂ ਇੱਥੇ ਆਪ ਆਪਣੇ ਕਰੋ ਸੋ ਮੈਂ ਇਸ ਕਰਕੇ ਪੋਲਿਟਿਕਸ ਆਉਣ ਦੀ ਹਾਂ ਕੀਤੀ ਲੀਬਰਜ਼ ਪਾਰਟੀ ਸਾਡੇ ਲਈ ਖਾਸ ਤੌਰ ਤੇ ਸਿੱਖਾਂ ਲਈ ਜਾਂ ਪੰਜਾਬੀ ਲਈ ਸੀਰੀਅਸ ਹੈ ਇਹ ਤੁਹਾਡੇ ਮਨ ਚ ਹੈ ਕਿ ਉਹ ਆਪਾਂ ਨੂੰ ਚਾਹੁੰਦੇ ਆ ਵੀ ਅਸੀਂ ਉਹਨਾਂ ਦੇ ਨਾਲ ਉੱਥੇ ਐਮਐਲਏ ਦੀ ਸੀਟ ਤੇ ਬੈਠੀਏ ਬਿਲਕੁਲ जी ਉਹ ਚਾਹੁੰਦੇ ਹੋ ਇਸੇ ਕਰਕੇ ਤਾਂ ਉਹਨੇ ਆਪਣੇ ਪਹਿਲਾਂ ਵੀ ਪਿੱਛੇ ਐਮ.ਐਲ.ਏ ਰਹੇ ਨੇ ਆਪਣੀ ਸਿੱਖ ਕਮਿਊਨਿਟੀ ਦੇ ਵਿੱਚੋਂ ਪਰ ਪਹਿਲੀ ਵਾਰ ਮੇਰੇ ਖਿਆਲ ਚ ਹੋਊਗਾ ਜਦੋਂ ਇੱਥੇ ਸਰੀ ਨਿਊਟਨ ਦੇ ਵਿੱਚੋਂ ਆਫਟਰ 3 ਟਰਮਸ ਜੇ ਅਸੀਂ ਉੱਥੋਂ ਆਪਾਂ ਇੱਕ ਨਵੇਂ अच्छा ਗੁਰਵਿੰਦਰ ਸਿੰਘ ਜੀ ਇੱਕ ਹੋਰ ਇਹਦੇ ਨਾਲ ਹੀ ਰਾਜਨੀਤੀ ਬਹੁਤ ਤੁਸੀਂ ਸਿੱਖ ਸਿਆਸਤ ਦੇ ਨੇੜੇ ਰਹੇ ਹੋ ਮੈਂ ਨਿੱਜੀ ਤੌਰ ਤੇ ਤੁਹਾਨੂੰ ਜਾਣਦਾ ਬਜ਼ੁਰਗ ਤੁਹਾਡੇ ਉਹਨਾਂ ਨੇ ਕੰਮ ਕੀਤਾ ਪੰਜਾਬ ਦੇ ਵਿੱਚ ਤੇ ਤੁਸੀਂ ਮੈਨੂੰ ਪਤਾ ਹੈ ਰਾਜਨੀਤੀ ਨੂੰ ਪਸੰਦ ਕਰਦੇ ਆ ਪਰ ਸਰੀ ਦੀ ਰਾਜਨੀਤੀ ਖਾਸ ਤੌਰ ਤੇ ਪੰਜਾਬੀਆਂ ਦੀ ਰਾਜਨੀਤੀ ਬਹੁਤ ਤੇ ਫਿਰ ਬਦਲਨੇ ਪਤਾ ਹੀ ਨਹੀਂ ਕਿੱਥੋਂ ਕਿੱਥੇ ਨੈਕਸਸ ਜੁੜ ਨੇ ਕਿਹੜੀ ਪਾਰਟੀ ਦਾ ਮੀਟਿੰਗਾਂ ਕਰੀ ਫਿਰਦਾ ਇੱਥੇ ਕਿੰਗ ਮੇਕਰ ਤੇ ਕੁਇਨ ਮੇਕਰ ਬਹੁਤ ਨੇ ਸਰੀ ਦੇ ਵਿੱਚ ਐਨੇ ਖੜਜੜਨ ਦੇ ਵਿੱਚੋਂ ਰੁਕੀਓ ਤੁਸੀਂ ਨਵੇਂ ਹੋ ਇਹਦੇ ਵਿੱਚੋਂ ਨਿਕਲਣ ਲਈ ਤੁਹਾਨੂੰ ਪਤਾ ਨਹੀਂ ਵੀ ਕਿੰਨੀਆਂ ਕਾਹਨਗੇ ਦੇਖੋ ਜੀ ਚੈਲੰਜਸ ਹਮੇਸ਼ਾ ਹੁੰਦੇ ਨੇ ਪੋਲਿਟਿਕਸ ਦੇ ਵਿੱਚ ਕੱਡ ਜੋ ਸਾਡੀ ਰੀਸੈਂਟ ਨੋਮੀਨੇਸ਼ਨ ਹੋਈ ਆ ਆਜ ਵੀਕਐਂਡ ਦੇ ਵਿੱਚ ਉਨੀ ਸਰੀ ਨਿਊਟਨ ਰੈਜ਼ੀਡੈਂਟ ਜਿਹੜੇ ਹੈਗੇ ਸੀ ਲਿਬਰਲ ਮੈਂਬਰਸ ਤੇ ਚਾਹੁੰਦੇ ਆ ਲਿਆਉਣਾ ਚਾਹੁੰਦੇ ਆ ਤੇ ਪੀ ਸੀ ਲਿਬਰਲ ਗਵਰਨਮੈਂਟ ਨੂੰ ਮੈਂਬਰ ਉਹਨਾਂ ਦਾ ਨਮਾਇੰਦਾ ਕੋਈ ਤਾਂ ਕਿ ਸਿੱਧੀ ਜਿਹੇ ਦੇ ਵਿੱਚ ਸਾਡੀ ਆਵਾਜ਼ ਜਿਹੜੀ ਪੁੱਜ ਸਕੇ ਅਸੀਂ ਆਪਣੇ ਸਰੀ ਨਿਊਟਨ ਦੇ ਲਈ ਕੁਛ ਨਾ ਕੁਛ ਇੱਥੇ ਪਰੋਲਾ ਕਰ ਸਕੀਏ ਕੋਈ ਬੈਨੀਫਿਟਸ ਲੈ ਕੇ ਆਏ ਸਿੱਧੇ ਪੈਸੇ ਸੂਬੇ ਦੇ ਵਿੱਚ ਬਹੁਤ ਬੈਨੀਫਿਟ ਜਾ ਰਹੇ ਪਰ ਸਰੀ ਨਿਊਟਨ ਰਾਈਟਿੰਗ ਇਟਸੈਲਫ ਅੰਡਰ ਰੈਪਰਿਜ਼ੈਂਟ ਹੋਇਆ ਸੀ ਸੋ ਇਸ ਮਈ 9 ਨੂੰ ਐਤਕੀ ਤੇ ਉਹ ਸਰੀ ਨਿਊਟਨ ਦੀ ਜਿਹੜੀ ਸੀਟ ਆ ਉਹ ਬੀਸੀ ਲਿਬਰਲ ਦੇ ਚੋਲੀ ਪਾਉਣਗੇ ਕੁਝ ਮਨ ਚ ਬਲਬਲੇ ਹੁੰਦੇ ਆ ਜੀ ਜਿੰਨੇ ਵੀ ਰਾਜਨੀਤਿਕ ਮੇਨਸਟ੍ਰੀਮ ਸੁਸਾਇਟੀ ਦੇ ਆਉਂਦੇ ਆ ਉਹਨਾਂ ਮੈਂ ਗੱਲਾਂ ਪਿਛਲੇ 5-7 ਸਾਲਾਂ ਚ ਕਰਦਾ ਰਿਹਾ ਉਹ ਕੋਈ ਨਾ ਕੋਈ ਮਿਸ਼ਨ ਲੈ ਕੇ ਆਉਂਦੇ ਆ ਕੋਈ ਡਾਕਟਰ ਆ ਗਿਆ ਕੋਈ ਇੰਜੀਨੀਅਰ ਆ ਗਿਆ ਕੋਈ ਉਹ ਕਿਸੇ ਕਿਸਮ ਨੂੰ ਦੇ ਵਿੱਚ ਕੁਝ ਕਰਨਾ ਦੇ ਵਿੱਚ ਕੁਝ ਖਾਸ ਅਸੈਂਬਲੀ 'ਚ ਜਾ ਕੇ ਕਰਨਾ ਚਾਹੁੰਦੇ ਜ਼ਰੂਰ ਜੀ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਾਂ ਮੇਰਾ profession ਬੀਇੰਗ ਅਕਾਊਂਟੈਂਟ ਮੈਂ ਜਿਹੜੀ ਫਾਈਨੈਂਸਿਸ ਨੂੰ ਜਿਹੜਾ ਹੈਗਾ ਬਹੁਤ ਨੇੜਿਓਂ ਸਮਝਦਾ ਜਿਹੜੀ ਇਹ ਮੈਂ ਇੱਕ ਕਰਨਾ ਕਰਦਾ ਵੀ ਜਿਹੜੀ ਸਰਕਾਰ ਆ ਸੂਬਾ ਸਰਕਾਰ ਆ ਉਹਨੂੰ ਇਨਵੈਸਟਮੈਂਟਸ ਕਰਨੀਆਂ ਚਾਹੀਦੀਆਂ ਆਪਣੇ ਇਨਫਰਾਸਟ੍ਰਕਚਰਸ ਆਪਣੇ ਗੈਂਗ ਵਾਇਲੈਂਸ ਦੇ ਵਿੱਚ ਟਰਾਂਸਪੋਰਟੇਸ਼ਨ ਸਕੂਲਿੰਗ ਐਜੂਕੇਸ਼ਨ ਉਤਾਈਆਂ ਹੋ ਸਕਦੀਆਂ ਜੇ ਸਾਡੀ ਸੂਬਾ ਜਿਹੜਾ ਹੈਗਾ ਆ ਉਹ ਤਰੱਕੀ ਤੇ ਹੋਵੇ ਇਕਨੋਮਿਕਲੀ ਆਰਥਿਕਲੀ ਤੇ ਜੇ ਆਪਾਂ ਪਿੱਛੇ 5 ਸਾਲ ਦੇਖੀਏ ਜਿਹੜੀ BC ਲਿਬਰਲ ਸਰਕਾਰ ਆ ਉਹਨੇ ਬਜਟ ਸਾਨੂੰ ਪ੍ਰੋਵਾਈਡ ਕੀਤੇ ਆ ਇਸੇ ਕਰਕੇ ਸਰਪਲਸ ਬਜਟ ਹੋਣ ਕਰਕੇ ਇਸ ਇਨਵੈਸਟਮੈਂਟਸ ਕਰ ਸਕਦੇ ਆ ਤੋ ਮੇਰਾ ਇਹ ਬਹੁਤ ਮੇਰਾ ਜਿਹੜਾ ਜਿਹੜਾ ਵਿਚਾਰ ਇਹ ਆ ਕਿ ਅਸੀਂ ਇਹਨਾਂ ਨੂੰ ਇਹਨਾਂ ਏਰੀਆਜ਼ ਦੇ ਵਿੱਚ ਇਨਵੈਸਟਮੈਂਟ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕਰੀਏ ਤੇ ਤਾਂਕਿ ਜਿਹੜੀ ਸਾਡੀ ਜਿਹਨ ਹੋਵੇ ਸਪੈਸ਼ਲੀ ਜਿਹੜੀ ਸਰੀ ਨਿਊਟਨ ਦੇ ਵਿੱਚ ਸਪੈਸੀਫਿਕ ਇਸ਼ੂਜ਼ ਜਿਹੜੀਆਂ ਹੈਗੀਆਂ ਵਿਚ ਇਸ ਗੈਂਗ ਵਾਇਲੈਂਸ ਤੇ ਸਾਡੇ ਜਿਹੜੀ ਹੈਗੀ ਆ ਪਬਲਿਕ ਫੈਸਿਲਿਟੀਆਂ ਜਿਹੜੀਆਂ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਬਹੁਤ ਜ਼ਰੂਰਤ ਹੈਗੀ ਆ ਜਿਹੜੀ ਕਿ ਅੱਜ ਤੱਕ ਅਵਾਜ਼ ਪਹੁੰਚਾਈ ਨਹੀਂ ਗਈ ਉੱਥੇ ਉਹਦੇ ਰਿਪਰੈਜ਼ੈਂਟੇਸ਼ਨ ਮੈਂ ਜਾ ਰਿਹਾ। ਸ਼ਮਿੰਦਰ ਦੇ ਬਹੁਤ ਹੋਇਆ ਸੀ। ਉਹਨਾਂ ਦੇ ਹੱਕ ਦੀ ਗੱਲ ਸੀ ਪਰ ਉਹਨੂੰ ਕੁਝ ਨਾ ਕੁਝ ਮੁਸ਼ਕਲਾਂ ਆਈਆਂ। ਮੁਸ਼ਕਲਾਂ ਜਿਹੜੀਆਂ ਨਿੱਜੀ ਤੌਰ ਤੇ ਉਹਨਾਂ ਨਾਲ ਬਹਿ ਕੇ ਉਹਦੇ ਸਕਾਰਜੋ ਪਿਤਾ ਜੀ ਨਾਲ ਬਹਿ ਕੇ ਮੈਂ ਸੁਣੀ ਹੈ ਕਿ ਲੋਕ ਡਬਲ ਫੇਸ ਹੈ। ਫਿਰ ਤੇ ਕਿਤੇ ਆ ਵੋਟਾਂ ਕਿਤੇ ਪੁੰਦੇ ਆ ਜਿਹੜੇ ਸਾਡੇ ਚੌਧਰੀ ਉਪਰੋਂ ਫਿਰਦੇ ਸੀ ਉਹੋ ਮੀਟਿੰਗਾਂ ਐਂਡੀਪੀ ਦੇ ਐਮਐਲਏ ਦੇ ਨਾਲ ਕਰੀ ਜਾਂਦੇ ਇਹੋ ਜਿਹਾ ਕੁਝ ਤੁਹਾਡੇ ਅੱਗੇ ਵੀ ਆਏਗਾ ਤੁਹਾਡੇ ਮਨ 'ਚ ਹੈ ਕੁਝ ਦੇਖੋ ਮੇਰੇ ਖਿਆਲ 'ਚ ਜਿਹੜੇ ਆਪਣੇ ਵੋਟਰ ਬਹੁਤ ਸੂਝਵਾਨ ਨੇ ਜੇ ਕੋਈ ਇਦਾਂ ਕੋਈ ਡਬਲ ਫੇਸ ਕਰਦਾ ਉਹ ਹੁਣ ਉਹਨਾਂ ਦੀ ਵੈਲਿਊ ਨਹੀਂ ਬਹੁਤਾ ਰੱਖਦੇ ਜੇ ਕੋਈ ਕਰੂਗਾ ਵੀ ਉਹਨਾਂ ਨੂੰ ਸੋਚ ਜਿਹੜੇ ਵੋਟਰਸ ਇੰਡੀਪੈਂਡੈਂਟ ਨੇ ਉਹਨਾਂ ਨੂੰ ਆਪਣਾ ਪਤਾ ਵੀ ਉਹਨਾਂ ਦੇ ਵੋਟ ਦਾ ਹੱਕ ਕੀ ਆ ਮੈਂ ਹੁਣ ਦੇਖ ਲਿਆ ਪਿੱਛੇ ਚਾਰ ਪੰਜ ਮਹੀਨਿਆਂ ਦੇ ਵਿੱਚ ਮੈਂ ਸਾਰਿਆਂ ਦੇ ਘਰੋ ਘਰੀ ਜਾ ਰਿਹਾ ਆਪਣੇ ਜਿਹੜੇ ਜਿੰਨੇ ਵੀ ਰੈਜ਼ੀਡੈਂਟ ਨੇ ਬਹੁਤ ਜਾਗਰਤਿਆ ਤੇ ਕਨਸਰਨਡ ਆ ਜਿਹੜੇ ਵੀ ਵੀ ਸਾਨੂੰ ਨਿਊਟਨ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੋਵੇ ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਤਕੀ ਬਹੁਤਾ ਇਹ ਲੋਕਾਂ ਨੇ ਕਿਸੇ ਦੀ ਸੁਣਨੀ ਨਹੀਂ ਹੈਗੀ ਜੇ ਤੁਸੀਂ ਇਹ ਕਹਿਣਾ ਚਾਹੁੰਦੇ ਜੰਪੀ ਜੀ ਉਹ ਐਨਡੀਪੀ ਦੇ ਵਾਲਿਆਂ ਨਾਲ ਮੀਟਿੰਗਸ ਕਰਦੇ ਆ ਜਾਂ ਆਪਣੇ ਸਪੋਰਟਰਸ ਨੂੰ ਕਹਿਣਗੇ ਪਰ ਅੱਜਕੱਲ ਸਾਰੇ ਬੋਹ ਸਿਆਣੇ ਬੰਦੇ ਉਹ ਨਹੀਂ ਆਪਣੀ ਆਪਣੀ ਸਮਝ ਦੇ ਮੁਤਾਬਕ ਉਹ ਨਹੀਂ ਵੋਟਾਂ ਪਾਉਣੀਆਂ ਕਿਉਂਕਿ ਤਿੰਨੇ ਪੰਜਾਬੀਆਂ ਤੁਸੀਂ ਤੇ ਤੁਸੀਂ ਤੇ ਇੱਕ ਮੁੰਡਾ ਬਲਪ੍ਰੀਤ ਸਿੰਘ ਬਲ ਪਹਿਲਾਂ ਤੇ ਉਹ ਵੀ ਇੱਕ ਵੱਡੇ ਪਰਿਵਾਰ ਦਾ ਹਿੱਸਾ ਤੇ ਤਿੰਨ ਜਗ੍ਹਾ ਤੇ ਵੋਟਾਂ ਵੰਡ ਹੋਣੀ ਹੈ ਪਰ ਫਿਰ ਵੀ ਤੁਹਾਨੂੰ ਮੈਂ ਗੁੱਡ ਲੱਕ ਕਹਿਣਾ ਤੁਸੀਂ ਇਹ ਨਵੀਂ ਸ਼ੁਰੂਆਤ ਕੀਤੀ ਹੈ ਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੇ ਬਿਨਾਂ ਕਿਸੇ ਸਪੋਰਟ ਤੇ ਬੰਦਾ ਇਸ ਜਗ੍ਹਾ ਤੇ ਨਹੀਂ ਆਉਂਦਾ ਤੁਹਾਡਾ ਵੱਡਾ ਗਰੁੱਪ ਹੈ ਤੁਸੀਂ ਮਿਹਨਤ ਕਰ ਰਹੇ ਹੋ ਤੇ ਅਖੀਰ ਦੇ ਵਿੱਚ ਕੁਝ ਹੋਰ ਕਹਿਣਾ ਚਾਹਉ ਸੁਣਨ ਵਾਲਿਆ ਹਾਂਜੀ ਮੈਂ ਕਹਿਣਾ ਚਾਹਾਂ ਸਾਰੇ ਲੋਤਿਆਂ ਨੂੰ ਦੇਖੋ ਮੈਂ ਜਦੋਂ ਤੁਸੀਂ ਪਹਿਲਾਂ ਸੀ ਮੈਂ ਆਪਣੇ ਕਾਰੋਬਾਰ ਵਿੱਚ ਨਪੁੰਨ ਸੀ ਪਰ ਮੈਂ ਹੁਣ ਇਸੇ ਕਰਕੇ ਅੱਗੇ ਆਇਆ ਕਿਉਂਕਿ ਸਾਡੀ ਜਿਹੜੀ ਰੈਪ੍ਰেজੈਂਟੇਸ਼ਨ ਸੀਗੀ ਸਾਡੀ ਵਿਕਟੋਰੀਆ ਜੀ ਨਹੀਂ ਪੂਰੀ ਹੋਈ ਇਹ ਹੁਣ ਅਸੀਂ ਪਾਈਓ ਕਰ ਸਕਦੇ ਆ ਜੇ ਤੁਹਾਡਾ ਸਾਰਿਆਂ ਦਾ ਸਾਥ ਹੋਊਗਾ ਅੱਗੇ ਅਸੀਂ ਜਿਹੜੇ ਐਨਡੀਪੀ ਦੇ ਉਹਨਾਂ ਦੀ ਆਊਟਪੁੱਟ ਤੁਸੀਂ ਦੇਖ ਲਈ ਵਾਰੀ ਤੁਸੀਂ ਮੌਕਾ ਦਿਓ ਜਿਹੜੇ ਸਰਕਾਰ ਦੇ ਨਮਾਇंदे ਆ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਣ ਲਈ ਤਾਂ ਕਿ ਅਸੀਂ ਦੇ ਕੁਝ ਚੇਂਜ ਲਿਆ ਸਕੀਏ ਰਦਰ ਦੈਨ ਦੀ ਕ੍ਰਿਟਿਸਿਜ਼ਮ ਕਰਨ ਦੀ ਬਜਾਏ ਉੱਥੇ ਜਾ ਕੇ ਪੋਜ਼ਿਟਿਵ ਕੋਈ ਗੱਲ ਕਰਕੇ ਆਪਣੇ ਇਲਾਕੇ ਦੇ ਲਈ ਹਲਕੇ ਦੇ ਲਈ ਕੋਸ਼ ਉਹ ਤੋਂ ਲੈ ਕੇ ਆ ਸਕੀ ਜਿਹੜਾ ਸਾਡੇ ਸਾਰਿਆਂ ਦੇ ਬੈਨੀਫਿਟ ਲਈ ਹੋਵੇ ਮੈਂ ਆਸ ਰੱਖਦਾ ਹਾਂ ਵੀ ਗਾ ਮੈਨੂੰ ਪੂਰੀ ਸਪੋਰਟ ਦੇਣਗੇ ਕੇ ਪਿੱਛੇ ਦਿੱਤੀ ਹੈ ਨੋਮੀਨੇਸ਼ਨ ਨੇ ਸੱਠ ਦਿਨ ਨੇ ਪੂਰੇ ਜੀ ਹਾਈ ਗੇਅਰ 'ਚ ਹੋਵੋ ਤੇ ਫਿਰ ਆਪਣਾ ਵੱਧ ਤੋਂ ਵੱਧ ਕੋਸ਼ਿਸ਼ ਕਰੋ ਤੇ ਸਾਰੇ ਬਾਰੋ-ਬਾਰੀ ਜਿੰਨੇ ਵੀ ਕੈਂਡੀਡੇਟ ਨੇ ਉਹ ਕੋਸ਼ਿਸ਼ ਕਰਨਗੇ ਦੱਸਣਗੇ ਆਪਣੇ ਮੁੱਦੇ ਦੱਸਣਗੇ ਤੇ ਫਿਰ ਜਾਦਾ ਖੁੱਲੀ ਚਰਚਾ ਹੋਏਗੀ ਫੇਰ ਸਵਾਲ ਪੁੱਛਾਂਗੇ ਪਹਿਲਾਂ ਸ਼ੁਰੂਆਤ ਹੋਵੇ ਤੇ ਫੇਰ ਪਤਾ ਲੱਗੂਗਾ ਵੀ ਕੌਣ ਕਿੱਥੇ ਕਿੰਨਾ ਖੜਾ ਹੈ ਤੇ ਵਿਦਵਤਾ ਕਿੰਨੀ ਤੇ ਸ਼ੁਭ ਸ਼ਾਮਾ ਥੈਂਕ ਯੂ ਵੈਰੀ ਮਚੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੋਕ ਸਾਥ ਤੇ YouTube ਚੈਨਲ ਤੇ ਪ੍ਰੋਗਰਾਮ ਤੁਹਾਡੇ ਪੈਣੇ ਸ਼ੁਰੂ ਹੋ ਚੁੱਕਿਆ ਹੈ ਪਵਨਦੀਪ ਸਿੰਘ ਜਵੰਦਾਬਾ ਵਾਪਸ ਆ ਗਿਆ ਫਰਾਈਡੇ ਦਾ ਵੀ ਪ੍ਰੋਗਰਾਮ ਮੈਂ ਸੋਚੇ ਸੈਡ ਅੱਜ ਤੋਂ ਗੱਲ ਬਣੋਗੇ ਨਾ ਸ਼ੁੱਕਰਵਾਰ ਦਾ ਵੀ ਪ੍ਰੋਗਰਾਮ ਪਾਇਆ ਹੋਇਆ ਸੋ ਲੋਕ ਸੱਤ ਤੇ ਵੀ ਤੁਸੀਂ ਸਾਰੇ ਆਪਣੇ ਪ੍ਰੋਗਰਾਮ ਵੇਖ ਸਕਦੇ ਹੋ ਵੀ ਆ ਉਹਨਾਂ ਧੰਨਵਾਦ ਜਿੰਨੇ ਵੱਧ ਤੋਂ ਵੱਧ ਸਪਰੈਡ ਕਰ ਸਕਦੇ ਹੋ ਆਪਾਂ ਕੋਸ਼ਿਸ਼ ਕਰ ਰਹੇ ਆਂ ਰਾਜਨੀਤੀ ਵਾਲੇ ਪਾਸੇ ਤਜਰਬਾ ਵਾਲਾ ਕਰਕੇ ਪਤਾ ਲੱਗ ਜਾਂਦਾ ਮੈਨੂੰ ਭਵੰਦੀਪ ਸਿੰਘ ਸੁਣਦਾ ਜੀ ਉਹ ਕਿੰਗ ਮੇਕਰ ਤੇ ਫਿਰ ਦੂਜੀ ਪਾਰਟੀ ਦੀ ਮੀਟਿੰਗਾਂ ਕਰਾਇਆ ਮੈਂ ਪਿਛਲੇ 15 ਸਾਲਾਂ ਤੋਂ ਚੱਲਦੀ ਆਉਂਦੀ ਐ ਉੱਪਰ ਆਟਵਾਲੇ ਸਾਂਝੀਆਂ ਮੀਟਿੰਗਾਂ ਕਰ ਦਿੰਨੇ ਵਿਕਟੋਰੀਆ ਵਾਲੇ ਨਾਲ ਤੂੰ ਇੱਧਰ ਪਾ ਲਾ ਬਾਈ ਤੂੰ ਇੱਧਰ ਪਾ ਮੈਂ ਇੱਥੇ ਪਾ ਮੈਂ ਉੱਥੇ ਪਾ ਆਪਾਂ ਮਲਵਈਆਂ ਆ ਵੀ ਪੈਂਤਰਾ ਚਲਾਇਆ ਜਾਂਦਾ ਤੇ ਹੁਣ ਬੜੀ ਤੇਜ਼ੀ ਦੇ ਨਾਲ ਮੀਟਿੰਗਾਂ ਪਿਛਲੇ ਹਫ਼ਤੇ ਚ ਹੋ ਰਹੀਆਂ ਨੇ ਔਰ ਪਾਰਟੀਆਂ ਦੇ ਪਾਰਟੀ ਪਲੈਟਫਾਰਮ ਤੋਂ ਉੱਪਰ ਉੱਠ ਕੇ ਸਿੱਖਾਂ ਦੀ ਨੁਮਾਇੰਦਗੀ ਲਈ ਵੋਟਾਂ ਪੈ ਰਹੀਆਂ ਨੇ ਇਹ ਜਮਨ ਕਰੇ ਕਰੇ ਪਾਰਟੀ ਪਲੈਟਫਾਰਮ ਤੋਂ ਉੱਪਰ ਉੱਠ ਖੜੋ ਪਲੇਟਫਾਰਮ ਤੋਂ ਉੱਪਰ ਉੱਠ ਕੇ ਸਾਂਝੀਆਂ ਮਸ਼ਕਾਂ ਹੋ ਰਹੀਆਂ ਨੇ। ਤੂੰ ਇੱਥੇ ਇਹਨੂੰ ਹਰਾਦੀ ਮੈਂ ਤੈਨੂੰ ਉੱਥੇ ਪਵਾ ਦੂੰ ਤੂੰ ਮੈਨੂੰ ਇੱਥੇ ਪਵਾ ਦੀ ਫਿਰ ਆਹਾਂ ਪਵਾ ਲਾਂਗੇ ਆਪਾਂ ਵੋਟਾਂ ਪੈਂਦੀਆਂ ਰਹਿਣੀਆਂ ਨੇ 18 ਨੂੰ ਸਿਟੀ ਦੀਆਂ ਪੈਣੀਆਂ ਨੇ 19 ਨੂੰ ਫਿਰ ਐਮਪੀ ਵਾਲੀਆਂ ਪੈਣੀਆਂ ਨੇ ਤੂੰ ਮੇਰੀ ਖੁੱਚ ਮੜੀ ਜੀ ਮੜਦੇ ਮੈਂ ਤੇਰਾ ਗੋਡਾ ਮੜ ਦਿੰਦਾ ਪਰ ਹੁਣ ਲੋਕਾਂ ਨੂੰ ਪਤਾ ਹੈ ਰਹਿੰਦੇ ਦੁਨੀਆ 'ਚ ਹੀ ਨੇ ਲੋਕ ਤੇ ਜੀਪੀਐਸ ਸਿਰਾਂ 'ਤੇ ਹੀ ਨੇ ਪਤਾ ਲੱਗ ਜਾਂਦਾ ਕਿੱਥੇ ਕੌਣ ਬੈਠਾ ਉਹ ਸਮਾਂ ਲੰਘ ਗਿਆ 10 ਸਾਲ ਪਹਿਲਾਂ ਵੇ ਮੈਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਖਿਆਲ ਰੱਖਿਓ ਜਿਹੜੀ ਪਾਰਟੀ 'ਚ ਖੜੇ ਹੋ ਪਾਰਟੀ ਨੂੰ ਪਿਆਰ ਕਰੋ ਤੇ ਉਸ ਪਾਰਟੀ ਦੇ ਵਿੱਚ ਰਹਿੰਦੇ ਆ ਜਿੱਤੋ ਹਾਰੋ ਕੁਝ ਵੀ ਕਰੋ ਇਉਂ ਨਹੀਂ ਗੱਲ ਹੋਣੀ ਮੈਂ ਤੇਰੋਂ ਇੱਥੇ ਤੇ ਤੂੰ ਮੈਨੂੰ ਇੱਥੇ ਔਰ ਇਸ ਵਾਰ ਜਿਹੜਾ ਇਹ ਲਾਦੂ ਕੀਤਾ ਹੈ ਨਾ ਲੋਕਾਂ ਨੂੰ ਵੀ ਖਾਸ ਕਿਸਮ ਦੇ ਬੰਦੇ ਹੀ ਕਿੰਗ ਬਣਾਉਣਗੇ ਤੇ ਕੁਈਨ ਬਣਾਉਣਗੇ ਉਹ ਲੌੜਾ ਐ ਕੀ ਇਹ ਗੱਲ ਪੱਕੀ ਕਰਨੀ ਹੈ ਕਿ ਇੱਟ ਜਿਹੜੀ ਆ ਲੋਕਾਂ ਦੀ ਰੱਖੀ ਹੋਈ ਉਹ ਰਹੂ ਕਿਸੇ ਇੱਕ ਬੰਦੇ ਦੀ ਰੱਖੀ ਨਹੀਂ ਰਹੂਗੀ ਪਰੇਖੀ ਜਾਓ 12:29 ਮਿੰਟ ਹੋਏ ਐ ਹੁਣ ਇਸ ਹਿੱਸੇ ਦੇ ਵਿੱਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਭਾਈਚਾਰੇ ਦੇ ਵਿੱਚ ਅਕਸਰ ਚੱਲਦੀ ਐ ਔਰ ਬਹੁਤ ਉਸਤੇ ਆਪਣਾ ਟਾਕ ਸ਼ੋਅ ਕੀਤੇ ਨੇ ਜੇ ਜਦ ਪੰਜਾਬ ਤੋਂ ਸਾਡੇ ਪਰਿਵਾਰ ਨਵੇਂ ਆਉਂਦੇ ਐ ਮਾਪੇ ਆਉਂਦੇ ਚਾਹੇ ਪਿਤਾ ਆਉਂਦਾ ਮਾਤਾ ਆਉਂਦੀ ਆ ਭੈਣ ਭਾਈ ਆਉਂਦੇ ਐ ਉਹਨਾਂ ਨੂੰ ਇਸ ਕਮਿਊਨਿਟੀ ਦੇ ਕੁਝ ਕਾਇਦੇ ਕਾਨੂੰਨ ਜਿਹੜੇ ਨੇ ਉਹ ਕਿਉਂ ਦੱਸਣੇ ਜ਼ਰੂਰੀ ਨੇ ਅੱਜ ਠੰਡ ਦੇ ਮੌਕੇ ਬਹੁਤ ਵੱਡੀ ਗਿਣਤੀ ਹਲੇ ਵੀ ਸਾਡੇ ਬਜ਼ੁਰਗਾਂ ਦੀ ਵੇਖੀ ਜਿਹੜੇ ਸੜਕ ਤੇ ਦੁਪਹਿਰੇ ਠਾਠੇ ਬੰਨ ਕੇ ਤੁਰੇ ਆਉਂਦੇ ਐ ਠੀਕ ਐ ਉਹਨਾਂ ਦੇ ਮੂੰਹ ਨੂੰ ਨੱਕ ਨੂੰ ਠੰਡ ਲੱਗਦੀ ਆ ਮੈਂ ਮੰਨਦਾ ਪਰ ਵੀ ਉਹਨਾਂ ਨੂੰ ਨਹੀਂ ਦੱਸਿਆ ਜਾਂਦਾ ਸਭ ਤੋਂ ਵੱਡੀ ਗੱਲ ਦੀ ਜਿਹੜਾ ਹੈ ਨਾ ਉਹਦੀ ਬਹੁਤ ਵੱਡੀ ਪ੍ਰੋਬਲਮ ਤੇ ਜਿਹੜੇ ਨਵੇਂ ਆਉਂਦੇ ਆ ਪੰਜਾਬ ਤੋਂ ਚਾਹੇ ਉਹ ਬਾਹਰ ਹੋਣ ਚਾਹੇ ਉਹ ਘਰ 'ਚ ਹੋਣ ਖਾਸ ਤੌਰ ਤੇ ਕਈ ਵਾਰ ਕੁਝ ਦਿਮਾਗ ਦੇ ਵਿੱਚ ਗਲਤਫਹਿਮੀ ਪੰਜਾਬ ਦੇ ਵਿੱਚ ਸੱਥਾਂ 'ਚ ਫੱਟੀਆਂ ਤੇ ਹਟੀਆਂ ਤੇ ਮੋਟਰਾਂ ਤੇ ਬੈਠੇ ਗੱਲ ਹੋ ਜਾਂਦੀ ਹੈ ਵੀ ਜਿਹੜਾ ਉੱਥੇ ਕਨੇਡੀਅਨ ਕਨੇਡੀਅਨ ਕਲਚਰ ਦੇ ਵਿੱਚ ਤੇ ਔਰਤਾਂ ਉੱਥੇ ਦੀਆਂ ਜੰਪਾਂ ਜਾਂ ਚਿਰਾਂ ਦੀਆਂ ਗਈਆਂ ਹੋਈਆਂ ਤੇ ਜਾਂ ਦੇ ਗੋਰੇ ਲੋਕ ਉਹ ਤਾਂ ਬਾਈਸਾਂ ਖੀਸੇ ਚ ਪਾ ਲਈਦੇ ਨੇ ਉਹ ਤੁਹਾਨੂੰ ਨਹੀਂ ਪਤਾ ਮੈਂ ਅੱਗੇ ਵੀ ਕਈ ਵਾਰ ਤੁਹਾਨੂੰ ਸੁਣਾਈ ਹੈ ਗੱਲ ਕਿ ਬਜ਼ੁਰਗ 80 ਸਾਲ ਦਾ ਪਿੰਡ ਦੀ ਸਾਥ ਦੇ ਵਿੱਚ ਉਹਨੂੰ ਕਹਿੰਦੇ ਕਿਵੇਂ ਅਮਰੀਕਾ ਉਹ ਕਹਿੰਦਾ ਪੱਬਾਂ ਤੇ ਹੋ ਗਿਆ ਉਹ ਕਹਿੰਦਾ ਅਮਰੀਕਾ ਦਾ ਬਹੁਵਧੀਆ ਮੇਮਾ ਆਵੇਂ ਹੀ ਨੇ ਉੱਥੇ ਹੁਣ ਉਹਨੇ ਤਾਂ ਇਹ ਕਿਹਾ ਦੇਸ਼ ਮੇਮਾ ਦਾ ਹੀ ਤੁਰਿਆ ਜਿਹੜੇ ਚਾਰ ਪਿੱਛੇ ਬੈਠੇ ਸੀ ਉਹ ਸਵਾਰ ਕੇ ਕੰਬਲ ਲੈ ਕੇ ਇਕੱਠੇ ਹੋਈ ਜਾਣਗਾ ਬੱਲਾ ਬੱਲਾ ਫਿਰਦਾ ਮੇਮਾ ਆਵੇਂ ਹੀ ਨੇ ਆਵੇਂ ਦਾ ਮਤਲਬ ਇਹ ਉਹਨਾਂ ਨੂੰ ਇਉਂ ਹੋ ਗਿਆ ਵੀ ਆਵੇਂ ਹੀ ਨੇ ਵੀ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਖੜ ਕੇ ਗੱਲ ਕਰੋ ਜਿਵੇਂ ਆਲੂ ਆਮ ਹੋਏ ਉਹਨਾਂ ਨੂੰ ਸੜਕਾਂ ਤੇ ਵਿਛਾਉਂਦੇ ਫਿਰਦੇ ਨੇ ਪਿੰਡਾਂ 'ਚ ਇਉਂ ਹੀ ਇੱਕ ਖਾਸ ਤੌਰ ਤੇ ਕੁਝ ਦਿਮਾਗ ਚ ਸੈੱਟ ਹੋ ਜਾਂਦਾ ਉੱਥੇ ਆਉਣ ਤੋਂ ਪਹਿਲਾਂ ਨੌਜਵਾਨ ਨਹੀਂ ਥੋ ਬਜ਼ੁਰਗਾਂ ਦੇ ਵਿੱਚ ਜਦ ਤੁਸੀਂ 60ਆਂ ਦੇ ਵਿੱਚ ਆਉਨੇ ਹੋ ਤੇ ਉੱਥੋਂ ਕਈ ਵਾਰ ਬਹੁਤ ਜ਼ਿਆਦਾ ਇੱਕ ਕਲਚਰਲ ਸਟਿਗਮਾ ਇਹ ਮੰਨਣਾ ਪਊ ਸਾਡੇ ਵੀ ਸੀ ਜਿਸ ਜਗ੍ਹਾ ਚ ਜਿੱਥੇ ਖਿੱਤੇ ਚ ਉਹ ਸਮਾਂ ਵੇਖਿਆ ਹੋਵੇ ਕਿ ਕਿਸੇ ਜਗ੍ਹਾ ਤੁਸੀਂ ਭੋਰਾ ਵੀ ਕੁਝ ਨਗਨ ਨਹੀਂ ਵੇਖ ਸਕਦੇ ਜਦ ਇੱਕ ਦੇਸ਼ ਚੋਂ ਜਿੱਥੇ ਲੋਕ ਅਧੇ ਧਕੇ ਤੁਰੇ ਫਿਰਦੇ ਆ ਦਿਮਾਗ ਦੇ ਵਿੱਚ ਕੁਝ ਗਲਤ ਫਹਿਮੀਆਂ ਆਉਂਦੀ ਉਹ ਗਲਤ ਫਹਿਮੀਆਂ ਸੇ ਘਰੇ ਜਾਂਦੀਆਂ ਇਹ ਬਹੁਤ ਨਾਜ਼ੁਕ ਵਿਸ਼ਾ ਇਹਦੇ ਤੇ ਪਲੀਜ਼ ਹਰਟ ਨਾ ਹੋਇਓ ਮੈਂ ਤੁਹਾਨੂੰ ਦੱਸਦਾ ਇਹ ਗੱਲਾਂ ਕਰਨ ਵਾਲੀਆਂ ਕਿਉਂ ਨਹੀਂ ਕਿਉਂਕਿ ਫਿਰ ਉਹ ਘਰਾਂ ਦੇ ਵਿੱਚ ਉਹ ਮਾਨਸਿਕਤਾ ਜਾਂਦੀ ਹੈ ਘਰ ਦੇ ਵਿੱਚ ਜਾਂ ਘਰ ਦੇ ਵਿੱਚ ਪਰੌਣੇ ਆਈਆਂ ਇਸਤਰੀਆਂ ਜਿਹੜੀਆਂ ਇੱਥੇ ਚਿਰਾਂ ਦੀਆਂ ਰਹਿੰਦੀਆਂ ਉਹਨਾਂ ਤੇ ਫਿਰ ਨਿਗਾਹ ਜਿਹੜੀ ਆ ਕਿਹੜੀ ਅੱਖ ਰੱਖੀ ਜਾਂਦੀ ਹੈ ਸਟੇਰਿੰਗ ਕੀਤਾ ਜਾਂਦਾ ਹੁਣ ਇਹ ਸਭ ਤੋਂ ਜ਼ਿਆਦਾ ਚੁਬਦੀ ਗੱਲ ਇਹ ਆ ਜਦ ਤੁਸੀਂ ਕਿਸੇ ਨੂੰ ਅੱਖਾਂ ਪਾਰ ਕੇ ਵੇਖਦੇ ਹੋ ਇੱਥੇ ਦੀ ਸੁਸਾਇਟੀ ਦੇ ਵਿੱਚ ਜਿਹੜੇ ਇੱਥੇ ਤੁਸੀਂ ਵੱਡੇ ਹੋਇਓ ਜੇ ਤੁਸੀਂ ਕਿਸੇ ਵੱਲ ਵੇਖਦੇ ਹੋ ਉਹ ਮੂਰੇ ਤੁਹਾਨੂੰ ਕੁਝ ਆ ਕੇ ਕਹਿੰਦਾ ਵਾਟ ਇਹ ਕਿਉਂ ਦੇਖਦਾ ਮੇਰੇ ਵੱਲ ਔਰ ਮਾੜਾ ਮੰਨਿਆ ਜਾਂਦਾ ਔਰ ਸਾਨੂੰ ਅਸੀਂ ਵੀ ਸਿੱਖਦੇ ਸਿੱਖਦੇ ਸਾਰੇ ਸਿੱਖੇ ਆ ਜਿਹੜੇ ਅੱਜ 5 ਹੋਏ ਨੇ 10 ਹੋਏ ਨੇ 15 ਕਿਉਂਕਿ ਇਹ ਵੇਖਦੇ ਵੇਖਦੇ ਹੀ ਅਸੀਂ ਸਿੱਖੇ ਆ ਨਾ ਤਾਂ ਇਹ ਲੋਕ ਤੁਹਾਡੇ ਵੱਲ ਦੇਖਦੇ ਨਾ ਤੁਸੀਂ ਇਹਨਾਂ ਵੱਲ ਵੇਖਣੇ ਚਾਹੀਦੇ ਗਰਮੀ ਆ ਜਣੀ ਆ ਵਿੱਚ ਵਿਚਾਂ ਤੇ ਵਾਈਟ ਵੈਨਕੂਵਰ ਇਹ ਲੋਕ ਤਾਂ ਨੰਗ ਢੰਗੇ ਤੁਰੇ ਫਿਰਦੇ ਇਹਨਾਂ ਦਾ ਇਹ ਕੋਈ ਸਿਸਟਮ ਨਹੀਂ ਹੈ ਇਹਨਾਂ ਦਾ ਸਰੀਰ ਉਹਦਾ ਹੀ ਹੈ ਜਿਹਦੇ ਨਾਲ ریلیਟਡ ਨੇ ਦੂਜੇ ਲਈ ਉਹ ਬਾਡੀ ਹੈ ਉਕੇ ਨਾ ਇਹਦੇ ਨਾਲ ਇਹ ਨਹੀਂ ਤੁਸੀਂ ਦੇਖ ਸਕਦੇ ਇਹ ਮੇਰੀ ਪਰਸਨਲ ਪ੍ਰੋਪਰਟੀ ਹੈ ਜਿਵੇਂ ਨਵੇਂ ਆਏ ਪੰਜਾਬ ਤੇ ਕਿਸੇ ਨੂੰ ਘੁਮਾਉਣ ਲਈ ਆਪਾਂ ਯੂਵੀਸੀ ਵਾਲੇ ਇੱਕ ਬੀਚ ਤੇ ਲੈ ਜਾਂਦੇ ਹਾਂ ਪਰਲੇ ਬੰਨੇਓ ਵੀ ਕਿਸ਼ਤੀ ਲੈ ਚੱਲੋ ਇਧਰ ਦੀ ਚੱਲਦੇ ਆਂ ਫਿਰ ਉਹ ਬੀਚ ਤੇ ਜਿਹੜਾ ਬੜਲਾ ਆਇਆ ਉਹਨੂੰ ਤਾਂ ਪਤਾ ਨਹੀਂ ਫਿਰ ਅਸੀਂ ਦੱਸਦੇ ਆਂ ਫਿਰ ਉਹ ਬੀਚ ਤੇ ਅਸੀਂ ਕਈ ਵਾਰ ਪੈਂਟਾਂ ਪਾਈ ਤੁਰੇ ਫਿਰਦੇ ਆ ਉਹਨੂੰ ਗਾਲਾਂ ਕੱਢਦੇ ਵੀ ਕਿਸ਼ਤੀਆਂ 'ਚ ਬੈਠੋ ਜਾਓ ਇਹ ਤੁਹਾਡੇ ਵਾਲਾ ਬੀਚ ਨਹੀਂ ਹੈ ਇਹ ਹੀ ਇਹ ਇੱਕ ਮੁਸ਼ਕਲ ਘਰਾਂ ਦੇ ਵਿੱਚ ਆ ਗਈ ਇਹਨਾਂ ਘਰ ਟੁੱਟ ਰਹੇ ਨੇ ਸਟੀering ਦੇ ਕਾਰਨ ਕਿਉਂਕਿ ਕਈ ਵਾਰ ਵੱਡੀ ਉਮਰ ਚ ਆਏ ਬੰਦਿਆਂ ਨੂੰ ਇਹ ਸਮਝਾਇਆ ਨਹੀਂ ਜਾਂਦਾ ਉੱਤਾਂ ਵੱਲੋਂ ਜਾਂ ਧੀਆਂ ਵੱਲੋਂ ਜਾਂ ਗੱਲੀ ਬਾਤੀ ਕਿ ਇਉਂ ਨਹੀਂ ਚਾਕੀਦਾ ਬਾਪੂ ਜੀ ਨਾ ਬਾਹਰ ਨਾ ਅੰਦਰ ਮੈਂ ਨਹੀਂ ਕਹਿੰਦਾ ਬਜ਼ੁਰਗ ਸਾਡੇ ਮਾੜਾ ਝਾਕਦੇ ਪਰ ਇਹ ਕੇਸ ਕਿਉਂ ਹੋ ਰਹੇ ਨੇ ਕਿਉਂ ਝਾਕਣਾ ਸਾਡੇ ਦਿਮਾਗ ਦੇ ਵਿੱਚ ਵਸਿਆ ਕਿਉਂ ਇੱਥੇ ਇੱਕ ਬਹੁਤ ਵੱਡੀ ਗੱਲ ਪਾਈ ਜਾਂਦੀ ਜੇ ਤੁਸੀਂ ਕਿਸੇ ਨੂੰ ਦੋਸਤੀ ਸਰਕਲ ਦੇ ਵਿੱਚ ਵੀ ਇੱਕ ਦਫ਼ਤਰ ਦੇ ਵਿੱਚ ਜਾਂ ਕੰਮ ਤੇ ਵਿੱਚ ਕਿਸੇ ਨੂੰ ਬਾਰ ਬਾਰ ਝਾਕਦੇ ਹੋ ਉਹ ਅਗਲਾ ਜਾਂ ਅਗਲੀ ਇਹ ਮਹਿਸੂਸ ਕਰਦੀ ਹੈ ਵੀ ਤੂੰ ਮੇਰੇ ਨਾਲ ਗੱਲ ਕਰ ਲੈ ਯਾਰ ਵਾਈ ਡੋਨਟ ਯੂ ਟਾਕ ਟੂ ਮੀ ਤੂੰ ਮੈਨੂੰ ਸਟੇਅਰ ਕਿਉਂ ਕਰਦਾ ਗੱਲ ਤਾਂ ਮੈਨੂੰ ਪੁੱਛੀ ਤੂੰ ਜਾਣਨਾ ਚਾਹੁੰਦਾ ਕੁਝ ਮੇਰੇ ਤੋਂ ਪਰ ਹੁਣ ਅਸੀਂ ਕੀ ਦਸੀਏ ਸਾਡਾ ਤਾਂ ਗিয়ার ਪੰਜਵਾਂ ਪਿਆ ਹੋਇਆ ਉਸ ਸਮੇਂ ਔਰ ਕਈ ਵਾਰ ਇੰਨਾ ਨਾਜ਼ੁਕ ਰਿਸ਼ਤਾ ਹੁੰਦਾ ਜਿੱਥੇ ਡਿਸਕ੍ਰਾਈਬ ਨਹੀਂ ਕਰ ਸਕਦੀਆਂ ਇਸਤਰੀਆਂ ਘਰ ਟੁੱਟਣ ਦਾ ਡਰ ਤੇ ਯਾਰ ਮੈਂ ਹੁਣ ਆਪਣੇ ਘਰ ਵਾਲੇ ਨੂੰ ਜਾਂ ਮੇਰੇ ਭਾਈ ਨੂੰ ਜਾਂ ਮੈਂ ਪਰਜਾਈ ਨੂੰ ਮੈਂ ਕੀ ਕਿਹੜੇ ਮੂੰਹ ਨਾਲ ਕਹਾਂ ਡਿਪਰੈਸ਼ਨ ਇਹਦੇ ਵਿੱਚੋਂ ਤੇ ਇਹਦੇ ਵਿੱਚੋਂ ਐਂਗਜ਼ਾਇਟੀ ਇਹਦੇ ਵਿੱਚੋਂ ਪੈਨਿਕ ਅਟੈਕ ਤੇ ਘਰ ਟੁੱਟ ਰਹਿਣੇ ਕਾਰਨ ਇਹ ਨਹੀਂ ਵੀ ਵੇਖਣ ਵਾਲੇ ਦਾ ਦਿਲ ਵੀ ਮੜਾ ਕਾਰਮ ਇਹ ਹੈ ਕਿ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਵੀ ਇਹ ਉਹ ਘਰਾਂ ਦੇ ਵੇੜਿਆਂ ਦੇ ਵਿੱਚ ਬੈਠਾ ਬਜ਼ੁਰਗ ਨਹੀਂ ਜਿੱਦੋਂ ਤੋਂ ਪੁੱਛ ਕੇ ਇਸਤਰੀ ਨੇ ਬਾਹਰ ਜਾਣਾ ਤਾਂ ਪੁੱਛ ਕੇ ਘਰੋਂ ਘਰ ਦੀ ਨੂੰਹ ਨੇ ਬਾਹਰ ਆਉਣਾ ਤਾਂ ਜਾਣ ਇੱਥੇ ਤਾਂ ਕੰਮ ਕਰਦੀਆਂ ਨੇ ਦਿਨ ਰਾਤ ਭੱਜੀਆਂ ਫਿਰਦੀਆਂ ਘਰ ਦਾ ਵੀ ਕਰਨਾ ਬਾਹਰ ਦਾ ਵੀ ਕਰਨਾ ਬੱਚਿਆਂ ਦਾ ਵੀ ਕਰਨਾ ਉਹਨਾਂ ਨੇ ਜਾਣਾ ਉਹਨਾਂ ਨੇ ਆਉਣਾ ਉਸ ਸਮੇਂ ਕਈ ਵਾਰ ਉਸ ਦਬਸ਼ ਦੇ ਵਿੱਚ ਲਿਆ ਕੇ ਇਹ ਚੀਜ਼ ਪੇਸ਼ ਕੀਤੀ ਜਾਂਦੀ ਵੀ ਮੈਂ ਵੇਖਦਾ ਰਹੂੰ ਹੋ ਸਕਦਾ ਮੈਨੂੰ ਗਾਂ ਨੂੰ ਪੁੱਛ ਕੇ ਜਾਣ ਲੱਗ ਜੇ ਇਹ ਗਲਤ ਹੈ ਬਹੁਤ ਸਟੇਰਿੰਗ ਜਿਹੜਾ ਇੱਕ ਸ਼ਬਦ ਆ ਨਾ ਕਿਸੇ ਨੂੰ ਪੱਥਰ ਪਾੜਨੇ ਦਾ ਜਿਹੜੀ ਹੈ ਉਹ ਬਹੁਤ ਡੇਂਜਰਸ ਹੈ ਔਰ ਕੁਦਰਤ ਨੇ ਇੱਕ ਅੰਗ ਦਿੱਤਾ ਖਾਸ ਰੂਹ ਫੂਕੀ ਹੈ ਵੀ 4 ਸੈਕਿੰਡ 5 ਸੈਕਿੰਡ ਦੇ ਵਿੱਚ ਮੂਹਰੇਲੇ ਪਾਸੇ ਇਸਤਰੀ ਨੂੰ ਪਤਾ ਲੱਗ ਜਾਂਦਾ ਵੀ ਮੂਹਰੇਲਾ ਬੰਦਾ ਮੇਰੇ ਵੱਲ ਝਾਕਦਾ ਕਿਵੇਂ 5 ਸੈਕਿੰਡਸ ਤੁਸੀਂ ਉਹੀ ਰਿਸ਼ਤੇ ਨੂੰ ਪਾਕੀਜ਼ਗੀ ਦੀਆਂ ਅੱਖਾਂ ਨਾਲ ਵੇਖ ਲਓ ਜਹਤ ਘੰਟਿਆਂ ਵੱਧੀ ਵੇਖੀ ਚੱਲੋ ਕੋਈ ਫਰਕ ਨਹੀਂ ਇਹ ਉਹੀ ਨਿਗਾਹ ਜਦ ਬਦਲੀ ਨੀ ਤੇ 5 ਸੈਕਿੰਡ ਦੇ ਵਿੱਚ ਮੂਹਰਲੇ ਬੰਦੇ ਨੂੰ ਪਤਾ ਨਹੀਂ ਲੱਗਿਆ ਇਉਂ ਹੀ ਮਰਦ ਵੱਲ ਏਸਤਰੀ ਵੱਲੋਂ ਝਾਕਿਆਂ ਵੀ 5 ਸੈਕਿੰਡ ਚ ਮਰਦ ਨੂੰ ਵੀ ਪਤਾ ਲੱਗਦਾ ਇਹ ਨਹੀਂ ਹੈ ਕਿਉਂਕਿ ਆਪੋਜੀਟ ਸੈਕਸ ਦੇ ਵਿੱਚ ਜੇ ਤੁਸੀਂ ਏਸਤਰੀ ਜਾਂ ਮਰਦ ਉਹਦਾ ਅੱਖਾਂ ਨੂੰ ਬਦਲਦੇ ਆ ਫਿਰ ਉਹ ਨੈਕਸਟ ਫੇਸ ਦੇ ਵਿੱਚ ਤੁਹਾਡਾ ਉਹ ਜਿਹੜਾ ਰਿਸ਼ਤਾ ਜਿਹੜਾ ਉਹ ਅਲੱਗ ਕਿਸਮ ਦਾ ਪਰ ਇਹ ਕੁਝ ਕੁ ਚੀਜ਼ਾਂ ਜਿਹੜੀਆਂ ਸਾਨੂੰ ਦੱਸਣੀਆਂ ਪੈਣੀਆਂ ਹੈ ਬਈ ਕਿਸ ਤਰ੍ਹਾਂ ਮਾਉਲ ਚ ਬਣਨਾ ਹੈ ਕਿਵੇਂ ਦਰਵਾਜ਼ਾ ਪਿਛਲੇ ਲਈ ਫੜਨਾ ਕਿਸੇ ਨੂੰ ਥੈਂਕ ਯੂ ਕਿਵੇਂ ਕਹਿਣਾ ਲਾਈਨ ਚ ਕਿਵੇਂ ਖੜਨਾ ਸੜਕ ਕਿਵੇਂ ਟੱਪਣੀ ਹੈ ਸਮਾਨ ਵਿੱਚੋਂ ਚੱਕ ਕੇ ਕਿਸੇ ਮਾਲ ਦੇ ਵਿੱਚੋਂ ਨਹੀਂ ਖਾਣਾ ਚਾਹੇ ਤੁਸੀਂ ਪੈਸੇ ਔਰ ਇਹ ਕਈ ਵਾਰ ਆਪਾਂ ਬਹੁਤ ਬਾਹਰ ਇੱਥੇ ਦੇਖੀਦਾ ਬੱਚਿਆਂ ਨੂੰ ਕੁਲਫੀਆਂ ਕੱਢ-ਕੱਢ ਅਸੀਂ ਖਲਾਈ ਜਾਂਦੇ ਆ ਉਹ ਕ ਵਿੱਚ ਉਹਨਾਂ ਦੀ ਪੈਕਿੰਗ ਰੱਖੀ ਜੰਨੇ ਵੀ ਜਾ ਕੇ ਪੈਸੇ ਦੇ ਦਾਂਗੇ ਪਰ ਇਹ ਇਹ ਬਿਲਕੁਲ ਗਲਤ ਹੈ ਅਸਲ ਸਿਸਟਮ ਇਹ ਹੈ ਵੀ ਪੇ ਪਹਿਲਾਂ ਕਰਨਾ ਤੇ ਖਾਣਾ ਬਾਅਦ ਪੰਜਾਬੀ ਦੇ ਵਿੱਚ ਲਿਖ ਲਿਖ ਕੇ ਜਿਹੜਾ ਲਾਇਆ ਨਾ ਵੀ ਇਹਨਾਂ ਨੂੰ ਸ਼ੂ ਨਾ ਇਹ ਬਰਾਮਾ ਨੂੰ ਚੱਕ ਕੇ ਖਾਓ ਨਾ ਪਹਿਲਾਂ ਨੂੰ ਸੀ ਲਿਖਿਆ ਹੁੰਦਾ ਉੱਥੇ ਫੇਰ ਆ ਉੱਥੇ ਹੀ ਕਰਾਂ ਕਿ ਸਟੇਰਿੰਗ ਜਿਹੜੀ ਹੈ ਗਲਤ ਝਾਕਣਾ ਜਿਹੜਾ ਇਹ ਇਹਦੇ ਵਿੱਚੋਂ ਕੀ ਲੱਭੀਦਾ ਇਹ ਕੀ ਹੈ ਇੱਜ਼ਤ ਵਾਲੀ ਜਗ੍ਹਾ ਤੁਸੀਂ ਗਵਾਉਨੇ ਹੋ ਔਰ ਵੇਖਣ ਨਾਲ ਕੱਖ ਨਹੀਂ ਵੱਟੀ ਦਾ ਕੱਖ ਵੀ ਜੇ ਕੁਝ ਅਜੀਬ ਹੁੰਦਾ ਹੋਵੇ ਵੇਖੀ ਤਾਂ ਦੁਨੀਆ ਹੀ ਜਾਂਦੀ ਹੈ ਸਾਰਾ ਦਿਨੇ ਆਪਾਂ ਵੇਖੀ ਜਾਂਦੇ ਔਰ ਇਹ ਬਹੁਤ ਬੜਾ ਮਲੰਮਾ ਜਿਹੜਾ ਚੜਿਆ ਹੋਇਆ ਜਿਹੜਾ ਭਾਰਤ ਤੋਂ ਪੰਜਾਬ ਤੋਂ ਜਾਂ ਕਿਤੋਂ ਹੋਰ ਆਉਂਦਾ ਉਹ ਸਾਡੇ ਇਸ ਦੇਸ਼ ਦੇ ਬਾਰੇ ਇਹਨਾਂ ਲੋਕਾਂ ਦੇ ਬਾਰੇ ਜਾਂ 20-25 ਸਾਲ ਜਿਹੜੇ ਪਹਿਲੇ ਆਏ ਨੇ ਉਹਨਾਂ ਬਾਰੇ ਹੋਰ رائے ਆ ਉਹ ਲੋਕਾਂ ਦੀ ਉਹ ਜਿਹੜਾ ਉੱਥੇ ਦਾ ਕਲਚਰ ਹੈ ਜਿਹੜਾ ਉੱਥੇ ਫਿਲਮਾਂ ਦੇ ਵਿੱਚ ਜਾਂ ਗੱਲਾਂ ਦੇ ਵਿੱਚ ਸਾਨੂੰ ਦੇਖਦੇ ਆ ਉਹ ਲਾਈਨ 'ਚ ਖੜੇ ਕਰ ਲੈਂਦੇ ਆ ਉਹਦੇ 'ਚ ਰੰਗ ਵੀ ਚੱਕਿਆ ਜਾਂਦਾ ਫਿਰ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੇ ਹੁੰਦਾ ਵੀ ਚਿੱਟੇ ਕਾਲੇ ਨਹੀਂ ਜਿਹੜਾ 25-30 ਸਾਲਾਂ ਦਾ ਉੱਥੇ ਰਹਿ ਗਿਆ ਕੈਨੇਡੀਅਨ ਅਮਰੀਕਨ ਨਾਲ ਉਹ ਇੰਗਲੈਂਡੀਆ ਹੀ ਹੈ ਉਹ ਇਹਨਾਂ ਦੀਆਂ ਹੋਰ ਹੀ ਕਦਰਾਂ ਕੀਮਤਾਂ ਹੁੰਦੀਆਂ ਤੈਨੂੰ ਨਹੀਂ ਪਤਾ ਉੱਥੇ ਇਹ ਗੱਲਾਂ ਚੱਲਦੀਆਂ 18420471550 ਤੁਸੀਂ ਜੁਆਇਨ ਕਰੋ ਇਹ ਇਹ ਗੱਲ ਜਿਹੜੀ ਮੁਸ਼ਕਲ ਹੋ ਰਹੀ ਹੈ ਬਾਰ ਵੀ ਹੋ ਰਹੀ ਹੈ ਲੋਕਾਂ ਲਈ ਔਰ ਘਰ 'ਚ ਵੀ ਹੋ ਰਹੀ ਹੈ ਕਿਸੇ ਜਗ੍ਹਾ ਤੇ ਕਿਸੇ ਰਤਬੇ ਤੇ ਬੈਠੇ ਬਜ਼ੁਰਗ ਨੂੰ ਜਾਂ ਮਾਤਾ ਨੂੰ ਕਿਹੜੀਆਂ ਚੀਜ਼ਾਂ ਦੱਸਣੀਆਂ ਪੈਣਗੀਆਂ ਵੀ ਇਸ ਤਰ੍ਹਾਂ ਬਾਪੂ ਜੀ ਇਉਂ ਨਹੀਂ ਕਰੀਦਾ ਆ ਨਹੀਂ ਕਰੀਦਾ ਕਿਉਂਕਿ ਹੁਣ ਮੂਰੇ ਬਾਪ ਬੈਠਾ ਪੁੱਤ ਕਿਹੜੀਆਂ ਗੱਲਾਂ ਨਾਲ ਕਹੇ ਤੇ ਨੂੰ ਕਿ ਮੈਂ ਕਹੇ ਤੇ ਫਿਰ ਕਹੇ ਕਿਹੜਾ ਕਰੈਕਟ ਕਿ ਮੈਂ ਕਰੇ ਤੇਜਵੀਰ ਸਿੰਘ ਜੀ ਲਾਈਨ ਨੰਬਰ 2 ਸਸਿਕਾ ਜੀ ਜੀ ਸਸਿਕਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਆਪਾਂ ਇਹ ਕੱਲੀ ਕੋਈ ਆਪਣਾ ਕੋਈ ਚਾਹੀਦੀ ਵੀ ਦੀ ਜਾਂ ਜੀ ਇਹ ਜਿਹੜੇ ਆਪਣੇ ਮਿਡਲ ਈਸਟ ਤੋਂ ਆਏ ਜਿੱਥੇ ਵੀ ਪਰਦਾ ਪ੍ਰਥਾ ਬਹੁਤ ਹੀ ਜ਼ਿਆਦਾ ਉੱਥੇ ਇਹ ਦੀ ਕਾਮਨ ਪ੍ਰੋਬਲਮ ਹੈ ਜੀ ਹੁਣ ਅਸੀਂ ਕੀ ਚਾਹੁੰਦੇ ਆ ਕਿ ਵੀ ਅਸੀਂ ਟੱਕ ਕੇ ਵੀ ਸਾਡਾ ਕਲਚਰ ਬਚੇ ਇੱਕ ਪਾਸੇ ਤਾਂ ਅਸੀਂ ਆਪਣਾ ਪੰਜਾਬੀ ਕਲਚਰ ਕਹਿ ਲਈਏ ਮੁਸਲਿਮ ਕਲਚਰ ਕਹਿ ਲਈਏ ਜਾਂ ਹਿੰਦੂ ਵੀ ਕਹਿ ਲਈਏ ਪਰ ਸਰ ਦੇ ਵਿੱਚ ਵੀ ਅਸੀਂ ਆਪਣੇ ਆਪ ਨੂੰ ਔਰਤ ਨੇ ਟੱਕ ਕੇ ਰੱਖਣਾ ਔਰ ਟੱਕ ਕੇ ਦੂਜੇ ਪਾਸੇ ਅਸੀਂ ਚਾਹੁੰਦੇ ਵੀ ਉਹ ਨਿਗਾ ਵੀ ਨਾ ਹੋਵੇ ਹੁਣ ਮੈਂ ਨਿੱਕੀ ਜਿਹੀ ਪ੍ਰੈਕਟੀਕਲ ਦੱਸਦਾ ਜੇ ਅਸੀਂ ਕਾਲਜ ਵਿੱਚ ਸੀ ਅਸੀਂ ਕੇਰਲਾ ਗਿਆ ਕੋਗਲਮ ਬੀਚ ਰਿਸਰਚ ਉੱਥੇ ਵਾਸਤੇ ਉੱਥੇ ਗੋੜੇ ਆਏ ਉਹ ਨੈਚਰੀ ਮੁੰਡੇ ਮੁੰਡੇ ਸੀ ਵੀ ਤੁਹਾਨੂੰ ਇੱਕ ਦਿਨ ਐਕਸਾਈਟਮੈਂਟ ਹੁੰਦੀ ਆ ਯਾਰ ਐ ਹੁੰਦਾ ਐ ਹੁੰਦਾ ਜਦੋਂ ਪੰਜਵੇਂ ਦਿਨ ਉਹ ਅਸਾਈਨਮੈਂਟ ਖਤਮ ਹੋ ਗਈ। ਸੋ ਅਸੀਂ ਦੋ ਗੱਲਾਂ ਨਹੀਂ ਕਰ ਸਕਦੇ ਵੀ ਸਾਡਾ ਕਲਚਰ ਹੈ ਜਿਹੜਾ ਕਹਿੰਦਾ ਓਵਰ ਢੱਕੋ ਤੇ ਦੂਜੇ ਪਾਸੇ ਅੱਖ ਵੀ ਨਾ ਜਾਵੇ ਇਹ ਜਿਹੜੇ ਮਤਲਬ ਗੱਲ ਵੀ ਗਲਤ ਹੈ। ਸੋ ਅਸੀਂ ਜਾਂ ਤੇ ਆਪਣੇ ਆਪ ਨੂੰ ਕੀ ਕਰੋਗੇ ਨਾ ਇੱਧਰ ਕਹਿੰਦੇ ਵੀ ਖਾਵੇ ਤੇ ਮਤਲਬ ਕੋੜ ਕਿਰ ਖਾਵੇ ਤੇ ਮਰਿਆ ਤਾਂ ਛੱਡੇ ਜਾਨਾ। ਸੋ ਅਸੀਂ ਇਹਨੂੰ ਕ੍ਰਾਸ ਕਲਚਰ ਚ ਫਸੇ ਹੋਏ ਆ। ਸੋ ਸਾਡੇ ਕਲਚਰ ਨੇ ਸਿੱਖੀ ਦੇ ਵਿੱਚ ਮੁਸਲਿਮ ਦੇ ਵਿੱਚ ਇਹ ਜਿਸ ਤਰੀਕੀ ਕਿਸੇ ਇਰਾਦੇ ਨਹੀਂ ਕੀ ਦੂਜੇ ਪਾਸੇ ਦੂਜੇ ਕੰਟਰੀ 'ਚ ਹੋਏ ਆ ਸੋ ਇਹ ਮਤਲਬ ਧੱਕੇ ਖਾਣ ਵਾਲਾ ਕੰਮ ਹੈ ਜੀ ਗੱਲ ਨਹੀਂ ਕਹੂਗਾ ਜਿੰਨੀ ਕਿਸੇ चीज ਨੂੰ ਧੱਕੋਗੇ ਉਨੇ ਉਹਦੇ ਵੱਲ ਆਕਰਸ਼ਣ ਵਧੂਗਾ ਸੋ ਸਾਈਕੋਲੋਜੀ ਦੇ ਵਜਲ ਅਸੀਂ ਮੈਨਣੇ ਨਹੀਂ ਕਿਸੇ ਰਿਲੀਜੀਅਨ ਵਾਲੇ ਨੇ ਸੋ ਇਨੀ ਗੱਲ ਕਰਨੇ ਸਿਰ ਰਿਲੀਜੀਅਨ ਦੀ ਤਲਵਾਰ ਸਿੰਘ ਜੀ ਲਾਈਨ ਨੰਬਰ 3 ਸਸੀ ਗਲਬਾਈ ਜੀ ਸਸੀ ਕਾਹ ਬਾਈ ਜੀ ਸਸੀ ਭਾਈ ਜੀ ਜਿਵੇਂ ਕਹਿੰਦਾ ਬੀਚ ਤੇ ਆ ਪਿਛਲੇ ਗਰਮੀਆਂ ਦੀ ਗੱਲ ਹੀ ਆ ਆਪਣੇ ਤਿੰਨ ਬਜ਼ੁਰਗ ਤੇ ਉਹ ਦੋ ਦੇ ਕਾਰਗੀਆਂ ਦਸ ਸਕੈਨ ਕਰਵਾ ਸਾਰੇ ਪਾਏ ਵੇ ਵੀ ਉੱਥੇ ਐ ਬਾਬਾ ਦੇਖਦੇ ਆ ਮੁੜ ਕੇ ਉਹਨਾਂ ਦਾ ਜਲੂਸ ਉਹ ਕੋਰੇ ਸਾਰੇ ਝਾਕਦੇ ਆ ਇਹਨਾਂ ਦੇ ਐਨਕਾ ਵੀ ਤਾਂ ਲਾਈਆਂ ਵੀ ਪਤਾ ਨਾ ਲੱਗੇ ਕਿੱਧਰ ਝਾਕਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਤੇ ਬਾਕੀ ਇਹ ਆ ਗੱਲ ਆ ਵੀ ਇਹ ਹੁਣ ਬਜ਼ੁਰਗ ਜਦੋਂ ਮੋਲਾ ਮੂਲਾ ਚ ਬੈਠਦੇ ਇਥੋਂ ਵੀ ਬੈਠਣੇ ਉੱਠਣੇ ਚਾਹੀਦੇ ਨਹੀਂ ਆਪਾਂ ਤਾਂ ਪਾਰਕਾਂ ਚ ਬੈਠੋ ਤੇ ਬਜ਼ੁਰਗ ਬਜ਼ੁਰਗ ਸਾਰੇ ਗੱਲਾਂ ਬਾਤਾਂ ਕਰੋ ਆਪਦੇ ਘਰਾਂ ਨੂੰ ਆਜੋ ਉਥੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਸੋਫੇ ਰੱਖੇ ਕਾਦੇ ਵਾਸਤੇ ਥੋੜਾ ਜਿਹਾ ਸਮਝਾਉਣ ਦੀ ਲੋੜ ਆ ਵੀ ਜੀ ਭੈੜਾ ਲੱਗਦਾ ਥੋੜਾ ਜਿਹਾ ਕੰਟਰੋਲ ਰੱਖਿਆ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਨਾਲੇ ਧੰਨਵਾਦ ਮੈਂ ਇਹ ਨਹੀਂ ਕਹਿੰਦਾ ਬਹੁਤ ਦਾਨੇ ਬਜ਼ੁਰਗ ਨੇ ਸਾਡੇ ਸਤਕਾਰਤ ਵੱਡੇ ਪਰਿਵਾਰਾਂ ਆਲੇ ਮੈਂ ਨਹੀਂ ਕਹਦਾ ਸਾਰੇ ਔਰ ਮੈਂ ਇਹ ਵੀ ਨਹੀਂ ਮੰਨਦਾ ਵੀ ਉਹਨਾਂ ਦੀ ਗਲਤੀ ਹੈ ਕਈ ਵਾਰ ਹੁਣ ਇਹ ਉਮਰ ਚ ਆਏ ਨੇ ਉਹਨਾਂ ਨੂੰ ਸਾਡਾ ਦੱਸਣਾ ਫਰਜ਼ ਹੈ ਬਾਹਰ ਵਾਲੀ ਆਦਤ ਫੇਰ ਘਰੇ ਵੀ ਜਾਂਦੀ ਹੈ ਘਰ 'ਚ ਵੀ ਸਾਡੀ ਉਹ ਨਿਗਾਹ ਰਹਿੰਦੀ ਹੈ ਫਿਰ ਔਰ ਨਿਗਾਹ ਉਹ ਬਦਲਦੀ ਕਿਵੇਂ ਹੈ ਅਲੱਗ-ਅਲੱਗ ਰਿਸ਼ਤਿਆਂ ਦੇ ਵਿੱਚ ਉਹ ਨਿਗਾਹ ਬਦਲਦੀ ਫਿਰ ਕਿਵੇਂ ਹੈ ਬਹੁਤ ਵੱਡਾ ਵਿਸ਼ਾ ਔਰ ਇਹ ਹੋ ਰਿਹਾ ਇਹਨੂੰ ਠੀਕ ਕਰਨ ਦੀ ਲੋੜ ਹੈ ਇਹ ਪੁੱਤਾਂ ਬਦੋਂ ਡਿਊਟੀ ਨਿਭਾਉਣੀ ਪੈਣੀ ਆ ਬਜ਼ੁਰਗਾਂ ਬੈਠ ਕੇ ਕਿ ਬਾਪੂ ਜੀ ਇਸ ਤਰ੍ਹਾਂ ਨਹੀਂ ਬਾਹਰ ਇੱਥੇ ਕਰਦੇ ਜਾਂ ਕੁਝ ਵੀ ਕਹਿਣਾ ਪੋ ਕਨਦੀਪ ਸਿੰਘ ਜੀ ਬਾਈ ਜੀ ਸਰ ਸਾਡੇ ਅਸੀਂ ਜਿਹੜੇ ਸਾਰੇ ਸਟੂਡੈਂਟਸ ਇੱਥੇ ਆਏ ਸੀਗੇ ਤੇ ਪੱਕੇ ਵੀ ਇੱਥੇ ਹੋ ਗਏ ਫਿਰ ਘਰ ਘਰ ਲੈ ਲਏ ਤੇ ਫਿਰ ਸਾਰੇ ਨੇ तकरीबन ਸੁਪਰਵਾਈਜ਼ੇ ਲਵਾ ਲਵਾ ਕੇ ਆਪਣੇ ਮਾਪੇ-ਬਾਪ ਨੂੰ ਬੁਲਾਇਆ ਤੇ ਫਿਰ ਵੀ ਹਜੇ ਸਟੂਡੈਂਟਸ ਦਾ ਕਾਫੀ ਉਮਰ ਵਾਲੇ ਨੇ ਜਿਵੇਂ 40-45 ਸਾਲ ਵਾਲੇ ਜਿੰਨਾ ਉਹਨਾਂ ਦੇ ਮਾਪੇ ਆਉਂਦੇ ਜਾਂ ਉਹਨਾਂ ਨੂੰ ਥੋੜੀ ਪ੍ਰੋਬਲਮ ਆਉਂਦੀ ਆ ਤੇ ਸਾਡੇ ਵੀ ਥੋੜੀ ਜਿਹੀ ਇੱਥੇ 1-2 ਕੰਪਲੇਂਟਸ ਆਈਆਂ ਜਿਵੇਂ ਅਸੀਂ ਆਪਸ ਹੀ ਵੇਖਿਆ ਇੱਥੇ ਸਾਡੇ ਨਵੇਂ ਏਰੀਏ ਬਣਦੇ ਪਏ ਆ ਉੱਥੇ ਲੋਕ ਆਪਣੇ ਪੰਜਾਬੀਆਂ ਨਹੀਂ ਸਾਰੇ ਉੱਥੇ ਨਾ ਨਾਲ ਸਾਡੇ ਖੇਤੀਬਾੜੀ ਬਹੁਤ ਹੁੰਦੀ ਹੈ ਖਾਸ ਕਰਕੇ ਖੇਤ ਹੁੰਦੇ ਆ ਕਣਕ ਤੇ ਸਰੋਂ ਬਹੁਤ ਬੀਜਦੇ ਲੋਕ ਤੇ ਆਪਣੇ ਇੱਥੇ ਨਾ ਔਰਤਾਂ ਪਾਰਕਾਂ 'ਚ ਬੈਠੀਆਂ ਹੁੰਦੀਆਂ ਦੇ ਅਚਾਨਕ ਇਹ ਨਾ ਪਿੱਛੇ ਜੇ ਕੀ ਹੋਇਆ ਉਹ ਬੱਚਿਆਂ ਦੇ ਮਾਪੇ ਆਏ ਤੇ ਪਾਰਕਾਂ 'ਚ ਬੈਠੇ ਤੇ ਉਹ ਲੇਡੀਜ਼ ਕੀ ਕੀਤਾ ਚੱਕ ਕੇ ਨਾ ਚੁੰਨੀ ਜਿਵੇਂ ਪਿੰਡਾਂ 'ਚ ਹੁੰਦਾ ਸੀ ਚੁੰਨੀ ਚੱਕੀ ਖੇਤਾਂ 'ਚ ਵੜ ਗਏ ਤੇ ਉਥੋਂ ਸਾਗ ਦੀਆਂ ਗੰਦਲਾਂ ਤੋੜ ਕੇ ਬਾਤੂ-ਬੂਤੂ ਤੋੜ ਕੇ ਤੇ ਤੁਰੀਆਂ ਆਉਂਦੀਆਂ ਰਾਹ 'ਚ ਸੜਕਾਂ ਦੇ ਜੋ ਕਰ ਕਿਸੇ ਸਿਆਣੇ ਬਾਰੇ ਬੰਦੇ ਨੇ ਫੜ ਲਿਆ ਤੇ ਉਹਨਾਂ ਨੇ ਕਿਹਾ ਵੀ ਭਾਈ ਇਹ ਇੱਥੇ ਨਹੀਂ ਮੇਰੇ ਨਾਲ ਇਨਸੀਡੈਂਟ ਇਦਾਂ ਹੋਇਆ ਵੀ ਇੱਕ ਨਾ ਬੰਦਾ ਆਇਆ ਤੇ ਸਾਡੇ ਦੇਸੀ ਗਰੋਸਰੀ ਸਟੋਰ ਤੋਂ ਨਾ ਉਹ ਟੀਂਡੇ ਲਈ ਜਾਂਦਾ ਸੀਗਾ ਤੇ ਹੁਣ ਜਗ੍ਹਾ ਥੋੜੀ ਘੱਟ ਸੀ ਤੇ ਮੈਂ ਪਿੱਛੇ ਖੜ ਕੇ ਵੇਟ ਕਰੀ ਜਾਂਦਾ ਵੀ ਚਲੋ ਅੰਕਲ ਨੂੰ ਲੈ ਲੈਂਦੇ ਉਹ ਅੰਕਲ ਐਨਾ ਕਿ ਨੁਕੋਚਣਾ ਬਈ ਉਵੇਂ ਜਿਵੇਂ ਨਾ ਉਹ ਨਖਰੇ ਜੇ ਕਰੀ ਜਾਣੇ ਵੀ ਆਪਾਂ ਪਏ ਉੱਥੇ ਪੰਜਾਬ ਦੇ ਰੇੜੀ ਦੇ ਵਿੱਚੋਂ ਤੇ ਇਹਨੂੰ ਐ ਮਤਲਬ ਕਾਊਂਟਰ ਦੇ ਉੱਤੋਂ ਮਤਲਬ ਇਹੋ ਜੀਆਂ ਚੀਜ਼ਾਂ ਨਾ ਕਰਨੀਆਂ ਨਹੀਂ ਚਾਹੀਦੀਆਂ ਉਹ ਆਪ ਤਾਂ ਜਾਂਦੀਆਂ ਨਹੀਂ ਹੈਗੀਆਂ ਕਿ ਬਾਕੀ ਬਹੁਤ ਦੇ ਵਿੱਚ ਮਤਲਬ ਇਹ ਹੈ ਕਿ ਸਟੂਡੈਂਟ ਜਿਹੜੇ ਸਾਡੇ ਹੈਗੇ ਯੰਗ ਆ ਫਿਰ ਵੀ ਉਹ ਸਮਝਾਉਂਦੇ ਆ ਤੇ ਉਹ ਸਮਝਦੇ ਵੀ ਹੈਗੇ ਆ ਮਾਪੇ ਕਿਉਂਕਿ ਕੋਈ ਯੰਗ ਹੈਗੀ ਆ ਤੇ کافی ਫਰਕ ਹੈਗਾ ਪਰ ਜਿਵੇਂ ਮੈਂ ਟ੍ਰਾਂ ਟ੍ਰਾਂਟੋ ਵਗੈਰਾ ਬ੍ਰਾਂਟੋ ਵਗੈਰਾ ਵਾਕਿਆ ਹਾਂ ਉੱਥੇ ਪ੍ਰੋਬਲਮ ਆਪ ਦੇਖਿਆ ਤਾਸ਼ ਕੁੱਟਦੇ ਆ ਤੇ ਹਾ ਹਾ ਹਾ ਉੱਚੀ ਉੱਚੀ ਥਾਠੇ ਮਾਰ ਨੇ ਲੋਕ ਵੀ ਨੇ ਆ ਤੇ ਉਹਦੋਂ ਫਿਰ ਉਹ ਜਿਵੇਂ ਕਾਫੀ ਵਾਲੇ ਜਿਹੜੇ ਹੁੰਦੇ ਆ ਜਿਵੇਂ ਕਾਊਂਟਰ ਤੇ ਕੰਮ ਕਰਦੀਆਂ ਲੇਡੀਜ਼ ਹੁੰਦੀਆਂ ਖਾਸ ਕਰਕੇ ਆਪਣਾ ਇੰਗਲਿਸ਼ ਸਪੋਕਨ ਕਮਿਊਨਿਟੀ ਦੇ ਵਿੱਚੋਂ ਉਹਨਾਂ ਦੇ ਫਿਰ ਉਹਨਾਂ ਵੀ ਚੀਜ਼ਾਂ ਮਾਰਨੀਆਂ ਜਾਂ ਫਿਰ ਜੇ ਉਹ ਸਬਜ਼ੀ ਲੈਣ ਜਾਣਾ ਤਾਂ ਮੂੰਹ ਚ ਪਾ ਕੇ ਉਂਗਲ ਤੇ ਪਹਿਲਾਂ ਧਨੀਏ ਦੀ ਗੁੱਟੀ ਚੈੱਕ ਕਰਨੀ ਲੱਗੇ ਨਾਲ ਤੇ ਫਿਰ ਉਹ ਇਹੋ ਜਿਹੀਆਂ ਚੀਜ਼ਾਂ ਕਈ ਨਿੱਕੇ ਨਿੱਕੇ ਜੀਜ਼ਾ ਹੈਗੀਆਂ ਜਿਹੜੀਆਂ ਸਮਝਾਉਣ ਵਾਲੀਆਂ ਜਿਹੜੀਆਂ ਪ੍ਰੋਬਲਮ ਹੈਗੀਆਂ ਬਾਕੀ ਇਹ ਤੁਹਾਡੇ ਬਹੁਤ ਸਹੀ ਹੈ ਕਿ ਜਿਹੜੇ ਲੇਡੀਜ਼ ਆ ਉਹਨਾਂ ਦੇ ਵਿੱਚ ਹੀ ਪਤਾ ਲੱਗ ਜਾਂਦਾ ਬੰਦੇ ਦੀ ਅੱਖ ਕਿੱਦਾਂ ਦੀ ਹੈਗੀ ਥੈਂਕ ਯੂ ਗਿਲ ਧੰਨਵਾਦ ਜੀ ਵਪਾਰਖ ਨਰਿੰਦਰ ਸਿੰਘ ਜੀ ਹ ਸਰ ਨਵਿੰਦਰ ਸਿੰਘ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਦੇ ਕਹਿੰਦਾ ਇੱਥੇ ਸਾਡੇ ਪਿੰਡਾ ਮਾਲਟਨ ਦੇ ਵਿੱਚ ਮੀਸਾ ਗੱਜ ਦਾ ਸ਼ੂਡ ਵਾਲ ਪਿੰਕਾ ਤੇ ਉੱਥੇ ਜਮਾਲਿਆ ਤੇ ਬਿੱਤੇ ਠਿਕਾ ਉਹ ਕਹਿੰਦਾ ਮੈਨੂੰ ਬੋਤਲ ਲੈ ਕੇ ਉਹਨਾਂ ਨੇ ਲੈ ਗਿਆ ਵਾਸੂ ਦੇ ਵਿੱਚ ਨਾ ਅਪਰੇ ਆ ਪੀਜੀ ਦੇ ਉੱਤੇ ਪੂਏ ਹੋਏ ਤੇ ਧਾਰੋ ਹੀ ਰਹਿ ਗਏ। ਉਹਕੇ ਦਾ ਉਹਿਆ ਤਾਂ ਨੋਚੀ ਵਾਹ ਕੇ ਨਾ ਤੇ ਖੜ ਜਾ। ਉਸੇ ਬਜ਼ੁਰਗ ਬੈਠੇ ਅੱਖਾਂ ਲਾਲ ਇੱਕਾਟੇ ਮੋਟੇ ਜੇ ਇਧਰ ਜੋ ਅੱਖਾਂ ਤੁਹਾਡੀ ਗੱਲ ਸਹੀ ਹੈ ਇੱਕੋ ਅੱਖ ਜਿਹੜੀ ਗੱਡ ਲਈ ਨਾ ਉਹ ਜਿੰਨੇ ਤੇ ਜਨਾਨੀ ਉਹਲੇ ਨਹੀਂ ਹੋਈ ਅੱਖ ਨਹੀਂ ਚੱਕੀ ਉਹ ਬਜ਼ੁਰਗ ਮੈਂ ਖੜਾ ਦੇਖੀ ਯਾਰ ਵਾਰੀ ਚਾਰ ਵਾਰੀ ਕਰ ਜਾਦਾ ਹੱਦ ਹੁੰਦੀ ਕਿਸੇ ਚੀਜ਼ ਇਹ ਨਹੀਂ ਕਿੰਨੇ ਖਰੇ ਪੱਤੀ ਵਾਂ ਤੋਂ ਦੇਖੋ ਚੋਰਾ ਕਰਨ ਨੂੰ ਦੇਖਣਾ ਤਰੀਕਾ ਹੰਦਾ ਇੱਕ ਜੀ ਕਿਉਂਕਿ ਉੱਥੇ ਵਾਲੀ ਦੇ ਬਸ ਹਾਂਜੀ ਜੀ ਸਾਨੀ ਮਰਵਿੰਦਰ ਕੌਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਹਾਂ ਜਿਹੜੀ ਪ੍ਰੋਬਲਮ ਵੀ ਜੀ ਦੱਸ ਕੇ ਗਏ ਮੈਂ ਉਹਦੇ ਬਾਰੇ ਗੱਲ ਕਰਨੀ ਸੀ ਆਪਸ 47 ਉਹ ਕਮਾਲ ਦੇ ਵਿੱਚ ਨਾ 7-8 ਜਣੇ ਆ ਜਿਵੇਂ ਅarli ਲਈ ਲਈ ਹੋਈ ਰਿਟਾਇਰਮੈਂਟ ਜਾਂ ਉਹਨਾਂ ਨੇ ਕੋਈ ਦੀਆਂ ਚਿਹਰਾਂ ਤੇ ਬੈਠੇ ਰਹਿੰਦੇ ਆ ਤੇ ਜਦੋਂ ਕੋਈ ਆਪਣੀ ਪੰਜਾਬੀ ਲੇਡੀ ਵਰਦੀ ਅੰਦਰ ਫਿਰ ਉਹਦੇ ਵੱਲ ਸਿੱਧੇ ਝਾਕਣਾ ਜਾਵਾ ਜਿੰਨਾ ਚਿਰ ਉਹ ਗਾਂ ਨਹੀਂ ਲੰਗ ਜਾਂਦੀ ਤੇ ਇੰਨਾ ਉਹਦੇ ਤਰ੍ਹਾਂ ਮਹਾਲ ਹੋਇਆ ਨਾ ਰੋਜ਼ ਹੀ ਉਹਨਾਂ ਨੇ ਉੱਥੇ ਬਹਿਣਾ ਇੱਕ ਦੋ ਬਜ਼ੁਰਗ ਆ ਬਾਕੀ ਜਿਵੇਂ ਹੈਗੇ 60 ਤੋਂ ਥੱਲੇ ਥੱਲੇ ਆ ਇਹ ਇਦਾਂ ਦੇ ਪ੍ਰੋਬਲਮ ਵੀ ਉਹਨਾਂ ਨੂੰ پارک ਹੈਗੇ ਬਣੇ ਆ ਉੱਥੇ ਜਾ ਕੇ ਬਹਿ ਜਾਣਾ ਉੱਥੇ ਤਾਸ਼ਾਂ ਖੇਡਣ ਰੂਮ ਬਣੇ ਆ ਉੱਥੇ ਬਹਿ ਜਾਣਾ ਮਾਲਾਂ ਦੇ ਵਿੱਚ ਸਾਰਾ ਦਿਨ ਉੱਥੇ ਜਾ ਕੇ ਬੈਠੇ ਰਹਿੰਦੇ ਆ ਐਵਰੀ ਡੇ ਸੱਤੇ ਦਿਨ ਧੰਨਵਾਦ ਜੀ ਇੰਸਿੰਟਵਾਣਾ ਜੀ ਲਾਈਨ ਨੰਬਰ 4 ਅਬਸਿਕਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪ੍ਰੋਬਲਮ ਤਾਂ ਪਤਾ ਹੀ ਹੈ ਜਿਹੜੇ ਜਿਹ ਆਪਾਂ ਜਿਹੜੀ ਕਮਿਊਨਿਟੀ ਤੋਂ ਆਇਆ ਵਿੱਚ ਵਿੱਚ ਕੁਝ ਹੁੰਦੀ ਤੇ ਆਪਣੇ ਸਿਆਣੇ ਬੰਦੇ ਨੂੰ ਸਿੱਧਾ ਜਦੋਂ ਕਹਿੰਦੇ ਆ ਨਾ ਅਗਲਾ ਮੂਰੇ ਤੋਂ ਕਹਿੰਦਾ ਵੀ ਮੈਨੂੰ ਆਏ ਸਮਝਦੇ ਹੋ ਨਾ ਕਈ ਵਾਰੀ ਇਹ ਗੱਲ ਮੈਨੂੰ ਲੱਗਦਾ ਜੇ ਜੇ ਬੀਬੀਆਂ ਮਾਤਾਵਾਂ ਨੂੰ ਥੋੜਾ ਬੋਤਾ ਕਿਹਾ ਜਾਵੇ ਕਿਸੇ ਤਰੀਕੇ ਨਾਲ ਕਿਉਂਕਿ ਫਿਰ ਵੀ ਹੈਲੋ ਜੇ ਬੰਦਾ ਆਪਣੀ ਮਾਂ ਨਾਲ ਵੀ ਗੱਲ ਕਰਦਾ ਉਹ ਬਜ਼ੁਰਗ ਹੁਣ ਬੀਬੀ ਨਾਲ ਅਗਲਾ ਉਹ ਨੂੰ ਥੋੜਾ ਜਿਹਾ ਤਰੀਕੇ ਨਾਲ ਕਿਹਾ ਜਾ ਸਕਦਾ ਤੇ ਫਿਰ ਉਹ ਹੋਰ ਤਰੀਕੇ ਦੀ ਹੁੰਦੀ ਹੈ ਉਹਨਾਂ ਦੀ ਗੱਲਬਾਤ ਹਸਬੈਂਡ ਵਾਈਫ ਦੀ ਤੇ ਉਹਦਾ ਬੁਰਾ ਘੱਟ ਲੱਗੂਗਾ بجائے ਕਈ ਵਾਰੀ ਹਾਂ ਜਿਹੜੇ ਬੰਦੇ ਯੰਗ ਨੇ ਜਿਹੜੇ ਆਪਾਂ ਨੂੰ ਪਤਾ ਵੀ ਯੰਗ ਜਨਰੇਸ਼ਨ ਉਹ ਤਾਂ ਅੱਜ ਕੱਲ੍ਹ ਦੋਸਤਾਂ ਵਾਂਗ ਹੀ ਨੇ ਤਕਰੀਬਨ ਜਿਹੜੇ ਭਾਈ ਜੀ ਦੱਸਤੀ ਗਏ ਨੇ ਪਹਿਲਾਂ ਵੀ ਅੱਜ ਕੱਲ੍ਹ ਸਟੂਡੈਂਟਸ ਦਾ ਰਿਲੇਸ਼ਨ ਹੈ ਜਾਂ ਜਿਵੇਂ ਅੱਜਕੱਲ ਸਾਡਾ ਆਪਣੇ ਬੱਚਿਆਂ ਨਾਲ ਰਿਲੇਸ਼ਨ ਹੈ ਬਹੁਤ ਨੋਰਮਲ ਪਰ ਅੱਜ ਤੋਂ ਜਿਹੜੇ ਸਾਡੇ ਡੈਡੀ ਉਹਨਾਂ ਦੇ ਉਮਰ ਦੇ ਨੇ ਦਾ ਰਿਲੇਸ਼ਨ ਬਾਪ ਤੇ ਪੁੱਤ ਦਾ ਇੱਕ ਇੱਕ ਨਿੱਕੀ ਗੱਲ ਹੀ ਨਹੀਂ ਕਰਦੇ ਸੀ ਜੇ ਇੱਕ ਸੀ ਇੱਕ ਦੂਜੇ ਨਾਲ ਤੇ ਨੋਖ ਝੋਕ ਹੁੰਦੀ ਸੀ ਬਾਕੀ ਇਹ ਵੀ ਥੋੜਾ ਜਿਹਾ ਜਿਹੜੇ ਬਜ਼ੁਰਗ ਪਿੰਡਾਂ 'ਚ ਇੰਡੀਆ 'ਚ ਵੀ ਇਹ ਗੱਲ ਹੁੰਦੀ ਆ ਥੋੜੇ ਜਿਹੜੇ ਬੰਦੇ ਰਾਠ ਨੇ ਥੋੜਾ ਜਿਹਾ ਲੋਕਾਂ ਨੂੰ ਲੱਗ ਗੱਲ ਕਹਿਣੀ ਹੁਣ ਆਪਾਂ ਲੇਡੀਜ਼ ਨੇ ਉਹ ਵਿਚਾਰੀਆਂ ਦੇਖੋ ਹੋਰ ਲੋਕ ਬਹੁਤ ਕਰਨ ਸਾਰਾ ਕੁਝ ਕਰਦੇ ਨੇ ਸ਼ਿੰਗਾਰ ਲਾਉਣਾ ਹਰੇਕ ਨੇ ਲਾਉਣਾ ਹਰੇਕ ਦਾ ਆਪਣੀ ਇਦਾਂ ਇਹ ਵੀ ਇੰਡੀਆ ਤੋਂ ਆਈ ਵੀ ਲੱਗਦੀ ਆ ਇਹ ਉਹ ਉਹ ਗੱਲਾਂ ਕਰਕੇ ਉਹਦੇ ਨਾਲ ਤੁਸੀਂ ਆਪਣੀ ਇੱਜ਼ਤ ਵੀ ਘਟਾਉਂਦੇ ਹੋ ਤੇ ਅਗਲੇ ਦੀ ਵੀ ਇੱਜ਼ਤ ਨੂੰ ਤੁਸੀਂ ਰਾਹ ਚ ਹੋ ਤੇ ਜਿਹੜੀ ਸਟੀਅਰਿੰਗ ਹੈ ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਤੁਸੀਂ ਦੇਖਣ ਦਾ ਬਾਕੀ ਉਮਰ ਹੈ ਜੀ ਉਮਰ ਦੇ ਹਿਸਾਬ ਨਾਲ ਤੁਸੀਂ ਉਹੀ ਕੁੜੀ ਨੂੰ ਬਾਹਰ ਦੇਖ ਰਹੇ ਆ ਉਹਦੇ ਉਹ ਤੋਂ ਬੜੀ ਉਹਦੇ ਬਰਾਬਰ ਦੀ ਛੋਟੀ ਭਰੇ ਹੁੰਦੀ ਆ ਤੇ ਇਹ ਗੱਲਾਂ ਫਿਰੋ ਮੇਰੇ ਹਿਸਾਬ ਨਾਲ ਤਾਂ ਹੀ ਹੈਗਾ ਕਿੰਨਾ ਕੁ ਬੰਦਾ ਉਹਦਾ ਫਿਰ ਮਤਲਬ ਦੇ ਰਿਸ਼ਤੇ ਦੀ ਹੈਗਾ ਨਾ ਬੰਦਾ ਫਿਰ ਉਹ ਨਹੀਂ ਰੱਖ ਸਕਦਾ ਉਹ ਸਟੈਂਡਰਡ ਕਿਉਂਕਿ ਮੰਨਤਾ ਘਰੇ ਆ ਕੇ ਬਦਲ ਜੂਗਾ ਜੀ ਧੰਨਵਾਦ ਵੀਰ ਜੀ ਬਹੁਤ ਵਧੀਆ ਗੱਲ ਕੀਤੀ ਟਵਾਨਾ ਜੀ ਤੁਸੀਂ ਅਸਲ ਇਹ ਜਿਹੜੀ ਕਹਾਣੀ ਹੈ ਇਹ ਬਹੁਤ ਵੱਡੀ ਮੁਸ਼ਕਲ ਆ ਖਾਸ ਤੌਰ ਤੇ ਜਿੱਥੇ ਪਰਿਵਾਰਾਂ ਦੇ ਵਿੱਚ ਕਿਸੇ ਕਾਰਨ ਕਰਕੇ ਬਜ਼ੁਰਗ ਇਕੱਲੇ ਰਹਿ ਗਏ ਜਿੱਥੇ ਮਾਂ ਜਾਂ ਸੱਸ ਹੈ ਨੀ ਕੁਝ ਗੱਲ ਸਮਝਾਉਣ ਨੂੰ ਤੇ ਪੁੱਤ ਤੇ ਨੂੰਹ ਉਹ ਗੱਲ ਕਹਿ ਨਹੀਂ ਸਕਦੇ ਬਹੁਤ ਵੱਡੀ ਮੁਸ਼ਕਲ ਦੇ ਵਿੱਚੋਂ ਪਰਿਵਾਰ ਨਿਕਲ ਰਹੇ ਨੇ ਬਹੁਤ ਵੱਡੀ ਔਰ ਇਹ ਬਹੁਤ ਵੱਡੀ ਮੁਸ਼ਕਲ ਹੈ ਸਮਝਣੀ ਚਾਹੀਦੀ ਇਸ ਤਰ੍ਹਾਂ ਨਹੀਂ ਹੈ ਉੱਥੇ ਵਾਲਾ ਜਿਹੜਾ ਸਿਸਟਮ ਆ ਉੱਥੇ ਆ ਇੱਥੇ ਵਾਲਾ ਸਿਸਟਮ ਇੱਥੇ ਆ ਉੱਥੇ ਤਾਂ ਝਾਕ ਕੇ ਹੀ ਲੋਕ ਗੱਲਾਂ ਮੰਮਵਾਉਂਦੇ ਆ ਉਹ ਪੁਰਾਣੀਆਂ ਚੱਲੀਆਂ ਆਉਂਦੀਆਂ ਮੁੱਛ ਨੂੰ ਹੋੜਾ ਦੇਣਾ ਥੁੱਕ ਲਾ ਕੇ ਤੇ ਝਾਕਣਾ ਖੰਗੂੜੇ ਮਾਰਨੇ ਤੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਗੱਲ ਖੜਾ ਲੈਣੀ ਇਸ ਤਰ੍ਹਾਂ ਹੁੰਦਾ ਸੀ ਉੱਥੇ ਮੋੜਾਂ ਤੇ ਖੜਨਾ ਖੁੰਡਾਂ ਤੇ ਬਹਿਣਾ ਪਰਨਾ ਸਿਰ ਤੇ ਹੱਥ ਫੇਰ ਕੇ ਜਾਂ ਮੂੰਹ ਤੇ ਹੱਥ ਫੇਰ ਕੇ ਉਹਦੇ ਕੋਈ ਚਿੰਨ ਬਣਾਉਣੇ ਸਸਰੀਕਾਰ ਬਣਾਉਣੀ ਜਾਂ ਸਿਰ ਥੱਲੇ ਕਰਨਾ ਖੱਬੇ ਕਰਨਾ ਬਹੁਤ ਕੁਝ ਚੱਲਦਾ ਸੀ ਪਰ ਇੱਥੇ ਨਹੀਂ ਹੈ ਉਹ ਕਹਾਣੀ ਸਮਝੋ ਔਰ ਇਥੇ ਬਿੰਦੇ ਲਗਨਾ ਫਿਰ ਇਹ ਵੀ ਖਿਆਲ ਕਰ ਲਿਓ ਘਰ ਦੀ ਇਸਤਰੀ ਵੱਲੋਂ ਕੀਤੇ ਫੋਨ ਤੋਂ ਬਾਦ ਫਿਰ ਕੋਈ ਸਰਕਾਰੀ ਦਵਾਰੇ ਕੋਈ ਗੱਲਾਂ ਨਹੀਂ ਚੱਲਣੀਆਂ ਉਹਨਾਂ ਨੇ ਤਾਂ ਆਉਣਾ ਹੈ ਉਹਨਾਂ ਚੱਕ ਬਾਈ ਸਨ ਸਮਾਨ ਫਿਰ ਉਹ ਗੱਲਾਂ ਜੀ ਸਾਨੂੰ ਐਉਂ ਕਰਤਾ ਸਾਨੂੰ ਘਰੋਂ ਕਢਾਤਾ ਇਹ ਕਢਾਤਾ ਉਹ ਕਢਾਤਾ ਸਿਆਣੇ ਬਣਨ ਦੀ ਲੋੜ ਹੈ ਆਥਣ ਵਾਲੇ ਜਿਹੜੇ ਪੈਗ ਸ਼ੈਗ ਵਾਲੇ ਨੇ ਉਹ ਵੀ ਤੁਹਾਡਾ ਆਪਣਾ ਰੂਮ ਹੈ ਉਹਦੇ ਵਿੱਚ ਸਿਆਣਪ ਦੇ ਨਾਲ ਉੱਠ ਪੀ ਕੇ ਸਤਕਾਰ ਦੇ ਨਾਲ ਇਹ ਫੇਰ ਰੋਟੀ ਪਾਣੀ ਖਾਦ ਜਿੰਦੇ ਜਾਂ ਘਰ ਦਾ ਮਾਹੌਲ ਖੁੱਲਾ ਰੱਖੋ ਉਹਨੂੰ ਧੀ ਤੇ ਪੁੱਤ ਨੂੰ ਜਗ੍ਹਾ ਹੀ ਇੰਨੀ ਵੱਡੀ ਦੇ ਦਿਓ ਕਿ ਤੁਹਾਡਾ ਉਹਨਾਂ ਨੂੰ ਛੁੱਪੇ ਨਾ ਵੇ ਬਾਪੂ ਚਾਹੇ ਡਾਈਨਿੰਗ ਟੇਬਲ ਤੇ ਬੈਠਾ ਉੱਠ ਪੀਂਦਾ ਉਹਨੂੰ ਨੂੰ ਨੂੰ ਇਉਂ ਨਾ ਲੱਗੇ ਹੋਵੇ ਮੇਰੇ ਪਿਓ ਤੋਂ ਵੱਧ ਐਂ ਦੱਸ ਬਾਪੂ ਜੀ ਕੀ ਲਿਆਵਾ ਇਹ ਅੱਖਾਂ ਦੀ ਲਾਲੀ ਰੜਕੂ ਫੇਰ ਜਿੰਦੇ ਲੱਗਣਗੇ ਵਪਾਰ ਖੰਦੇਸ਼ 58 ਮਿੰਟ ਹੋਇਆ ਟਾਂਡੀ ਮੰਗਤਾ ਜੀ ਲਾਈਨ ਨੰਬਰ 5 ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਜੀ ਦੇਖੋ ਜੀ ਬਜ਼ੁਰਗਾਂ ਦੀ ਤੁਸੀਂ ਗੱਲ ਕੀਤੀ ਆ ਬਈ ਬਜ਼ੁਰਗ ਹਨਾ ਮੌਲਾਂ ਦੇ ਵਿੱਚ ਵੀ ਜਿਹੜੇ ਵੇਟ ਕਰਦੇ ਆ ਉਹਨਾਂ ਨੂੰ 4:00 ਵਜੇ ਵਜੇ ਤੱਕ ਵੇਟ ਕਾਣਾ ਪੈਂਦਾ ਉਹਨਾਂ ਡਰਿੰਕ ਪੀਣੀ ਹੁੰਦੀ ਆ ਹੁਣ ਘਰੋਂ ਵੀ ਉਹਨਾਂ ਨੂੰ ਨਹੀਂ ਪੀਣ ਦਿੰਦੇ ਘਰ ਦੇ ਵੀ ਕਹਿੰਦੇ ਆ ਬਈ ਨਹੀਂ ਤੁਸੀਂ ਬਾਹਰ ਇੱਥੇ ਨਹੀਂ ਹੋਣਾ ਨਾ ਪੈਂਦੀ ਉਹਨਾਂ ਦੀ ਤੇ ਬਾਹਰੋਂ ਵੀ ਜਾ ਕੇ ਉਹ ਉਹਨਾਂ ਨੂੰ ਕਹਿੰਦੇ ਉਹ ਜਾਣ ਕਿੱਥੇ ਤੇ ਹੁਣ ਬਜ਼ੁਰਗ ਜਿਹੜੇ ਆ ਉਹ ਜਦੋਂ 60 ਸਾਲਾਂ ਦੇ ਹੋ ਜਾਂਦੇ ਨੂੰ ਚੇਤਾ ਭੁੱਲਣ ਲੱਗ ਜਾਂਦਾ ਕਈ ਵਾਰੀ ਬਾਥਰੂਮ ਦਾ ਪਾਣੀ ਵੀ ਨਹੀਂ ਛੱਡਦੇ ਹੁਣ ਬਾਹਰ ਜੇ ਉਹ ਇਦਾਂ ਦਾ ਕੰਮ ਕਰਦੇ ਆ ਬਾਥਰੂਮ ਨਹੀਂ ਸਾਫ਼ ਕਰਦੇ ਤੁਸੀਂ ਨੌਜਵਾਨਾਂ ਨੂੰ ਚਾਹੀਦਾ ਉਹ ਸਾਫ਼ ਕਰ ਦੇਣ ਘਰ ਵੀ ਉਹ ਸਾਫ਼ ਕਰ ਦੇਣ ਜੇ ਇਹ ਬਜ਼ੁਰਗਾਂ ਦੀ ਸਟੈਕਟ ਆ ਇਹ ਮੈਂ ਤਾਂ ਕਹੂੰਗਾ ਵੀ ਇਹ ਸਰੀ ਦੇ ਵਿੱਚ ਇਹ ਬਜ਼ੁਰਗਾਂ ਦਾ ਸ਼ਹਿਰ ਆ ਤਾਂ ਇਹਦਾ ਦਾ ਜੇ ਤਾਂ ਸਾਨੂੰ ਇਦਾਂ ਨਹੀਂ ਕਰਨੀ ਚਾਹੀਦੀ ਜਾਂ ਤਾਂ ਫਿਰ 2-4 ਜਿੱਦਾਂ ਭਰ ਕੇ ਇਹਨਾਂ ਨੂੰ ਹੋਰ ਕਿਤੇ ਛੱਡਿਓ ਫਿਰ ਮਤਲਬ ਹੋਊਗਾ ਤੇ ਇਹ ਮੈਂ ਕਹਿੰਦਾ ਵੀ ਇਦਾਂ ਵੀ ਨਹੀਂ ਕਹਿਣਾ ਚਾਹੀਦਾ ਬਜ਼ੁਰਗ ਬਾੜੇ ਆ ਬਜ਼ੁਰਗ ਕਿੱਥੇ ਬੈਠ ਔਰ ਵਧੀਆ ਕਾਰ ਕਹਿਣ ਲਈ ਹੋਵੇ ਤੇ ਟਾਇਰ ਪਾਓ ਹੁਣ ਵਧੀਆ ਵਧੀਆ ਹੋਵੇ ਗੱਡੀ ਤਾਂ ਜੇ ਉਹ ਉਹ ਉਹ ਤਾਂ ਨਿਕਾ ਜਾਣੀ ਆ ਔਰ ਬਜ਼ੁਰਗਾਂ ਦੀ ਨਿਗ੍ਹਾ ਹੀ ਜਾਂਦੀ ਆ ਕੁਝ ਕਹਿੰਦੇ ਥੋੜਾ ਕਹੇ ਨੀ ਤੇ ਮੈਂ ਤਾਂ ਇਹ ਮੇਰੇ ਤਾਂ ਕੋਈ ਗੱਲ ਨਹੀਂ ਸੁਣ ਗਿਆ ਮੈਨੂੰ ਵਿਚਾਰ ਮਿਲ ਗਏ ਥੈਂਕ ਯੂ 1:05 ਮਿੰਟ ਹੋਇਆ ਜੀ ਕੁਝ ਵੀ ਅਜਿਹਾ ਚੱਲ ਰਿਹਾ ਆਪਣੇ ਆਲੇ-ਦਾਲੇ ਔਰ ਆਪਾਂ ਨੂੰ ਕੁਝ ਪਤਾ ਹੈ ਉਸ ਨੂੰ ਕਰੈਕਟ ਕਰਨਾ ਆਪਣਾ ਫਰਜ਼ ਹੈ ਸਾਰੀਆਂ ਵਧੀਆ ਗੱਲਾਂ ਸ਼ੋਅ ਤੇ ਨਹੀਂ ਹੁੰਦੀਆਂ ਕੁਝ ਗੱਲਾਂ ਇਹ ਨਹੀਂ ਜਿਹੜੀਆਂ ਅਸੀਂ ਠੀਕ ਕਰਨੀ ਔਰ ਜ਼ਰੂਰੀ ਨੇ ਆਪਣੀ ਆਪਣੀ ਜਗ੍ਹਾ ਜ਼ਰੂਰ ਰੱਖਣੀ ਕਿ ਆਂ ਪਰਿਵਾਰ ਦੇ ਵਿੱਚ ਮੇਰੀ ਆ ਜਗ੍ਹਾ ਹੈ ਮੈਂ ਹੁਣ ਥੋੜਾ ਜਿਹਾ ਸਮਾਂ ਮੇਰਾ ਧੀ ਮੇਰੀ ਪੁੱਤ ਤੇ ਨੂੰ ਮੇਰਾ ਹੁਣੇ ਆਇਆ ਮੈਂ ਇਹ ਥੋੜਾ ਜਿਹਾ ਬੈਠਣ ਉੱਠਣ ਜਗ੍ਹਾ ਕੰਮ ਥੋੜੀ ਹੈ ਮੈਂ ਇੱਧਰ ਨੂੰ ਹੋ ਜਾ ਮੈਂ ਇੱਧਰ ਨੂੰ ਹੋ ਜਾ ਮੈਂ ਇੱਧਰ ਨੂੰ ਹੋ ਜਾ ਗੰਧਾਲੇ ਵਾਂਗੂ ਵਿੱਚ ਫਸ ਕੇ ਬਹਿਣਾ ਵੀ ਔਖਾ ਤੇ ਨੰਬਰ 2 ਨਿਗਾਹ ਆਪਣੀ ਠੀਕ ਕਰੋ ਬڑے ਛੋਟੇ ਕੋਈ ਵੀ ਇਸ ਪਾਸੇ ਐ ਜਿੱਥੇ ਤੁਹਾਡੀ ਮਨ ਦੇ ਵਿੱਚ ਕੋਈ ਗੱਲ ਹੈ ਝਾਕਣ ਨਾਲੋਂ ਅਗਲੇ ਨੂੰ ਅੱਥਰ ਪਾੜ ਬਣਨ ਨਾਲੋਂ ਪੁੱਛ ਲਓ ਕਿਸੇ ਨੂੰ ਚੰਗੀ ਅਜੇ ਕੋਈ ਖੜਾ ਕੇ ਇਹ ਮੇਰੇ ਮਨ ਚ ਹੈ ਵੀ ਆ ਗੱਲ ਠੀਕ ਹੈ ਝਾਕਿਆ ਕੱਖ ਨਹੀਂ ਦਰਵਾਜ਼ੇ ਤੋਂ ਅੰਦਰੋਂ ਮਾਲ ਚ ਵੜ ਤੇ ਸਟੋਰ ਤੱਕ ਜੇ ਕਿਸ ਨੂੰ ਛੱਡਣਾ ਘੁਮਾ ਕੇ ਨਿਗਾ ਉਹ ਠੀਕ ਨਹੀਂ ਮੈਨੂੰ ਪਤਾ ਹੈ ਬਹੁਤ ਵੱਡਾ ਕਲਚਰਲ ਸ਼ੋਕ ਹੈ 20ਵੇਂ ਸਾਲ 'ਚ ਆਏ ਲੋਕਾਂ ਲਈ ਐਕਸੈਪਟ ਕਰਨਾ ਬਹੁਤ ਔਖਾ ਹੈ ਤੇ ਜਿਹਨੇ 60ਵੇਂ ਸਾਲ ਤੋਂ ਪਹਿਲਾਂ ਇਹ ਜਾਂ ਕੁਛ ਦੇਖਿਆ ਹੀ ਤੇ ਉਹਨੂੰ ਬਹੁਤ ਕੁਝ ਵੀ ਠੀਕ ਬਹੁਤ ਵੱਡੀ ਗਿਣਤੀ ਦਾਨਿਆਂ ਦੀ ਹੈ ਜਿਹੜੇ ਪੜ੍ਹੇ ਲਿਖੇ ਰਿਟਾਇਰਡ ਨੇ ਜਾਂ ਹੂੰ ਸਲੱਗ ਵੱਡੇ ਦੇ ਵਿੱਚੋਂ ਰਾਠ ਬਜ਼ੁਰਗ ਜਿਨ੍ਹਾਂ ਜਿਵੇਂ ਗੱਲ ਕਰ ਰਹੇ ਸੀ ਨਾ ਤਵਾਣਾ ਜੀ ਆਏ ਨੇ ਉਹ ਵਧੀਆ ਐਨ ਉਹ ਨਾਲਦਿਆਂ ਨੂੰ ਵੀ ਹਲੂਨ ਤੇ ਪਰ ਇਹ ਗੱਲ ਨਹੀਂ ਠੀਕ ਵੀ ਘਰੇ ਨੀ ਪੀਣ ਦੇ ਕੋਈ ਨੀ ਹੱਥ ਪੜਦਾ ਵੀ ਮਾਲਾ ਚ ਪੀ ਕੇ ਆਓ ਤੇ ਗੱਡੀ ਦੇ ਵਧੀਆ ਟਾਇਰ ਹੈ ਗੱਡੀਆਂ ਵਾਲੇ ਟਾਇਰ ਨੇ ਜਿਹੜੇ ਜੇ ਆਪਣੀ ਗੱਡੀ ਵਧੀਆ ਟਾਇਰ ਵੇਖਣ ਵਾਲੀ ਆਪਣੀ ਅੱਖ ਹੁੰਦੀ ਇਹ ਗੱਡੀਆਂ ਠੀਕ ਰਹਿੰਦੀਆਂ ਫਿਰ ਜਿਹੜੀ ਗੱਡੀ ਦਰਾਂ ਚ ਖੜੀ ਆ ਉਹੀ ਵੇਖੀ ਜਾਂਦੀ ਆ ਹਰ ਇੱਕ ਦੀ ਤੁਰੀ ਜਾਂਦੀ ਨਹੀਂ ਗੱਡੀ ਵੇਖੀ ਜਾਂਦੀ ਹੁੰਦੀ ਹੁਣ ਠੀਕ ਰੱਖਿਆ ਕਰੋ ਇਹ ਗੱਲ ਕਿਹੜੀ ਕਹਿਣੀ ਆ ਕਿਹੜੀ ਨਹੀਂ ਸੱਟ ਕਰਕੇ ਥੋੜਾ ਜਿਹਾ ਬੋਲਿਆ ਕਰੋ ਤੇ ਹੁਣ ਅਗਲੇ ਹਿੱਸੇ ਦੇ ਵਿੱਚ ਮੈਂ ਗੱਲ ਕਰਨੀਆਂ ਲੋਕਲ ਫੰਡਰੇਜ਼ਿੰਗ ਦੀ ਜਿਹੜਾ ਅਸਲ ਜਿਹੜਾ ਕੁਝ ਪੰਜਾਬ ਦੇ ਵਿੱਚ ਵੇਖਦੇ ਆ ਨਾ ਜਦ ਇੱਥੇ ਵਾਪਰਦਾ ਔਰ ਵਾਪਰਦਾ ਕਿਸੇ ਪਾਸੇ ਵੀ ਆ ਉਸ ਨੂੰ ਦੇਖ ਕੇ ਦੁੱਖ ਲੱਗਦਾ ਵੀ ਯਾਰ ਇੱਥੇ ਵੀ ਐ ਉਹ ਰਾਜਨੀਤੀ ਦੇ ਪੈਂਤੜੇ ਦੇ ਵਿੱਚ ਟੂ ਪਾਰਟੀ ਸਿਸਟਮ ਜਿਹੜਾ ਉਹ ਲੋਕਾਂ ਨੂੰ ਹੁਣ ਤੰਗ ਕਰ ਰਿਹਾ ਵੀ ਹੁਣ ਇਹਦੇ ਵਿੱਚੋਂ ਨਿਕਲੀਏ ਕਿਵੇਂ ਵਧੀਆ ਪਾਰਦਰਸ਼ੀ ਕੰਮ ਕਿਵੇਂ ਸ਼ੁਰੂ ਹੋਵੇ ਇਹ ਚੀਜ਼ ਹੋਰ ਸੀ ਕਨਸੈਪਟ ਹੋ ਰਾ ਇੱਥੇ ਦੇ ਸਿਸਟਮ ਵਿੱਚ ਅਸੀਂ ਹੋਰ ਬਣਾ ਲਿਆ ਸਾਡੀ ਮੁੱਚ ਦਾ ਸਵਾਲ ਅਸੀਂ ਜਿੱਤਣਾ ਅਸੀਂ ਕਰਨਾ ਇੱਕ ਬਹੁਤ ਵੱਡਾ ਲੇਖ ਗਲੋਬਲ ਮੇਲ ਦੇ ਵਿੱਚ ਇੱਕ ਬਹੁਤ ਵਧੀਆ ਜਰਨਲਿਸਟ ਹੈ ਜਿਹੜੀ ਵਾਈਲਡ ਵੈਸਟ ਉਸ ਇੱਕ ਕਾਲਮ ਹੈ ਕੈਥੀ ਟਾਮਲਸਨ ਬਹੁਤ ਵਾਰ ਮੈਂ ਉਸ ਦੀਆਂ ਗੱਲਾਂ ਤੁਹਾਨੂੰ ਸੁਣਾਈਆਂ ਤੇ ਉਸ ਦਾ ਇੱਕ ਲੇਖ ਜਿਹੜਾ ਲਿਬਰਲਜ਼ ਬਾਰੇ ਹੈ ਇਹ ਫੰਡ ਰੇਜ਼ਿੰਗ ਕਿਵੇਂ ਹੋ ਰਿਹਾ ਹੈ 12 ਮਿਲੀਅਨ ਡਾਲਰ 2016 ਦੇ ਵਿੱਚ ਕਿਵੇਂ ਲਿਬਰਲਜ਼ ਨੇ ਇਕੱਠਾ ਕੀਤਾ ਕਰੋ ਪੈਸੇ ਚੱਕੋ 37000 ਲਓ ਆਹ ਲਓ ਕੰਮ ਬਹੁਤ ਹੈ ਇੱਕ ਗੋਰੀ ਕੁੜੀ ਦੇ ਮੂੰਹ ਦੇ ਮੋਢੇ ਤੇ ਫੱਟਾ ਚੱਕਿਆ ਹੋਇਆ ਦਿਖਾਇਆ ਕੰਮ ਦੀ ਕਮੀ ਹੋਣੀ ਉਹ ਵੇਖ ਇੱਥੇ ਜੀ ਹੁੰਦਾ ਹੈ ਗੱਲਾਂ ਚੱਲ ਰਹੀਆਂ ਉਸ ਦੇ ਬਾਰੇ ਗੱਲਬਾਤ ਕਰਦਾ ਹਾਂ ਉਦੋਂ ਪਹਿਲਾਂ ਦੱਸਾਂ ਕਿ ਪੰਜਾਬ ਗੀਤ ਸੁਣਾਓ ਸੁਣੋ ਉਸ ਤੋਂ ਬਾਅਦ ਆ ਕੇ ਪਹਿਲਾ ਪ੍ਰੋਗਰਾਮ ਸ਼ੁਰੂ ਦੂਸਰਾ ਕੰਤੋਂ ਪਹਿਲਾਂ ਸੈਟਰਡੇ ਨੂੰ ਜਿਹੜੀ ਇੱਕ ਜਿਹੜਾ ਇੱਕ ਇਕੱਠ ਹੋਇਆ ਕਲਗੀਧਰ ਦਰਵਾ ਗੋਦਰ ਸਾਹਿਬ ਦੇ ਵਿੱਚ ਜਿੱਥੇ ਇੰਨੀ ਵੱਡੀ ਗਿਣਤੀ ਚ ਮਾਪੇ ਤੇ ਨੌਜਵਾਨ ਬੱਚੇ ਆਏ ਮੈਂ ਹੈਰਾਨ ਹੋ ਗਿਆ ਮੈਂ ਸੋਚਿਆ ਨਹੀਂ ਸੀ ਕਿ ਸਾਡਾ ਭਾਈਚਾਰਾ ਇੰਨਾ ਚਿੰਤਤਾ ਆਪਣੇ ਭੇਖ ਲੈ ਕਿਉਂਕਿ ਅੱਗੇ ਫੋਰਮ ਜਾਂਦੇ ਆ ਇਕੱਠ ਨਹੀਂ ਹੁੰਦਾ 20 50 100 ਬੰਦੇ ਰਹਿ ਜਾਂਦੇ ਆ ਇੱਥੇ ਬੈਂਕਟ ਹਾਲ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਕੁਰਸੀਆਂ ਡਾਈਆਂ ਹੀ ਰਹਿ ਜਾਂਦੀ ਪਰ ਉਸ ਦਿਨ ਐਡਾ ਵੱਡਾ ਇਕੱਠ 6-700 ਦੇ ਕਰੀਬ ਮਾਪੇ ਆਪਣੇ ਬੱਚਿਆਂ ਬੱਚੀਆਂ ਦੇ ਨਾਲ 3 ਘੰਟੇ ਬੈਠ ਕੇ ਉਹਨਾਂ ਨੇ ਪ੍ਰੋਗਰਾਮ ਉਸ ਦਿਨ ਦਾ ਜਿਹੜਾ ਸੁਣਿਆ ਉਸ ਦੀ ਗੱਲਬਾਤ ਕਰਦਾ ਉਦੋਂ ਪਹਿਲਾਂ ਇੱਕ ਗੀਤ ਸੁਣੋ ਵਪਾਰਕ ਸੰਦੇਸ਼ਾਂ ਤੋਂ ਬਾਅਦ ਜਿਹੜਾ ਇਕੱਠ ਜਿਹੜਾ ਫੋਰਮ ਹੋਇਆ ਕਲਗੀਧਰ ਦਰਬਾਰ ਗੁਰੂ ਸਾਹਿਬ ਉਸ ਦੀ ਗੱਲ ਕਰਦਾ ਨੇਚਰਵਾਰ ਨੂੰ ਕਲਕਿੱਤਾ ਦੇ ਗੁਰਦੁਆਰਾ ਦਰਵਾਜ਼ ਕਲਕਿੱਤਾ ਦੇ ਦਰਵਾਗੁਰਦੁਆ ਫੋਰਮ ਹੋਇਆ ਜਿਸ ਦੇ ਵਿੱਚ ਪੁਲਿਸ ਅਫੀਸਰ ਭਾਈਚਾਰਾ ਸਾਰਾ ਰਲ ਕੇ ਬੈਠਿਆ ਘੰਟਿਆਂ ਵਧੀ ਇਹ ਪ੍ਰੋਗਰਾਮ ਚੱਲਿਆ ਜਿਸ ਦੇ ਵਿੱਚ ਬੀਸੀ ਦੀ ਜਿਹੜੀ ਗੈਂਗ ਟਾਸਕ ਫੋਰਸ ਜਿਹੜੀ ਇਨਫੋਰਸਮੈਂਟ ਯੂਨਿਟ ਹੈ ਉਹਦੇ ਵਿੱਚੋਂ ਕਾਰਪੋਲ ਖੋਸਾ ਤੇ ਬੁੱਟਰ ਜਿਨ੍ਹਾਂ ਨੂੰ ਬਹੁਤ ਤਜਰਬਾ ਬਹੁਤ ਲੰਮਾ ਸਮਾਂ ਉਹਨਾਂ ਨੇ ਵੇਖਿਆ ਕਾਰਪੋਰਲ ਬੁਟਰ ਨੇ 25 ਸਾਲ ਪਹਿਲਾਂ ਉਹਨਾਂ ਨੇ ਬਹੁਤ ਭਾਪੂਰਤ ਗੱਲਾਂ ਕੀਤੀਆਂ ਕਹਿੰਦੇ ਜਦ ਮੇਰੇ ਹੱਥਾਂ ਦੇ ਵਿੱਚ ਨੌਜਵਾਨ ਪੁੱਤ ਸਾਡੇ ਮਰੇ ਫਿਰ ਮੈਂ ਕਮਿਟਮੈਂਟ ਕੀਤੀ ਵੀ ਮੈਂ ਹੁਣ ਇਹਦੇ ਤੇ ਕੰਮ ਕਰਨਾ ਉਸ ਨਾਲ ਐਬਸਪੋਰਟ ਪੁਲਿਸ ਡਿਪਾਰਟਮੈਂਟ ਦੇ ਡਿਪਟੀ ਚੀਫ ਸਰ ਤੇ ਉਸ ਤੋਂ ਬਾਅਦ ਚਰਨ ਕਿੰਗਰਾ ਜਿਹੜੇ ਕਨਸਟੇਬਲ ਨੇ ਕਿੰਗਰਾ ਪਰਵਾਰ ਤੁਸੀਂ ਸਾਰੇ ਜਾਣਦੇ ਹੋ ਕਿ ਗਗਰਾ ਸਾਹਿਬ ਆਪ ਡਾਕਟਰ ਵੀ ਨੇ ਤੇ ਨਾਲ ਪੜਾਉਂਦੇ ਐ ਫਰੇਜ਼ਰ ਯੂਨੀਵਰਸਿਟੀ ਚ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਵਿੱਚ ਨੌ ਆ ਸਤਿਕਾਰ ਹੈ ਭਾਈਚਾਰੇ ਚ ਤੇ ਨੇ ਬਹੁਤ ਲੰਮਾ ਸਮਾਂ ਬੱਚਿਆਂ ਨਾਲ ਕੰਮ ਕੀਤਾ ਸ੍ਰੀ ਸਿੰਘ ਮੁਖ ਸੇਵਾਦਾਰ ਨੇ ਉਹ ਤੇ ਨਾਲ ਉਹਨਾਂ ਨੇ ਸਮੁੱਚੀ ਸੇਵਾਦਾਰਾਂ ਦੀ ਕਮੇਟੀ ਵੱਲੋਂ ਇਹ ਉਦਮ ਲਿਆ ਗਿਆ ਤੇ ਇਸ ਨੂੰ ਸ਼ੁਰੂ ਕੀਤਾ ਗਿਆ ਸਪਰੈਡ ਕੀਤਾ ਜ਼ਿੰਮੇਵਾਰੀ ਮੇਰੀ ਉਹਨਾਂ ਨੇ ਲਈ ਕਿ ਮੈਂ ਇਸ ਨੂੰ ਨਿਵਾਹਾਵਾਂ ਤੇ ਇਸ ਨੂੰ ਮੀਡੀਏਟ ਕਰਾਂ ਜਾਂ ਮੋਡਰੇਟਰ ਬਣਾ ਇਹ ਵਧੀਆ ਵੀ ਬਹੁਤ ਲੱਗਿਆ ਇਹ ਜੇ ਫੋਰਮ ਪਹਿਲਾਂ ਮੈਂ ਆਪਾਂ ਜਾਂਦੇ ਰਿਹਾ ਰਹੇ ਹਾਂ ਇਕੱਠ ਦੇ ਵਿੱਚ ਸਾਰੇ ਇਕੱਠੇ ਹੁੰਦੇ ਰਹੇ ਹਾਂ ਪਰ ਇੰਨਾ ਪਿਆਰ ਨਾਲ ਭਾਈਚਾਰਾ 2.5 3 ਘੰਟੇ ਬੈਠ ਕੇ ਨੌਜਵਾਨ ਬੱਚੇ ਤੇ ਬੱਚੀਆਂ ਨੂੰ ਕੋਲ ਬਿਠਾ ਕੇ ਇੰਨਾ ਚਿੰਤਾ ਤੋਰਾ ਇਹਦਾ ਮਤਲਬ ਮੁਸ਼ਕਲ ਹੈ ਬਹੁਤ ਜ਼ਿਆਦਾ ਉਦਾਸੀ ਵੀ ਹੋਈ ਸਿੱਧੂ ਜਿਹੜੇ ਸਿੱਧੂ ਦੇ ਪਿਤਾ ਜੀ ਉਹਨਾਂ ਨੇ ਬਹੁਤ ਰੋ ਕੇ ਆਵਾਜ਼ ਉੱਚੀ ਕੇ ਆਹ ਲੋਕੋ ਮੈਂ ਪੁੱਤ ਆਪਣਾ ਮੇਰਾ ਚਲੇ ਗਿਆ ਤੁਸੀਂ ਸੰਭੋ ਆਪਣੇ ਪੁੱਤ ਤੇ ਉਹਨਾਂ ਨੇ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਮੇਰਾ ਪੁੱਤ ਇਸ ਕੰਮ ਚ ਨਹੀਂ ਸੀ ਉਹ ਕੰਮ ਕਰਦਾ ਸੀ ਉਹ ਪੜਿਆ ਉਸਨੇ ਹੁਣ ਲਾਇਸੈਂਸ ਲਿਆ ਰੀਅਲਟਰ ਦਾ ਉਹ ਕੈਮਰੇ ਲਾਉਣ ਦਾ ਕੰਮ ਕਰਦਾ ਸੀ ਜਿਹੜੇ ਸਰਵੇਲੈਂਸ ਕੈਮਰੇ ਨੇ ਦੋਨੇ ਮੇਰੇ ਬੇਟੇ ਕੰਮ ਕਰਦੇ ਆ ਉਹਦਾ ਨੌ ਸੀ ਲੋਕ ਉਹਨੂੰ ਪਿਆਰ ਕਰਦੇ ਸੀ ਤੇ ਚਲੋ ਪੁਲਿਸ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੈ ਹੋਰ ਪਤਾ ਲੱਗੇਗਾ ਪਰ ਇਹ ਫਾਰਮ ਬਹੁਤ ਵਧੀਆ ਰਿਹਾ ਜਿਹਦੇ ਵਿੱਚ ਜਿੱਥੇ ਪੁਲਿਸ ਅਫੀਸਰਸ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਤਜਰਬੇ ਸਾਂਝੇ ਕੀਤੇ ਵੀ ਉਹਨਾਂ ਨੇ ਇੱਕ ਬਹੁਤ ਸੰਸਨੀਖੇਦ ਪ੍ਰਗਟਾਵੇ ਵੀ ਕੀਤੇ ਜੈ ਖੋਸਾ ਉਹਨਾਂ ਨੇ ਜਦ ਗੱਲ ਕੀਤੀ ਤੁਹਾਡੀਆਂ ਬੱਚੀਆਂ ਵੀ ਇਸ ਕੰਮ ਦੇ ਵਿੱਚ ਨੇ ਕੁੜੀਆਂ ਵੀ ਬਹੁਤ ਜ਼ਿਆਦਾ ਗਿਣਤੀ ਚ ਨੇ ਇਸ ਕੰਮ ਚ ਜਿਹੜੀਆਂ ਹਥਿਆਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਈ ਡਰੱਗ ਇੱਕ ਤੋਂ ਦੂਜੀ ਜਗ੍ਹਾ ਲਿਜਾਣ ਲਈ ਪੈਸੇ ਸੰਭਲਣ ਲਈ ਡਰੱਗ ਘਰੇ ਰੱਖਣ ਲਈ ਕੰਮ ਕਰ ਰਹੇ ਔਰ ਪੁਲਿਸ ਦੇ ਕੋਲ ਉਹਨਾਂ ਦੇ ਅੰਕੜੇ ਇਸ ਦਾ ਸੋਲੂਸ਼ਨ ਦੇ ਲੋਕਾਂ ਨੂੰ ਪੇਪਰ ਵੰਡੇ ਗਏ ਲੋਕਾਂ ਨੇ ਸੁਝਾਅ ਦਿੱਤੇ ਸਵਾਲ ਪੁੱਛੇ ਲੋਕਾਂ ਨੇ ਸਵਾਲਾਂ ਦੇ ਜਵਾਬ ਫਿਰ ਪੁਲਿਸ ਅਫੀਸਰਜ਼ ਨੇ ਦਿੱਤੇ ਬਹੁਤ ਵੱਡਾ ਹੈ ਕਿ ਇਕੱਠ ਹੁਣ 18 ਨੂੰ ਕੀਤਾ ਜਾ ਰਿਹਾ ਬੈਂਕਟ ਕਿਸੇ ਬੈਂਕਟ ਹਾਲ ਦੇ ਵਿੱਚ ਆਉਣ ਵਾਲੇ ਦਿਨਾਂ ਚ ਮੈਂ ਦੱਸਾਂਗਾ 2 ਹਫ਼ਤੇ ਰਹਿੰਦੇ ਹਾਲੇ ਜਿਹਦੇ ਵਿੱਚ ਪਰ ਸਭ ਤੋਂ ਵੱਡਾ ਦੁੱਖ ਇਹ ਹੋਇਆ ਕਿ ਰਾਜਨੀਤਿਕ ਇੰਨੇ ਸਰਕਾਰਾਂ ਦਾ ਕੋਈ ਨਮਾਇੰਦਾ ਨਾ ਪਹੁੰਚਿਆ ਨਾ ਸਿਟੀ ਆਫ ਫਾਈਬਰਸਫੋਰਥ ਤੋਂ ਨਾ ਪ੍ਰੋਵਿੰਸ਼ਲ ਤੇ ਨਾ ਹੀ ਫੈਡਰਲ ਕੋਈ ਵੀ ਤਿੰਨਾਂ ਚੋਂ ਨਾ ਆਇਆ ਇਸ ਗੱਲ ਤੇ ਭਾਈਚਾਰਾ ਵੀ ਦੁਖੀ ਸੀ ਤੇ ਬੋਲਣ ਵਾਲੇ ਵੀ ਦੁਖੀ ਸਤਕਾਰ ਸਿੱਧੂ ਦੇ ਮਾਮਾ ਜੀ ਰਾਏ ਸਾਹਿਬ ਨੇ ਕਿਹਾ ਉਹ ਕਹਿੰਦਾ ਵੀ ਹੁਣ ਕਿੱਥੇ ਨੇ ਉਹ ਬੰਦੇ ਜਿਹੜੇ ਅਸੀਂ ਚੁਣ ਕੇ ਭੇਜਿਆ ਅਸੀਂ ਆ ਕੇ ਇੱਥੇ ਦੱਸਣ ਸਨ ਉਹ ਜਿਹੜੀ ਕਮਿਊਨਿਟੀ ਸਰਵਿਸਸ ਦੇ ਨਾਂ ਤੇ ਫੰਡਿੰਗ 6 ਮਿਲੀਅਨ ਦੀ ਐਪਸਫੋਰਚ ਆਈ ਆ ਉਹ ਮੈਨੂੰ ਦੱਸੇ ਵੀ ਕਿਹੜੀ ਕਮਿਊਨਿਟੀ ਦੇ ਵਿੱਚ ਕਿਹੜੀ ਜਗ੍ਹਾ ਉਹ 6 ਮਿਲੀਅਨ ਖਰਚੇ ਗਏ ਜਿਹੜੀਆਂ ਆਰਗੇਨਾਈਜੇਸ਼ਨਸ ਬਣਾਈਆਂ ਜਾਂਦੀਆਂ ਉਸ ਇਹ ਸਰਕਾਰਾਂ ਬੰਦੇ ਆਪਣੇ ਬ੍ਰਾਊਨ ਦੇ ਲਈ ਬਣਾਉਂਦੀਆਂ ਜਿਹੜੇ ਗੁੱਸੇ ਹੋ ਜਾਂਦੇ ਐਮਐਲਏ ਮੈਂ ਚੱਕ ਕਮਿਊਨਿਟੀ ਸੈਂਟਰ ਤੇਰੇ ਜੇ ਸਰਕਾਰ ਬਣ ਗਈ ਤੇ ਤੂੰ ਬਣੀ ਸੀਓ 2.5 ਲੱਖ ਡਾਲਰ ਸਾਲ ਦਾ ਲਈ ਚੰਨੀ ਬਸ ਕਰ ਬੰਦੇ ਰੱਖ ਆਪਣੀ ਮਰਜ਼ੀ ਦੇ ਚਾਰ ਪੰਜ ਪ੍ਰੋਗਰਾਮ ਇਹ ਜੇ ਕਰਲੇ ਕੋਈ ਜੋਕ ਫੇਅਰ ਕਰ ਲਿਆ ਆਹ ਕਰ ਲਿਆ ਉਹ ਕਰ ਲਿਆ ਮौजਾਂ ਕਰ ਇਹ ਨੇ ਜਦ ਦੱਸਿਆ ਕਿ 6 ਮਿਲੀਅਨ ਡਾਲਰ ਸਾਡੀ ਕਮਿਊਨਿਟੀ ਚ ਆਇਆ ਤੇ ਉਹ ਕਿੱਥੇ ਲੱਗਿਆ ਮੈਨੂੰ ਕੋਈ ਦੱਸੇ ਕਮਿਊਨਿਟੀ ਸਰਵਿਸ ਵਾਲੇ ਕਿੱਥੇ ਆ ਉਹ ਕਮਿਊਨਿਟੀ ਉਹ ਮਨੀ ਕਿੱਥੇ ਲੱਗੀ ਇਸ ਗੱਲ ਤੇ ਲੋਕ ਬਹੁਤ ਉਹਨੇ ਦੁੱਖ ਪ੍ਰਗਟ ਕੀਤਾ ਇੱਕ ਰਣੂ ਹੁਣੀ ਬੋਲੇ ਜਿਹੜੇ ਬਹੁਤ ਕਹਿੰਦੇ ਮੈਂ ਹੈਵੀਲੀ ਡਰਗ ਯੂਜ਼ਰ ਸੀ ਕਿ ਸਿਸਟਮ ਮੈਡੀਕਲ ਸਿਸਟਮ ਕਿਵੇਂ ਐਕਸਪਲੋਇਟ ਕਰਦਾ ਕਿਵੇਂ ਨਸ਼ਾ ਹਿਰੋਇਨ ਛਡਾ ਕੇ ਦੱਸੇਦਾ ਕਿ ਉਹਨਾਂ ਮੈਥਾਡੋਨ ਤੇ ਲੱਗਦਾ ਚੱਕ ਟੈਬਲ 3 ਚੱਕ ਆਕਸੀਕੋਡਿਨ ਆਹ ਚੱਕ ਉਹ ਚੱਕ ਜਾੜ ਥੱਲੇ ਰੱਖ ਲਾ ਇੱਧਰ ਰੱਖ ਲਾ ਉੱਧਰ ਰੱਖ ਲਾ ਇੱਕ ਤੋਂ ਬਦਲ ਕੇ ਦੂਜਾ ਕਿਵੇਂ ਉਹ ਵਿਲ ਪਾਵਰ ਨਾਲ ਨਿਕਲੇ ਉਹਦੇ ਚ ਮਾਪੇ ਚਿੰਤਾ ਤੋਂ ਸੀ ਔਰ ਬੱਚੇ 15 ਸਾਲ ਤੋਂ ਉੱਪਰਲੇ ਸਾਰੇ ਉਹਨਾਂ ਨੇ ਕੋਲ ਲੱਤ ਦੇ ਬਿਠਾਏ ਹੋਏ ਸੀ ਮਰਦਾਂ ਦੇ ਤੇ ਔਰਤਾਂ ਬੀਬੀਆਂ ਵਾਲੇ ਪਾਸੇ ਵੀ ਮਾਮਾ ਬੈਠੀਆਂ ਸੀ ਸਾਰੀਆਂ ਆਪਣੀਆਂ ਧੀਆਂ ਨੂੰ ਲੈ ਕੇ ਔਰ ਉਹ ਦੁੱਖ ਦੇ ਵਿੱਚ ਸੀ ਔਰ ਸੁਣਾਉਣਾ ਚਾਹੁੰਦੇ ਸੀ ਸੁਣਾਉਣੀਆ ਚਾਹੁੰਦੇ ਸੀ ਵੀ ਕੀ ਕਹਾਣੀ ਹੈ ਜੈਜ ਖੋਸਾ ਲਾਈਨ ਨੰਬਰ 2 ਤੁਸੀਂ ਇਹਦੇ ਤੇ ਹੋ ਹਾਂਜੀ ਭਾਈ ਉਹਦਣਾ ਮੈਨੂੰ ਵੀ ਮੌਕਾ ਮਿਲਿਆ ਸੀ ਉੱਥੇ ਔਰ ਨੂੰ ਪਰ ਬਲਦੇਵ ਸਿੰਘ ਨਾਲ ਪਹਿਲਾਂ ਗੱਲ ਕਰਕੇ ਮੈਂ ਬੜਾ ਭਾਵੁਕ ਹੋ ਗਿਆ ਸਾਡਾ ਉੱਥੇ ਫੈਮਿਲੀ ਨਾਲ ਕਨੈਕਸ਼ਨ ਸੀ ਪਰ ਮੈਂ ਉਹ ਸਟੇਜ ਤੇ ਇਹ ਕਹਿਣਾ ਚਾਹੁੰਦਾ ਸੀ ਵੀ ਮੈਨੂੰ ਪਤਾ ਤੁਸੀਂ ਵੀ ਸੀ ਜੈ ਕੋਸੇ ਉਹਨੇ ਵੀ ਉੱਥੇ ਕਈ ਵਾਰੀ ਇਨਫੋਰਮਲੀ ਬੰਦਾ ਕਿਉਂਕਿ ਖਾਸ ਕਰਕੇ ਉਹ ਮੋਗੇ ਦੇ ਏਰੀਆ ਦੇ ਲੋਕ ਹਨ ਜਿਹੜਾ ਵੀ ਬੰਦਾ ਮੈਨੂੰ ਕੰਟੈਕਟ ਕਰਨਾ ਚਾਹੁੰਦਾ ਵੀ ਉਹੀ ਸਲਾਹ ਹੀ ਕੋਈ ਲੈਣੀ ਆ ਮੈਂ ਹੁਣ 35 ਸਾਲਾਂ ਦਾ ਆਗਰ ਬਿਜ਼ਨਸ ਆ ਮੈਂ ਸਰਕਾਰ ਲਈ ਵੀ ਕੰਮ ਕੀਤਾ ਯਾਰ ਬਹੁਤ ਜ਼ਿਆਦਾ ਸੀ ਬਾਈ ਤੁਸੀਂ ਉਸ ਦਿਨ ਸੀਗਾ ਹਨਾ ਉਸ ਉੱਤੇ ਸੀ ਜਿੰਨਾ ਉਹ ਪਿਆਰ ਸੀ ਮੇਰੇ ਅੱਜ ਤਾਈਂ ਹਜੇ ਵੀ ਮੈਂ ਨਹੀਂ ਸੈੱਟ ਸੋ ਕੋਈ ਵੀ ਉਸ ਕਮਿਊਨਿਟੀ ਚੋਂ ਮੁੰਡਾ ਮੇਰਾ ਆ ਚੱਕਰ ਆ ਮੇਰੇ ਨਾਲ ਗੱਲ ਕਰ ਸਕਦਾ ਮੇਰਾ ਨੰਬਰ 604 603 0451 ਤੇ ਜੇ ਨੀਕ ਇਸ ਨੂੰ ਹੋਰ ਕਿਸੇ ਤੋਂ ਨੰਬਰ ਲੈਣਾ ਹੋਵੇ ਮੇਰਾ ਪਿੰਡ ਕੋਟ ਕਰੋੜਾ ਮੈਂ ਗੁਰਦਾਸ ਸਿੰਘ ਦਾ ਮੁੰਡਾ ਮੇਰੇ ਨੰਬਰ ਤੇ ਜਦੋਂ ਮਰਜ਼ੀ ਲੈਸ ਆ ਜਦੋਂ ਮਰਜੀ ਤੁਸੀਂ ਕਹੋ ਮੈਂ ਤੁਹਾਡੇ ਕੋਲ ਆਣ ਕੇ ਮਿਲਾਂ ਇਨਫੋਰਮਲੀ ਜੇ ਮੈਨੂੰ ਲੱਗਿਆ ਆਪਾਂ ਸਾਹ ਕਰਕੇ ਵੀ ਇਹ ਪੁਲਿਸਾ ਮਾਮਲਾ ਫਿਰ ਆਪਾਂ ਜੈਗਨਾਵ ਵੀ ਸਕਦੇ ਮੈਂ ਤਾਂ ਸਿਰਫ ਇੱਕ ਬੰਦਾ ਆ ਕੋਈ ਮੇਰਾ ਪੋਲਿਟਿਕਸ ਨਾਲ ਨਹੀਂ ਲੈ ਕੇ ਮੈਂ ਤਾਂ ਸਿਰਫ ਹੈਲਪ ਕਰਨਾ ਚਾਹੁੰਦਾ ਥੈਂਕ ਯੂ ਵੈਰੀ ਮੱਚ ਵੈਰੀ ਗੁੱਡ ਜੈਸ ਕੋਸਾ ਨੌਜਵਾਨ ਬੱਚਿਆਂ ਦੀਆਂ ਗੱਲਾਂ ਕਰਦੇ ਕਰਦੇ ਸਾਕੇ ਦੱਸਦੇ ਆ ਉਹ ਜ਼ਿੰਦਗੀ ਚੋਂ ਲੰਗੇ ਇੱਕ ਗੱਲ ਉੱਥੇ ਬੜੀ ਵਧੀਆ ਚੱਲੀ ਕਿ ਜਿਹੜੇ ਸਾਡੇ ਰਾਈਵਲ ਗਰੁੱਪ ਬੱਚੇ ਨੇ ਦੋ ਤਰ੍ਹਾਂ ਚ ਲੜਾਈ ਹੋ ਰਹੀ ਹੈ ਉਹ ਕਿਵੇਂ ਨਾ ਕਿਵੇਂ ਭਾਈਚਾਰੇ ਦੇ ਵਿੱਚੋਂ ਹੀ ਨੇ ਕੀ ਉਹਨਾਂ ਦਾ ਕੋਈ ਸਮਝੌਤੇ ਦਾ ਚਾਂਸ ਹੈ ਵੀ ਸਾਂਝੇ ਟੇਬਲ ਤੇ ਕਮਿਊਨਿਟੀ ਦੇ ਵਿੱਚੋਂ ਭਾਈਚਾਰੇ ਦੇ ਵਿੱਚੋਂ ਜਾਂ ਪੁਲਿਸ ਵੀ ਇਹ ਗੱਲ ਖੋਸੇ ਉਹਨਾਂ ਨੇ ਵੀ ਚਰਨ ਇੰਗਰੇ ਨੇ ਵੀ ਗੱਲ ਮੰਨੀ ਕਹਿੰਦਾ ਬਹੁਤ ਵਧੀਆ ਥਾਟ ਹੈ ਜੇ ਪੋਸੀਬਲ ਸਾਨੂੰ ਤਾਂ ਸਾਡੇ ਨਾਲ ਤਾਂ ਸ਼ੇਅਰ ਨਹੀਂ ਕਰਦੇ ਪਰ ਕਮਿਊਨਿਟੀ ਕਰ ਸਕਦੀ ਹੈ ਪਰ ਇੱਕ ਗੱਲ ਸੁਣ ਲਿਓ ਵੱਡੀਆਂ ਫੈਲਾ ਪੁਲਿਸ ਕੋਲ ਹੋਣ ਔਰ ਇਹ ਹੋਰ ਨੁਕਸਾਨ ਪਾਈ ਚੜਦਾ ਹੋਊ ਜੇ ਅਲਰਟ ਨਾ ਹੋਏ ਇਹ ਨਿਭੜਣੀ ਨਹੀਂ ਗੱਲ ਹੈ ਜਿਹੜੇ ਟੇਬਲਾਂ ਤੇ ਬੈਠਦੇ ਆ ਜਿਨ੍ਹਾਂ ਕੋਲੇ ਇਨਫੋਰਮੇਸ਼ਨ ਆ ਉਹਨਾਂ ਨੇ ਵਾਰਨਿੰਗ ਦਿੱਤੀ ਹੋਈ ਆ ਵੀ ਇਹ ਡੇਂਜਰਸ ਹੋ। ਦੂਸਰੇ ਬੰਦੇ ਸਰਕਰਮਜੀਤ ਸਿੰਘ ਬਰਨਾਲਾ ਉਹ ਕਹਿੰਦੇ ਮੇਰਾ ਪੁੱਤ 2 ਸਾਲ ਹੋ ਗਏ ਯਾਰ ਬਿਲਕੁਲ ਕੈਮਰਿਆਂ ਦੇ ਥੱਲੇ ਤੇ ਪੁਲਿਸ ਸਟੇਸ਼ਨ ਤੋਂ 300 ਕਿਲੋ 300 ਮੀਟਰ ਦੂਰ ਕੋਈ ਉਹਨੂੰ ਮਾਰ ਗਿਆ ਤੇ ਹਲੇ ਤੱਕ ਬੰਦੇ ਨਹੀਂ ਫੜ ਹੋਏ। ਨਿਰਾਸ਼ ਵੀ ਸਨ। ਔਰ ਪੁਲਿਸ ਕੋਸ਼ਿਸ਼ ਕਰ ਰਹੀ ਹੈ ਚੀਜ਼ਾਂ ਜਿਹੜਾ ਥ੍ਰੈਸ਼ਹੋਲਡ ਹੈ ਬਹੁਤ ਉੱਚਾ। ਦੋਸ਼ੀ ਥੱਲੇ ਦੀ ਨੰਗ ਜਾਂਦੇ ਆ ਇਹ ਕਾਨੂੰਨ ਜਿਹੜਾ ਪੁਲਿਸ ਨੇ ਨੀ ਬਣਾਉਣਾ ਨਾ ਤੁਸੀਂ ਬਣਾਉਣਾ ਇਹ ਤਾਂ ਜਿਹੜੀਆਂ ਆਵਾਜ਼ਾਂ ਕਹਿੰਦੇ ਆ ਵੀ ਅਸੀਂ ਥੋੜੇ ਆ ਉਹ ਆਵਾਜ਼ਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਆ ਵਿਆਹਾਂ ਭੋਗਾਂ ਤੇ ਚਿੱਠੀਆਂ ਦੇਣ ਤੋਂ ਬਿਨਾ ਹੋਰ ਵੀ ਦੇਖੋ ਆਲੇ ਦਾਲੇ ਜਾਂ ਬਦਲ ਦੇ ਵਿੱਚ ਉਹਨਾਂ ਨੂੰ ਭੇਜੋ ਜਿਹੜੇ ਬੋਲ ਸਕਣ ਜਾ ਕੇ ਇਹ ਬਹੁਤ ਵੱਡਾ ਇਸ਼ੂ ਹੈ ਤਿੰਨੇ ਲੈਵਲ ਉੱਥੇ ਇਨਵਾਈਟਡ ਸੀ ਓਪਨ ਸੱਦਾ ਸੀ ਫੇਸਬੁੱਕ ਤੇ ਸਾਰਾ ਕੁਝ ਲਿਖਿਆ ਹੋਇਆ ਸੀ ਔਰ ਕੋਈ ਨਹੀਂ ਪਹੁੰਚਿਆ ਲੋਕਲ ਵੀ ਨਹੀਂ ਪਹੁੰਚਿਆ ਕੌਂਸਲਰ ਵੀ ਨੀ ਕੋਈ ਪਹੁੰਚਿਆ ਪੰਜਾਬੀ ਬੋਲਦੇ ਕਾਉਂਸਲਰ ਹੈਗੇ ਹੀ ਐ ਕੋਈ ਨਹੀਂ ਆਇਆ ਉੱਥੇ ਸਕੂਲ ਟਰਸਟੀ ਨੀ ਆਇਆ ਕੋਈ ਕੋਈ ਨਹੀਂ ਆਇਆ ਉੱਥੇ ਭਾਈਚਾਰਾ ਰਹਿ ਗਿਆ ਚਾਰੇ ਪੁਲਿਸ ਅਫੀਸਰ ਰਹਿ ਗਏ ਤੇ ਗੋਵਰ ਦੀ ਸਟੇਜ ਰਹਿ ਗਈ ਪਰ ਲੋਕਾਂ ਨੇ ਦੁੱਖ ਵੀ ਮਨਾਇਆ ਇਸ ਗੱਲ ਦੇ ਕਿੱਥੇ ਨੇ ਬੰਦੇ ਹੁਣ ਉਹ ਵਿਪਾਰਕ ਸੰਦੇਸ਼ਾਂ ਤੋਂ ਬਾਅਦ ਅਗਲੇ ਹਿੱਸੇ 'ਚ ਗੱਲਬਾਤ ਸ਼ੁਰੂ ਕਰਦਾ ਹਾਂ ਕਿ ਬੀਸੀ ਲਿਬਰਲਸ ਨੇ ਪਿਛਲੇ ਸਾਲਾਂ ਪਿਛਲੇ ਸਾਲ ਦੇ ਵਿੱਚ ਸੌਰੀ ਵਿਪਾਰਕ ਸੰਮੇਖੀ ਜਾ ਕੇ ਲੈਨੇ ਗੱਲ ਕਰਦਾ ਕਿ ਗਵਰਨਮੈਂਟ ਮੇਲ ਦੇ ਵਿੱਚ ਵੀਕਐਂਡ ਤੇ ਬਹੁਤ ਵੱਡਾ ਇੱਕ ਆਰਟੀਕਲ ਉਹ ਲਿਖਦੇ ਐ ਉਹਨਾਂ ਨੇ ਲਿਖਿਆ ਕਿ 12 ਮਿਲੀਅਨ ਡਾਲਰ ਲਿਬਰਲਸ ਨੇ ਇਕੱਠਾ ਕੀਤਾ ਪਿਛਲੇ ਸਾਲ ਚ ਹੁਣ ਉਹ ਕੀ ਕਹਿ ਰਹੇ ਨੇ ਉਹਦੇ ਚ ਪੈਸੇ ਸਾਰੇ ਇਕੱਠੇ ਕਰਦੇ ਆ ਫੰਡਰੇਜ਼ਿੰਗ ਕਰਦੇ ਆ ਐਨਡੀਪੀ ਵਾਲੇ ਵੀ ਕਰਦੇ ਆ ਐਨਡੀਪੀਪੀ ਵਾਲੇ ਵੀ ਉਸਦੇ ਮਹਿੰਗੀਆਂ ਪਲੇਟਾਂ ਵੇਚਦੇ ਆ ਜòn organ ਵੇਲੇ ਵੀ 5-10 ਹਜ਼ਾਰ ਦੀ ਵਿਕੀ ਆ ਸ਼ਾਇਦ ਪਤਾ ਲੱਗਿਆ ਸੀ ਪਰ ਇਹਦੇ ਵਿੱਚ ਕੀ ਹੋਇਆ ਲੌਬੀਇਸ ਨੇ ਜਿਹੜੇ ਸਾਲਸੀ ਨੇ ਜਿਹੜੇ ਉਹਨਾਂ ਨੇ ਫੰਡ ਰੇਜ਼ਿੰਗ ਦੀਆਂ ਸਕਟਾਂ ਜਿਹੜੀਆਂ ਆਪਣੇ ਲੈਵਲ ਤੇ ਲਈਆਂ ਫਿਰ ਜਿਨ੍ਹਾਂ ਲਈ ਉਹ ਲੋਬੀ ਕਰਦੇ ਨੇ ਉਹਨਾਂ ਤੋਂ ਰੀਇੰਬਸ ਹੋਈ ਇਹਦੇ ਲਈ ਇਲੈਕਸ਼ਨ BCS ਦੀ ਇਨਵੈਸਟੀਗੇਸ਼ਨ ਕਰ ਰਹੀ ਹੁਣ ਜਿਹੜੇ ਲੋਬੀਇਸਟ ਨੇ ਜਿਨ੍ਹਾਂ ਨੇ ਇਹ ਮਾਇਆ ਦੇਣੀ ਹੈ 28% ਦੇ ਕਰੀਬ ਟੋਟਲ ਡੋਨਰ ਦੇ ਵਿੱਚੋਂ 28 ਨੇ ਤਾਂ ਦਿੱਤਾ 6.58 ਮਿਲੀਅਨ 65 ਲੱਖ ਅਸੀ ਹਜ਼ਾਰ ਤਾ 28 ਨੇ ਦਿੱਤਾ 100 ਚ ਤੇ 72 ਨੇ ਦਿੱਤਾ 55 ਲੱਖ ਸਤਰ ਹਜ਼ਾਰ 28 ਜਿਹੜੇ ਪਰਸੈਂਟ ਨੇ 28 ਬੰਦੇ 100 ਦੇ ਵਿੱਚੋਂ ਉਹਨਾਂ ਮਿਲੀਅਨ ਦਿੱਤਾ ਉਹ ਲੌਬੀਇਸਟ ਤੇ ਤਰੱਕੀ ਵਾਲੇ ਪੈਸੇ ਵਾਲੇ ਬੰਦੇ ਨੇ ਤੇ ਫੋਟੋਆਂ ਨਾਲ ਛਾਪੀਆਂ ਨੇ ਮਾਰਕ ਜਾਇਲਡ ਉਹਦੇ ਨਾਲ बीसी मिनिस्टर ऑफ जस्टिस सुज़ैन एंटਨ ਦੀ ਫੋਟੋ ਹੈ ਇਹ ਲੋਬੀਇਸਟ ਹੈ ਸੈਮਨ ਫਾਰਮਰ ਹੈ ਇੱਕ ਬੰਦਾ ਉਹਦੀ ਇਹ ਲੋਬੀ ਕਰਦਾ ਹੈ ਬੰਦਾ ਉਸ ਤੋਂ ਬਾਅਦ ਕਾਮਿਸ਼ਨ ਦੇ ਵਿੱਚ ਜਿਹੜਾ ਇੱਕ ਐਲ ਐਨ ਜੀ ਦਾ ਲਾਇਆ ਪ੍ਰੋਜੈਕਟ ਲੱਗਣਾ ਜਿਸ ਗੱਲਬਾਤ ਹੋਈ ਹੈ ਉਹਦਾ ਇੱਕ ਲੋਬੀਇਸਟ ਹੈ ਦੀ ਫੋਟੋ ਹੈ ਉਹਨੇ 28000 ਡਾਲਰ 14 ਨੋਨੇਸ਼ਨਾ ਚ ਦਿੱਤਾ ਤੇ ਪ੍ਰੀਮੀਅਰ ਨਾਲ ਉਸਦੀ ਖੜੇ ਦੀ ਵੀ ਫੋਟੋ ਆ ਜਦਾ ਐਲਐਨਜੀ ਦੇ ਪ੍ਰੋਜੈਕਟ ਬਾਰੇ ਉਹ ਦੱਸ ਰਿਹਾ ਹੈ ਬਾਇੰਗ ਜੁਰਾਡ ਉਸ ਜੇ ਮੈਂ ਠੀਕ ਕਰਾਂ ਬੁਡ ਫਾਈਬਰ ਐਲਐਨਜੀ ਪ੍ਰੋਜੈਕਟ ਹੈ ਤੇ ਜਿਹੜੀ ਫਰਮ ਨੇ ਇਹ ਬਣਾਇਆ ਤੇ ਉਸ ਦਾ ਹੋਲੋਬੀਸਟ ਹੁਣ ਇਹ ਜਿਹੜੀ ਗੱਲ ਜਾਂ ਚੱਲੀ ਇੰਡੋਨੇਸ਼ੀਆ ਦੀ ਇਹ ਫਰਮ ਹੈ ਬੁਡ ਫਾਈਬਰ ਐਲਐਨਜੀ ਜਿਹੜਾ ਸਕੋਮਿਸ਼ ਪ੍ਰੋਜੈਕਟ ਲੱਗ ਰਿਹਾ ਉਸ ਬੰਦੇ ਨੇ ਹੁਣ ਗੱਲ ਇੱਥੇ ਕਿੱਥੀ ਦੀ ਕੀਤੀ ਆ ਵੀ ਅੱਛਾ ਫਿਰ ਇਹ ਤਾਂ ਇਹ ਜਿਹੜੇ ਬੰਦੇ ਐ ਇਹ ਤੇ ਇਹ ਫੰਡ ਰਾਈਜ਼ਿੰਗ ਕਰਦੇ ਆ ਇੱਕ ਤਾਂ ਦੋ ਟੇਬਲ ਲੈ ਲੇ 20000 ਡਾਲਰ ਦੇਤਾ ਤੇ 20000 ਫਿਰ ਆਪਣੇ ਕਲਾਇੰਟ ਤੋਂ ਰੀਇਮਬਰਸ ਕਰ ਲਿਆ ਲੈ ਲਿਆ ਆਪਣੀ ਕੰਪਨੀ ਦੇ ਨਾਂ ਤੇ ਇਸ ਗੱਲ ਦਾ ਰੌਲਾ ਪੈ ਰਿਹਾ ਇਸ ਤਰ੍ਹਾਂ ਨਹੀਂ ਹੋ ਸਕਦਾ ਰੀਇਮਬਰਸ ਨਹੀਂ ਹੋ ਸਕਦਾ ਸਿੱਧਾ ਡੋਨੇਸ਼ਨ ਡੋਨਰ ਦੇ ਸਕਦਾ ਬਹੁਤ ਲੰਮੀ ਲਿਸਟ ਹੈ ਇਸ ਦੇ ਵਿੱਚ ਜਿਹਦੇ ਵਿੱਚ ਲ lobbyist ਦਾ ਨਾਮ ਹੈ ਕਿਹੜੀ ਕੰਪਨੀ ਲਈ ਉਹ ਕੰਮ ਕਰਦੇ ਆ ਤੇ ਇਹਦੇ ਵਿੱਚ ਕੋਈ ਦੂਸਰੀ ਸ਼ਕ ਨਹੀਂ ਕਿ ਸਰਕਾਰ ਨੇ ਕੰਮ ਕਰਨੇ ਆ ਸਰਕਾਰ ਨੇ ਪ੍ਰੋਜੈਕਟ ਲਾਉਣੇ ਆ ਪਰ ਖਾਸ ਬੰਦਿਆਂ ਦੀ ਖਾਸ ਜਿਹੜੀ ਜਗ੍ਹਾ ਉਹਦੇ ਵਿੱਚ ਉਹਦੀ ਗੱਲ ਹੈ 1 ਬਿਲੀਅਨ ਡਾਲਰ ਦੀ ਜਿਹੜੀ ਲੈਂਡ ਵਿਕੀ ਕਰਾਉਨ ਲੈਂਡ ਵੀ ਕੀ ਉਹਦੀ ਮੈਂ ਜਾਣਕਾਰੀ ਤੁਹਾਨੂੰ ਦਿੱਤੀ ਸੀ ਉਹ ਕਿਹਨਾਂ ਨੂੰ ਕਿਹੜੇ ਡਿਵੈਲਪਰਾਂ ਨੂੰ ਗਈ ਖਾਸ ਬੰਦਿਆਂ ਨੂੰ ਗਈ ਫੰਡ ਰੇიზਰ ਜਿਹੜੇ ਕਰਦੇ ਆ ਉਹਨਾਂ ਨੂੰ ਗਈ ਤੁਹਾਡੀ ਸਰੀ ਦੇ ਵਿੱਚ YMC ਦੇ ਕੋਲ 52 ਤੇ ਹਾਈਬ੍ਰਿਡ 10 ਤੋਂ ਉੱਪਰਲੇ ਬੰਨੇ ਤੁਹਾਡੇ ਹਸਪਤਾਲ ਦੀ ਜਿਹੜੀ ਜਗ੍ਹਾ ਸੀ ਉਹਦੇ ਤੇ ਹੁਣ ਟਾਊਨ ਹਾਊਸ ਬਣ ਰਹੇ ਨੇ ਉਹ ਬੇਚ ਦਿੱਤੀ ਗਈ ਔਰ ਹਸਪਤਾਲ ਦੀ ਕਿੰਨੀ ਜ਼ਰੂਰਤ ਹੈ ਹਸਪੀਟਲ ਦੀ ਕਿੰਨੀ ਸਰੀ ਜ਼ਰੂਰਤ ਹੈ ਇਸ ਗਲੋਬਲ ਮੇਲ ਦੀ ਪੱਤਰਕਾਰਾਂ ਨੇ ਬਹੁਤ ਜ਼ਿਆਦਾ ਜਿਹੜੀ ਤੈਕੀਕਾਤ ਕਰਨ ਵਾਲੀ ਖੋਜੀ ਪੱਤਰਕਾਰ ਨੇ ਲਿਸਟ ਦਿੱਤੀ ਹੈ ਲਾਬੀਸਟ ਕਿਹੜੇ ਨੇ ਨੇ ਤੇ 20 ਇਲੈਕਸ਼ਨ ਇਸ ਨੂੰ ਇਨਵੈਸਟੀਗੇਟ ਕਰ ਰਹੀ ਹੈ ਇਲੈਕਸ਼ਨ BC ਕਹਿੰਦੀ ਵੀ ਇਸ ਤਰ੍ਹਾਂ ਦੀ ਡੋਨੇਸ਼ਨ ਨਹੀਂ ਹੋ ਸਕਦੀ ਕਿ ਤੁਸੀਂ ਕਿ ਕਿਸੇ ਦੇ ਬਿਹਾਫ ਤੇ ਦਵਾਂ ਤੇ ਰੀਇੰਬਰਸ ਪੈਸੇ ਕਰਾਉ। ਤੋਂ ਇਹ ਜਦ ਇੱਥੇ ਤੁਸੀਂ ਵੇਖਦੇ ਹੋ ਇਸ ਤਰ੍ਹਾਂ ਪੈਸੇ ਵਾਲਿਆਂ ਦੀ ਪਰਮਾਰ ਪੈਸੇ ਵਾਲਿਆਂ ਦਾ ਜ਼ੋਰ ਕਿੱਧਰ ਨੂੰ ਕਹਾਣੀ ਜਾਂਦੀ ਹੈ ਇੰਨਾ ਕਿ ਰਿਫਾਰਮ ਇੱਥੇ ਹੋਣਾ ਚਾਹੀਦਾ ਹੈ ਇਹੋ ਰਜਿਸਟਰ ਨੇ ਲੌਬੀਸਟ ਜਿਹੜੇ ਆਪਣਾ ਨਾਂ ਇਸ ਤਰ੍ਹਾਂ ਹੀ ਔਟਵਾ ਦੇ ਵਿੱਚ ਆਪਣੇ ਵੀ ਰਜਿਸਟਰਡ ਇੱਕ ਲੌਬੀਅਸਟ ਹੀ ਤੁਹਾਨੂੰ ਪਤਾ ਲੱਗੇ ਦੱਸਿਆ ਸੀ ਇੱਕ ਵਾਰ 60000 ਦਾ ਕੰਟਰੈਕਟ ਪ੍ਰੇਮ ਬਿੰਗੋ ਨਾਲ ਲਿਆ ਸੀ ਇੱਥੇ ਖਬਰ ਛਪੀ ਸੀ ਲਾਈਟ ਰੇਲ ਰੋਡ ਦਾ ਉਹਨਾਂ ਨੂੰ ਮੈਂ ਲੌਬੀ ਤੁਹਾਡੀ ਕਰਨੀਆ ਆਊਟਵਾ ਦੇ ਵਿੱਚ ਵੀ ਤੁਹਾਨੂੰ ਫੰਡਿੰਗ ਮਿਲੇ ਸਿਟੀ ਅਫਸਰੀ ਤੋਂ ਬਿਨਾ ਕਿਸੇ ਹੋਰ ਕੋਟੇਸ਼ਨ ਤੋਂ ਕਨਫਲਿਕਟ ਆਫ ਇੰਟਰਸਟ ਇਦੇ ਵਿੱਚ ਦੋਨੇ ਮੁੰਡੇ ਉਹਨਾਂ ਦੇ ਕੰਮ ਕਰਦੇ ਆ ਸਰਕਾਰ ਦੇ ਵਿੱਚ ਇਨਫਰਾਸਟ੍ਰਕਚਰ ਦੇ ਮਿਨਿਸਟਰ ਦਾ ਇੱਕ ਏਡ ਦੂਸਰਾ ਮੁੰਡਾ ਸੁਧਾਰ ਸੱਜਣ ਦਾ ਏਡ ਹੈ ਸ਼ਹਿਰ 60000 ਦਾ ਉਹਨਾਂ ਨੇ ਕੰਟਰੈਕਟ ਲਿਆ ਸੀ ਇਸ ਦੀ ਆਪਾਂ ਖਬਰ ਤੁਹਾਨੂੰ ਦਿੱਤੀ ਸੀ ਇਹ ਹੋਇਆ ਆ ਵੀ ਬਹੁਤ ਵੱਡੀ ਖਬਰ ਹੈ ਹੁਣ ਇਹ ਖਬਰ ਵਾਲ ਬਾਕੀ ਮੀਡੀਆ ਨੇ ਗੱਲ ਕੀਤੀ ਜਾਂ ਲਾਈਟ ਰੇਲ ਰੋਡ ਦੇ ਕੰਟਰੈਕਟ ਦੀ ਗੱਲ ਕੀਤੀ 80% ਬੰਦੇ 6.6 ਮਿਲੀਅਨ ਡਾਲਰ ਦਿੰਦੇ ਆ ਔਰ ਇਹ ਵੱਡੀ ਨਿਊਜ਼ ਆ ਸਵੇਰ ਦੀ ਮੇਨਸਟ੍ਰੀਮ ਤੇ ਚੱਲ ਰਹੀ ਔਰ ਇਹ ਪੜਨ ਵਾਲੀ ਆ ਜੇ ਤੁਸੀਂ ਇਸ ਨੂੰ ਪੜੋ ਜਿਸ ਤਰ੍ਹਾਂ ਚਾਈਨਾ ਤੋਂ ਮੇਨ ਲੈਰੀ ਯੰਮੈਕ ਜਿਹੜਾ ਇੱਕ ਕੰਸਲਟੈਂਟ ਤੇ ਲੋਅਰ ਆ ਚਾਈਨੀਜ਼ੇ ਕਲਾਇੰਟ ਨੇ ਉਹਨੇ 13 ਵਾਰ 2013 ਦੇ ਵਿੱਚ 1 ਲੱਖ ਡਾਲਰ ਵੀ ਡੋਨੇਸ਼ਨ ਦਿੱਤੀ ਉਹ ਇਹਦੇ ਜਿਹੜੇ ਬੰਦੇ ਆ ਫਿਰ ਇਹਦਾ ਮਤਲਬ ਇਹ ਫਾਇਦਾ ਲੈਂਦੇ ਮਾਤਰ ਜਿਹੜਾ ਕਮਾਉਂਦਾ 3000 ਡਾਲਰ ਹੈ ਉਹਨੇ ਕੀ 80000 ਸਾਲ ਦਾ ਦੇਣਾ ਉਹ 35000 40000 ਇਹਦੇ ਚ ਕੈਥੀ ਨੇ ਲਿਖਿਆ ਵੀ ਇੱਕ ਜੰਦਾ 70 70000 ਲੈਂਦਾ ਤੇ 50000 ਇੱਕ ਐਵਰੇਜ ਕੈਨੇਡੀਅਨ ਕਮਾਉਂਦਾ ਤੇ ਉਹਨਾਂ ਨੇ ਕੀ ਕਰਨਾ ਫਿਰ ਅਜੀਤ ਪਾਲ ਸਿੰਘ ਦੀ ਲਾਈਨ ਨੰਬਰ 3 ਅਜੀਤਪਾਲ ਸਿੰਘ ਜੀ ਵਪਾਰ ਸੰਮੇਸ਼ਾ ਤੋਂ ਬਾਅਦ ਵਾਪਸ ਆਉਣੇ ਸਾਹ ਜਸਵਿੰਦਰ ਸਿੰਘ ਵਿਦੇਸ਼ਾ ਜੀ ਤੁਸੀਂ ਇਰਤੇ ਆਨਲਾਈਨ ਨੰਬਰ 3 ਆ ਸਨਾਰ ਜੀ ਜੇ ਵੀ ਤੁਹਾਨੂੰ ਤੇ ਤੁਹਾਡੇ ਸਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ ਇਹ ਵਿਚਾਰਨ ਵਾਲੀ ਗੱਲ ਆ ਕਾਰਪੋਰੇਟ ਵਰਲਡ ਆ ਜਿਹੜਾ ਸਾਰੀ ਦੁਨੀਆ ਦੇ ਵਿੱਚ ਇਹ ਆਮ ਲੋਕਾਂ ਦੀ ਲਾਈਫ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਇਹ ਵੀ ਇਹਦਾ ਇੱਕ ਸਾਈਆ ਜੀ ਜਿਹੜਾ ਇੱਕ ਕੁਝ ਹੋ ਰਿਹਾ ਤੁਸੀਂ ਇਹ ਨੋਟ ਕਰੋ ਵੀ ਤੁਸੀਂ ਦੱਸਿਆ ਜਿਵੇਂ ਐਵਰੇਜ 50000 ਜਾਂ 70000 ਇਨਕਮ ਦੱਸਦੇ ਆ ਆਮ ਪਰਿਵਾਰਾਂ ਦੀ ਆਮ ਬੰਦਿਆਂ ਦੀ ਉਹਨਾਂ ਨੇ ਕੀ ਲੋਬੀ ਕਰਨਾ ਜੀ ਤੇ ਬੀਸੀ ਹਾਈਡਰੋ ਦਾ ਰੇਟ ਹਰ ਸਾਲ ਚੱਕੀ ਜਾਂਦੇ ਆ ਤੇ ਤਨਖਾਹ ਨਹੀਂ ਵਾਦੀ ਹੈਗੀ ਇਹ ਤਨਖਾਹ ਵਾਲਾ ਜਿਹੜਾ ਕਾਨੂੰਨ ਆ ਉਹ ਬਿਨਸਰ 2% ਤੇ ਹੀ ਰੋਕਿਆ ਹੋਇਆ ਵੀ 2% ਤੋਂ ਵੱਧ ਰੇਜ ਨਹੀਂ ਪਿੰਦੀ ਚਾਹੀਦੀ ਕਿਸੇ ਬੰਦੇ ਨੂੰ ਔਰ ਆਫਟਰ ਟੈਕਸ ਦੇ ਵਿੱਚੋਂ ਸਾਡੇ ਆਈਸੀਬੀਸੀ ਦੇ ਵਿੱਚੋਂ ਗਵਰਨਮੈਂਟ ਪੈਸੇ ਡ੍ਰੇਨ ਆਊਟ ਕਰੀ ਜਾਂਦੀ ਆ ਜਦੋਂ ਆਈਸੀਬੀਸੀ ਨੂੰ ਘਾਟਾ ਪੈਂਦਾ ਤੇ ਆਈਸੀਬੀਸੀ ਚੱਕ ਕੇ ਰੇਟ ਅੱਪ ਕਰ ਦਿੰਦੀ ਆ ਤੇ ਗਵਰਨਮੈਂਟ ਦੂਜੇ ਪਾਸੇ ਆਪਣੀਆਂ ਬੁੱਕਾਂ ਦੇ ਵਿੱਚ ਬੀਜੀ ਗਵਰਨਮੈਂਟ ਸਰਪਲਸ ਸ਼ੋਅ ਕਰ ਕਰਕੇ ਆਪਣੀ ਇਲੈਕਸ਼ਨ ਜਿੱਤਣ ਦਾ ਪਲੇਟਫਾਰਮ ਬਣਾਈ ਜਾਂਦੀ ਆ ਇਹ ਹੁਣ ਆਮ ਲੋਕਾਂ ਨੂੰ ਸੋਚਣਾ ਚਾਹੀਦਾ ਜੀ ਦੇਖੋ ਪਾਰਟੀ ਜਿਹੜੀ ਮਰਜ਼ੀ ਚੋਣਨਾ ਜਿਹੜੀ ਪਾਰਟੀ ਨੂੰ ਵੀ ਉਹਨਾਂ ਦੇ ਸਪੋਰਟ ਕਰਨਾ ਉਹਨਾਂ ਦੇ ਨਾਲ ਗੱਲ ਉਹਨਾਂ ਨੂੰ ਪੁੱਛਣਾ ਵੀ ਪਾਈ ਕਿ ਤਾਂ ਤੁਸੀਂ ਵੀ ਇਹੀ ਕੁਝ ਕਰਨਾ ਫਿਰ ਚੇਂਜ ਕਰਨ ਦੀ ਕੋਈ ਲੋੜ ਨਹੀਂ ਪਰ ਇਹ ਆਮ ਲੋਕਾਂ ਦੇ ਉੱਤੇ ਬੋਝ ਜਿਹੜਾ ਪੈ ਰਿਹਾ ਨਾ ਜੀ ਦੇਖੋ ਪਿੱਛੇ ਜੇ ਇੱਕ ਨਿਊਜ਼ ਆਈ ਸੀਗੀ ਉਹਦੇ ਵਿੱਚ ਉਹ ਦੱਸਿਆ ਸੀ ਵੀ ਜਿਨ੍ਹਾਂ ਲੋਕਾਂ ਨੇ ਡਿਰੀਹਨ ਦਿੱਤੀ ਉਹਨਾਂ ਕੰਪਨੀਆਂ ਨੂੰ ਕੌਂਟਰੈਕਟ ਵੀ ਮਿਲੇ ਆ ਉਹਨਾਂ ਦੇ ਬਕਾਇਦਾ ਨਾਮ ਲਿਖੇ ਹੋਏ ਸੀ ਉਸ ਨਿਊਜ਼ ਦੇ ਵਿੱਚ ਕਿ ਉਹਨਾਂ ਕੰਪਨੀਆਂ ਨੂੰ ਕੌਂਟਰੈਕਟ ਕਿਵੇਂ ਮਿਲ ਗਏ ਜੀ ਇਹ ਗਵਰਨਮੈਂਟ ਦਾ ਫੇਰ ਬਿਡ ਉਹ ਇੱਕ ਇੰਡਾਇਰੈਕਟ ਤਰੀਕੇ ਦੇ ਨਾਲ ਇਹ ਪੈਸਾ ਦਿੱਤਾ ਜਾ ਰਿਹਾ ਬੈਨੀਫਿਟ ਲੈਣ ਲਈ ਉਹਦੇ ਲਈ ਇਹ ਲੋਬੀਇਸਟ ਜਿਹੜੀਆਂ ਸਕੀਮਾਂ ਦੇ ਦਿਮਾਗਾਂ ਦੀ ਕਾੜ ਆ ਜੀ ਰੇਕ ਜਦਾਂ ਇੱਥੇ ਸੜੀ ਰਜਿਸਟਰ ਹੋਏ ਆਮ ਲੋਕਾਂ ਦਾ ਤਾਂ ਕੰਮ ਹੋਣ ਲਈ ਉਹ ਸੇਮ ਪ੍ਰੋਸੈਸ ਲੰਮਾ ਆ ਤੇ ਲੋਬੀਇਸਟ ਜਿਹੜੇ ਆ ਉਹ ਫੇ ਕੀ ਕਰਦੇ ਆ ਜੀ ਉਹਨਾਂ ਨੂੰ ਪੈਸਾ ਅਕਸਰ ਜਿਹੜੀ ਕੰਪਨੀ ਦਿੰਦੀ ਆ ਜਿਉਂਨੇ 10000 ਲਾਉਣਾ ਤੇ ਉਹਨੇ ਲੱਖ ਬਣਾਉਣਾ ਜੀ ਉਹ ਫੇ ਪੈਸੇ ਤਾਂ ਉਹਨਾਂ ਨੂੰ ਮਿਲਦਾ ਹੋਊਗਾ ਕੋਈ ਨਾ ਕੋਈ ਇਹ ਜਿਹੜੀਆਂ ਚੀਜ਼ਾਂ ਖੋਜਣ ਵਾਲੀ ਗੱਲ ਆ ਜੀ ਇਹ ਜਿਹੜੀ ਤੁਸੀਂ ਟੌਪਿਕ ਲੈਂਦਾ ਪਬਲਿਕ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੀ ਕਰੀ ਜਾਂਦੇ ਆ ਬੋਝ ਪਾਈ ਜਾਂਦੇ ਬੋਝ ਪਾਈ ਜਾਂਦੀ ਗਵਰਨਮੈਂਟ ਆਪਣੀਆਂ ਬੁੱਕਾਂ ਬੈਲੈਂਸ ਕਰਨ ਲਈ ਤੇ ਸਾਨੂੰ ਸਰਵਿਸ ਤਾਂ ਉਸ ਤਰੀਕੇ ਆਈਆਂ ਮਿਲ ਨਹੀਂ ਰਹੀਆਂ ਆ ਹੁਣ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਖਿਆਲ ਦੇ ਵਿੱਚ ਵੀ ਡਬਲ ਡਬਲ ਜਦੋਂ ਗੈਸ ਦੇ ਬਿੱਲ ਆਏ ਆ ਤੇ ਨੇ ਪਹਿਲਾਂ ਹੀ ਸਿਆਲ ਆਉਣ ਤੋਂ ਚਾਲ ਦੇ ਵਿੱਚ ਆ ਗਿਆ ਸੀ ਦਿਮਾਗ ਉਹਦੇ ਪੱਜਣੀ ਸੀਗੀ ਆਈਸੀਪੀਸੀ ਨੂੰ ਕਿਉਂ ਨਹੀਂ ਗਵਰਨਮੈਂਟ ਆਪਣੇ ਅਕਾਊਂਟ ਚੋਂ ਪੈਸੇ ਦਿੰਦੀ ਜਦੋਂ ਆਈਸੀਪੀਸੀ ਘਾਟੇ 'ਚ ਜਾਂਦੀ ਆ ਫਿਰ ਲੋਕਾਂ ਦੇ ਉੱਤੇ ਰੇਟ ਵਧਾਉਣ ਲਈ ਅਪਰੂਵਲ ਕਦੇ ਮਿਲ ਜਾਂਦਾ ਜੀ ਉਹਨਾਂ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਜੀ ਲੋਕਾਂ ਨੂੰ ਤਾਂ ਇਲੈਕਸ਼ਨ ਆ ਰਹੀ ਆ ਇਹਨਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਲੀਡਰ ਆਉਂਦੇ ਆ ਭਾਈ ਤੁਸੀਂ ਸਾਡੇ ਉੱਤੇ ਜਿਹੜਾ ਬਰਡਨ ਪਾ ਰਹੇ ਆ ਰੈਂਦਾ ਖੁੰਦਾ ਟੈਕਸ ਵਾਲਿਆਂ ਨੇ ਪਾ ਲੈਣਾ ਜੀ ਹਜ਼ਾਰ-ਹਜ਼ਾਰ ਡਾਲਰ 5-500 ਐਦਕੀ 5-500 ਤੋਂ ਲੈ ਕੇ 1000 ਡਾਲਰ ਟੈਕਸ ਵਧਣਾ ਜੀ 20 ਸੈਟਮੈਂਟ ਵਾਲੀ ਗੱਲ ਫੇਰ ਜੀ ਉਹ ਵੀ ਦੇ ਘਰ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਿਦੇਸ਼ਾ ਜੀ ਜਾਨੇ ਜੀ ਟੋਟਲ ਜਿਨ੍ਹਾਂ ਮੇਲ ਨੇ ਲੱਭੀ ਕੈਠੀ ਹੋਣਾ ਨੇ ਜਿਹਦੇ ਵਿੱਚ ਜਿਹੜੇ ਦੋ ਮੇਨ ਲੌਬੀਸਟ ਜੁਰਾਡ ਐਂਡ ਜਾਇਲਸ ਏ ਜਾਂ ਜਿਲਸ ਕੋਈ ਅਲੱਗ ਨਾਮ ਹੋ ਸਕਦਾ ਪਰ ਐਨੀਵੇਜ਼ ਇਹਨਾਂ ਨੇ ਆਪਣੇ ਕ੍ਰੈਡਿਟ ਕਾਰਡਾਂ ਤੇ ਫੰਡਰੇਜ਼ਿੰਗ ਦੀਆਂ ਟੈਕਸਟਾਂ ਖਰੀਦੀਆਂ ਤੇ ਆਪਣੇ ਕਲਾਇੰਟ ਤੇ ਰੀਇੰਬਰਸ ਉਹਨਾਂ ਤੋਂ ਆਪਣੇ ਪੈਸੇ ਕਰਾ ਲਏ ਇੱਕ ਇਹਦੇ ਚੋਂ ਸਕੋਮੇਸ ਦੇ ਵਿੱਚ ਅਲਨ ਜੀ ਪ੍ਰੋਜੈਕਟ ਦੀ ਅਪਰੂਵਲ ਕਰਵਾਉਣ ਵਾਲਾ ਜਿਹੜਾ ਇੰਡੋਨੇਸ਼ੀਆ ਦੀ ਪਰ ਉਹਨੇ ਕੰਮ ਕਰਦਾ ਦੂਜਾ ਬੀਸੀ ਇੱਕ ਸੈਮਨ ਫਾਰਮਰ ਬਹੁਤ ਵੱਡਾ ਤੇ ਉਹਨੂੰ ਰਿਪਰੈਜ਼ੈਂਟ ਕਰਦਾ ਇਹ ਲੌਬੀਇਸ ਰਜਿਸਟਰ ਨੇ ਇਹਨੂੰ ਉਸ ਤਰ੍ਹਾਂ ਨਹੀਂ ਹੋ ਸਕਦਾ ਜਿਵੇਂ ਉੱਥੇ ਪੰਜਾਬ 'ਚ ਐਮ.ਐਲ.ਏ ਦੇ ਕੰਮ ਹੁੰਦੇ ਆ 2 ਨੰਬਰ ਵਾਲਾ ਪਾਰਟੀ ਦੇ ਰਾਹੀਂ ਕੰਮ ਕਰਾਉਂਦੇ ਆ ਤੇ ਜਿਨ੍ਹਾਂ ਦੇ ਕੰਮ ਕਰਦੇ ਆ ਉਹ ਆਪਣੇ ਪੈਸੇ ਲਿਖਦੇ ਆ ਰਜਿਸਟਰਡ ਲੌਬੀਇਸਟ ਇਹਨਾਂ ਨੂੰ ਕਹਿੰਦੇ ਔਰ ਸਰਕਾਰ ਆਪਣੇ ਮਤਵੰਨਿਆਂ ਨੂੰ ਪਿਆਰਿਆਂ ਨੂੰ ਇਸ ਤਰ੍ਹਾਂ ਰਜਿਸਟਰ ਲੌਬੀਇਸਟ ਬਣਾ ਕੇ ਉਹਨਾਂ ਦੇ ਕਹੇ ਤੇ ਕੰਮ ਕਰਦੀ ਆ ਤੇ ਫਿਰ ਗੱਲ ਹੁਣ ਜਿਵੇਂ ਆਊਟਵਾਚ ਚ ਚੱਲ ਰਹੀ ਹੈ ਸਰੀ ਦੇ ਬੜੇ ਲੌਬੀਇਸਟ ਉਸੇ ਤੁਰੇ ਫਿਰਦੇ ਆ ਪਰ ਜਿਨ੍ਹਾਂ ਕਟਾ ਟੋਪ ਹੁਣ ਹੋਇਆ ਹੈ ਲਿਬਰਲ ਵਾਲੇ ਪਾਸੇ ਇੱਕ ਖਾਸ ਗਰੁੱਪ ਦਾ ਪੰਜਾਬੀਆਂ ਦਾ ਮੈਨੂੰ ਨੀ ਲੱਗਦਾ ਜਸਟਨ ਟਰੂਡੋ ਨੂੰ ਉੰਨੀ ਵਾਲੀ ਇਲੈਕਸ਼ਨ ਜਿੱਤਣ ਦੇਣਗੇ। ਤੋਂ ਕੀ ਕਰ ਦੇਣਗੇ ਫੜ ਕੇ ਦੇਖ ਲਓ ਜਿਸ ਤਰ੍ਹਾਂ ਆਈਸੋਲੇਟ ਕੀਤਾ ਹੋਇਆ ਨਾ ਕੰਮ ਉਹਨੂੰ ਸੋਚਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਚਾਰੇ ਪਾਸੇ ਹੀ ਆਪਣੇ ਆਪਣੇ ਆਪਣੇ ਆਪਣੇ ਆਪਣੇ ਤੇ ਆਪਣੇ ਦੇ ਵਿੱਚ ਆਪਣਾ ਗਰੁੱਪ। ਇੱਥੇ ਵੀ ਜਿਹੜੀ ਬੀਸੀ ਲਿਬਰਲਸ ਨੇ ਐਂਡੀਪੀ ਵਾਲੇ ਵੀ ਫੰਡ ਰਾਈジング ਕਰਦੇ ਆ ਲੋਕਲ ਵੀ ਕੈਂਡੀਡੇਟ ਕਰਦੇ ਆ ਉਹਨਾਂ ਨੇ ਵੀ ਟਿਕਟਾਂ ਬਥੇਰੀਆਂ ਮਹਿੰਗੀਆਂ ਵੇਚੀਆਂ ਪਰ ਇਸ ਤਰ੍ਹਾਂ ਦਾ ਜਿਹੜੀ ਖਾਸ ਤੌਰ ਤੇ ਦੀ ਗੱਲ ਕੀਤੀ ਹੈ ਡਿਪਟੀ ਚੀਫ ਜਿਹੜੀ ਇਲੈਕਟਰਲ ਆਫੀਸਰ ਆ ਨੋਲਾ ਵੈਸਟਰਨ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਦੇਖ ਰਹੇ ਹਾਂ ਇਹਨੂੰ ਫਿਕਸ ਕਰਾਂਗੇ ਪਰ ਫਿਕਸ ਹੋ ਕਰਨਾ ਕਰਨਾ ਇੱਕ ਗੱਲ ਤਾਂ ਲੋਕਾਂ ਦੇ ਸਾਹਮਣੇ ਆ ਨਾ ਤੇ ਵੱਧ ਪੈਸੇ ਦੋ ਉਹ ਸਰਕਾਰਾਂ ਚ ਜਗ੍ਹਾ ਤੇ ਆਪਣੇ ਕੰਮ ਕਰਾਓ ਇਹੋ ਜਿਹਾ ਕੁਸ਼ਿ ਅਸੀਂ ਪੰਜਾਬ ਚ ਵੇਖਦੇ ਆਂ ਕੋਈ ਵੱਡਾ ਫਰਕ ਨਹੀਂ ਲੱਗ ਰਿਹਾ ਹਾਂ ਇੱਥੇ ਰਿਸ਼ਵਤ ਦੀ ਗੱਲ ਸਾਹਮਣੇ ਨਹੀਂ ਹੈ ਪਰ ਆ 12 ਮਿਲੀਅਨ ਡਾਲਰ 7 ਕਰੋੜ ਡਾਲਰ ਇਕੱਠਾ ਕਰਕੇ ਦੇਤਾ ਬਹੁਤ ਵੱਡੀ ਰਕਮ ਹੈ 60 ਕਰੋੜ ਰੁਪਈਆ ਹੋ ਗਿਆ ਜੇ ਪਿਛਲੇ ਮੈਂ ਲਾ ਰਕਮ ਜੇ ਬਣਾਵਾ ਖਾਸੀ ਰਕਮ ਬਣਦੀ ਹੈ ਵੀਜ਼ਾ ਤੁਹਾਡੇ ਤੱਕ ਤਾਂ ਲੈ ਕੇ ਆਈ ਦੀਆਂ ਕਿ ਤੁਸੀਂ ਉਹਦੇ ਤੇ ਐਕਟ ਕਰੋ ਗੈਸ ਦੀ ਗੱਲ ਕਰਕੇ ਕਹਿੰਦੇ ਤੇ ਵੀ ਜੀਐਸਟੀ ਲੱਗਦੀ ਹੈ ਕਿਵੇਂ ਕੀਤੀਆਂ ਹੋਈਆਂ ਨੇ ਆ ਗੈਸ ਦੀ ਪ੍ਰਾਈਸ ਆ ਗੈਸ ਦੀ ਸਪਲਾਈ ਦਾ ਇੰਨਾ ਖਰਚ ਆ ਗੈਸ ਤੁਹਾਡੇ ਘਰਾਂ ਤੱਕ ਲਿਆਉਣ ਦਾ ਇੰਨਾ ਖਰਚ ਇਹਦੇ ਤੇ ਕਾਰਬਨ ਟੈਕਸ ਹੈਗਾ 25 ਡਾਲਰ ਉਹਦੇ ਤੇ 25 ਡਾਲਰ ਤੇ ਜੀ GST ਫੇਰ 2.5 ਡਾਲਰ ਟੋਟਲ ਮਨੀ ਤੇ ਐਨੀ PST ਐਨੀ GST ਕਮ ਆਨ ਉਧਰੋਂ ਫਨਲ ਆਊਟ ਕਰਕੇ ਬਿਲੀਅਨ ਡਾਲਰ ਇਧਰੋਂ ਆਪਣਾ ਬਜਟ ਕਰਤਾ ਠੀਕ ਵੀ ਅਸੀਂ ਘਾਟੇ 'ਚ ਨਹੀਂ ਤੇ ਪਰਲੇ ਬੰਨੇ ਉਹਨਾਂ ਨੂੰ ਕਹਿੰਦਾ ਵੀ 5% ਐਸ ਕੀ ਵਧਾ ਦਿਓ 2000 ਜਿਹਦਾ ਸਾਲ ਦਾ ਉਹਦਾ 100 ਵੱਧ ਗਿਆ ਅੱਜ ਗੱਡੀਆਂ ਦਾ ਤੇ 42 40 42% ਤੱਕ ਜਾ ਸਕਦਾ ਕਿਉਂਕਿ 400 ਮਿਲੀਅਨ ਘਾਟੇ ਦਾ ICICI ਜਿਹਦੇ ਚੋਂ 1 ਬਿਲੀਅਨ ਡਾਲਰ ਕੱਢ ਕੇ ਲਿਬਰਲ ਲੈ ਕੇ ਗਿਆ। ਇੱਕ ਬੰਨੇ ਆਹ ਕਹਾਣੀ ਐ, ਦੂਸਰੇ ਬੰਨੇ BC ਦੀ ਜਿਹੜੀ NDP ਐ, ਉਹਨੂੰ ਲੋਕ ਚਾਹਤਾ ਰਹੇ ਐ ਪਰ ਜਦ ਉਹਦੇ ਚ ੱਟਕਾ ਹੁੰਦਾ ਹੈ, ਖਾਸ ਤੌਰ ਤੇ ਪੰਜਾਬੀ ਰਾਜਨੀਤੀ 'ਚ ਤਾਂ ਵੀ ਲੋਕ ਦੁਖੀ ਐ। ਕਿਵੇਂ ਕਿਸੇ ਨੂੰ ਨਾਮਿਨੇਟ ਕਰਨ ਲਈ ਧੱਜੀਆਂ ੜਾਈ ਜਾਂਦੀਆਂ ਕਿਵੇਂ ਇੱਕ ਸੀਨੀਅਰ ਮੰਦੇ ਨੂੰ ਆਪਣੀ ਡਿਕਲੇਰੇਸ਼ਨ ਕਰਨ ਲਈ ਕਿਤੇ ਦੂਜੀ ਕੰਸਟੀਚੂਐਂਸੀ ਜਾਣ ਤੋਂ ਪਹਿਲਾਂ ਸਟੈਪ ਡਾਊਨ ਪਹਿਲੇ ਐਮਐਲਏ ਨੂੰ ਨਹੀਂ ਕੀਤਾ ਜਾਣ ਦਿੱਤਾ ਫਿਰ ਆਪਣੇ ਬੰਦੇ ਨੂੰ ਖਾਸ ਤੌਰ ਤੇ ਨਾਮਿਨੇਟ ਕੀਤਾ ਗਿਆ ਗੱਲ ਕੀ ਕੱਲ ਨੂੰ ਜੇ ਕਦੇ ਐਨਡੀਪੀ ਦੀ ਸਰਕਾਰ ਬਣੇ ਤਾਂ ਮਿਨਿਸਟਰੀ ਸੀਨੀਅਰ ਕਿਸੇ ਹੋਰ ਨੂੰ ਨਾ ਮਿਲੇ ਸਾਨੂੰ ਮਿਲੇ ਆਹ ਕਪੀਤਾ ਕੁਝ ਨਹੀਂ ਘਟੀਦਾ ਪਹਿਲਾਂ ਸਰਕਾਰ ਤਾਂ ਬਣਾ ਲਓ ਪਿਛਲੀ ਵਾਰ ਵੀ ਟਕਸੀਡੋ ਬਣਾਏ ਹੋਏ ਸੀ ਬਹੁਤ ਅੰਦਰਲੇ ਬੰਨੇ ਬੈਠੇ ਈ ਟਾਈ ਦੀਆਂ ਨੋਟਾਂ ਦਿੱਤੀਆਂ ਪੱਗਾਂ ਬੰਨੀਆਂ ਕਰਦਿਆਂ ਕਰਦੇ ਆਂਗੇ ਉਹ ਕਰਦੇ ਆਂਗੇ ਕਰ ਲੋ ਜਿਵੇਂ ਨਵੇਂ ਪੁਰਾਣੇ ਕਾਗਜ਼ ਬਣਾ ਕੇ ਜੱਟ ਆਰਤੀ ਉਹ ਤੁਰਿਆ ਆਉਂਦਾ ਈਓਂ ਲੀਡਰ ਅੰਦਰੋਂ ਕੀ ਹੈ ਇੱਕ ਸਟਿਗਮਾ ਐਨਡੀਪੀ ਦੇ ਦੇ ਵਾਲੇ ਪਾਸਿਓਂ ਲੋਕ ਇਸ ਤਰ੍ਹਾਂ ਸੋਚਦੇ ਆ ਕਿ ਬਿਜ਼ਨਸ ਦਾ ਕੀ ਬਣੂ ਆਰਥਿਕਤਾ ਬਹੁਤ ਵਧੀਆ ਆਰਥਿਕਤਾ ਲਿਬਰਲਸ ਨੇ ਨਹੀਂ ਲੈ ਕੇ ਆਂਦੀ ਸਾਈਕਲ ਆ ਇਹ ਗੱਲ ਮੰਨਣ ਦੀ ਕੋਸ਼ਿਸ਼ ਕਰੋ। ਹਕਚੂਮਰ ਜਿਹੜਾ ਲੋਕਾਂ ਦਾ ਨਿਕਲ ਰਿਹਾ ਉਹ ਵੀ ਤੁਹਾਡੇ ਸਾਹਮਣੇ। ਚੱਕ ਚੱਕ ਕੇ ਤੁਹਾਡੇ ਸੂਬੇ ਦੀਆਂ ਜਿਹੜੇ ਜਾਇਦਾਦਾਂ ਵੇਚੀ ਜਾਣੀਆਂ ਉਹ ਤੁਹਾਡੀਆਂ ਜਾਇਦਾਦਾਂ ਲੋਕਾਂ ਦੀਆਂ ਜਾਇਦਾਦਾਂ ਬ੍ਰਿਟਿਸ਼ ਕਲੰਬੀਆਨ ਦੀਆਂ ਜਾਇਦਾਦਾਂ ਜਿਹੜੀਆਂ ਚਹੇਤਿਆਂ ਨੂੰ ਵੇਚਤੀਆਂ ਬਿਲੀਅਨ ਡਾਲਰ ਦੀਆਂ ਤੇ ਬਿਲੀਅਨ ਦੀ ਤਿਆਰੀ ਕੀਤੀ ਪਿਆ 68 ਬਿਲੀਅਨ ਦਾ ਅਹਿਦਨਾਮਾ ਕੀਤਾ ਹੋਇਆ ਪਹਿਲਾਂ ਹੀ ਦਸਤਖਤ ਕਰੀ ਫਿਰਦੇ ਕੰਟਰੈਕਚੁਅਲ ਜਿਹੜੀ ਆਬਲੀਗੇਸ਼ਨ 68 ਬਿਲੀਅਨ ਡਾਲਰ ਦੀ ਹੈ ਜਿਲਚ 58 ਬਿਲੀਅਨ ਬੀਸੀ ਹਾਈਡਰੋ ਦਾ ਇਹ ਇਕੱਲਾ ਦੀ ਪੂਨਸ਼ਕਣ ਵਪਾਰਕ ਸੰਦੇਸ਼ ਭਾਰਤੀ ਵੀਜ਼ੇ ਦੇ ਵਿੱਚ ਟੂਰਿਸਟ ਵੀਜ਼ੇ ਦੇ ਵਿੱਚ ਉਹਨਾਂ ਨੂੰ ਹੋਰ ਸਪੋਰਟਿੰਗ ਡਾਕੂਮੈਂਟ ਚਾਹੀਦੇ ਆ ਬੰਦੇ ਬਹੁਤ ਉੱਥੋਂ ਮੁਰਦੇ ਆ ਮੈਂ ਇੱਕ ਅੱਧੇ ਕੱਲ ਦੇ ਹਾਂ ਦੱਸਦਾ ਜੇ ਟੂਰਿਸਟ ਵੀਜ਼ਾ ਵੀ ਲੈਨੇ ਹੋ ਤੁਹਾਨੂੰ ਨਾਲ ਸਿਟੀਜ਼ਨ ਦਾ ਜਿਹੜਾ ਕਾਰਡ ਆ ਉਸਦੀ ਫੋਟੋ ਉਸ ਤੋਂ ਬਾਅਦ ਐਡਰੈਸ ਦੀ ਵੈਰੀਫਿਕੇਸ਼ਨ ਕੋਈ ਬੈਂਕ ਦੀ ਕਾਪੀ ਦਾ ਪੇਪਰ ਜਿਹੜਾ ਬੈਂਕ ਤੋਂ ਆਇਆ ਵੇ ਉਸ ਦਾ ਪੇਪਰ ਤੇ ਜਿਹੜਾ ਕੈਂਸਲ ਕਰਾਇਆ ਭਾਰਤੀ ਪਾਸਵਰਡ ਆ ਉਹਦਾ ਪੇਪਰ ਇਹ ਨਾਲ ਲੱਗਦੇ ਆ ਹੁਣ ਇਹ ਖਿਆਲ ਰੱਖਿਓ ਪਰ ਪਹਿਲਾਂ ਜਦੋਂ ਉਸ ਫਿਲ ਕਰ ਦਿਓ ਇਹ ਸੀ ਅੱਜ ਦਾ ਪ੍ਰੋਗਰਾਮ ਇਹ ਜਿਹੜੇ ਵੀ ਮੁੱਦੇ ਤੁਹਾਡੇ ਤੱਕ ਲੈ ਕੇ ਆਉਣਾ ਇਹਨੂੰ ਵਿਚਾਰਿਆ ਕਰੋ ਪਲੀਜ਼ ਇਹਨੂੰ ਸਪਰੈਡ ਕਰਿਆ ਕਰੋ ਅਕਲਾਂ ਦੀ ਲੋੜ ਆ ਹੁਣ ਖੰਡ ਦੀ ਲੋੜ ਐ ਸੱਚ ਦੀ ਬਿਨਾ ਤੇ ਖੜਿਆ ਕਰੋ ਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰੋ ਜੇ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਰੱਖਣੀ ਐ ਅਖੀਰ ਚ ਬੀਤ ਬਲਜੀਤ ਦਾ ਇੱਕ ਗੀਤ ਤੇ ਕੱਲ ਨੂੰ 11 ਵਜੇ ਫੇਰ ਮੁੜਦਾ ਰਬ ਅੰਗ ਸੰਗ ਚੜ੍ਹਦੀ ਕਲਾ